ਉਹ ਸਾਰੇ ਆਦਮੀ ਕਲਪਨਾਕ ਮੱਤਾ ਨਾਲ ਧਰਮ ਦੀ ਪ੍ਰਾਪਤੀ ਵਾਸਤੇ ਲੱਗੇ ਹੋਏ ਜੇ ਕਲਪਨਾਕ ਭਗਤੀਆਂ ਨੇ ਉਹ ਕਲਪ ਉਹਦਾ ਕਲਪਨਾ ਬਰਵਤਾਂ ਜੁਮੰਡ ਲਈ ਆਦਮੀ ਨੇ ਵੀ ਆ ਠੀਕ ਹੈ ਉਹਦੇ ਨਾਲ ਲੱਗੇ ਆਦਮੀ ਆਪਣੀਆਂ ਬੱਤਾਂ ਜਿੱਦੀ ਹੋਦੀਆਂ ਰੇ وقالプルकुटीर नहीं तद पतास पाई अतंत इससे करके انہاں دے کچھ پراپتی نہیں ہو رہی انتنے پار ہے کچھ سمجھ نہیں آ رہی کچھ کری یادن کسے ਕਈ ਕਰਤ ਕੋਟ ਵਿਦਿਆ ਵਿਚਾਰ ਕੋਈ ਕਰੋੜ ਲਗੇ ਨੇ ਵਿਦਿਆ ਵਿਚਾਰ ਕਰਨ ਨੂੰ ਕਰੋੜ ਕੇ ਆਦਮੀ ਕਰੋੜਾਂ ਆਦਮੀ ਵਿਦਿਆ ਵਿਚਾਰ ਚ ਲੱਗੇ ਨੇ ਨਹੀਂ ਪੰਦ ਪੰਦੀ ਵਿਦੇ ਨਹੀਂ ਤਤਵ ਦ੍ਰਿਸ਼ਟੀ ਦੇਖੇ ਮਰਾਰ ਤਦ ਵੀ ਮਰਾਰ ਉਹਨਾਂ ਨੂੰ ਉਹਨਾਂ ਵੱਲ ਹੀ ਝਾਕਦਾ ਉਹ ਐ ਨਹੀਂ ਦੇਖਦਾ ਵੀ ਵਿਚਾਰੇ ਲੱਗੇ ਹੋਏ ਨੇ ਇਹਨਾਂ ਵੱਲ ਮੈਂ ਕੁਝ ਝਾਕੇ ਲਾਵਾਂ ਇਹਨੂੰ ਪੁੱਛੇ ਲਵਾ ਇਹ ਦੱਸੇ ਲਵਾ ਕੁਝ ਉਹ ਦੇਖਦਾ ਇਹਦੀ ਸਦਾ ਹੀ ਨਾ ਲੱਗੇ ਨਾ ਲੱਗੇ ਰਹਿਣ ਉਹ ਤਾਂ ਆਣਾ ਨਹੀਂ ਦਦਨ ਉਹ ਮਿਲ ਲੈ ਕੇ ਨਾ ਲੱਗੇ ਨਾ ਲੱਗੇ ਰਹਿਣ ਕਿਉਂ ਇਹ ਨਹੀਂ ਹਨ ਅੰਤਰਾਤਮਾ ਤੇ ਨਹੀਂ ਪੁੱਛਦੇ ਕਬੀਰ ਨੇ ਅੰਤਰਾਤਮਾ ਤੋਂ ਪੁੱਛਿਆ ਸੀ ਜਦੋਂ ਕੁਝ ਪ੍ਰਾਪਤੀ ਨਾ ਹੋਈ ਉਹਨਾਂ ਨੂੰ ਪੁੱਛਿਆ ਜਾ ਕੇ ਹਰ ਵਕਤ ਪੁੱਛਦਾ ਸੀ ਵੀ ਭਾਈ प्राप्ति ਨਹੀਂ ਹੋ ਰਹੀ ਉਹ ਲਾਰੇ ਲਾਈ ਜਾਂਦੇ ਸੀ ਜਦਾ ਹੀਰੋ ਨਾਲ ਕਹਿੰਦਾ ਵੀ ਰਿਤੀਆਂ ਸਿੱਧੀਆਂ ਪ੍ਰਾਪਤ ਹੋ ਸਕਦੀਆਂ ਨੇ ਇਹਦੇ ਚੋਰ ਕੁਛ ਨਹੀਂ ਹੋ ਲੋ ਕਹਨੋਏ ਤੁਸੀਂ ਮੈਨੂੰ ਪਹਿਲਾਂ ਹੀ ਦੱਸ ਦਿੰਦੇ ਰਿਤੀਆਂ ਸਿੱਧੀਆਂ ਰਿਤੀਆਂ ਸਿੱਧੀਆਂ ਦਾ ਮਾਇਆ ਜਾਂ ਕੀ ਰਿਤ ਸਦਾਵਰਾ ਸਾਡ ਉਹ ਤਾਂ ਵਾਇਆ ਹੈ ਦੀ ਭੁੱਖ ਤਾਂ ਸਾਰੇ ਆਦਮੀਆਂ ਨੂੰ ਲੁਈਆਂ ਫਿਰ ਵਾਇਆ ਧਾਰੀ ਤਾਂ ਜਿਹੜੇ ਨਾ ਸਾਰੇ ਉਹ ਭੁਖਤੀ ਦਾ ਕਰਦੇ ਹੁੰਦੇ ਨੇ ਸਰੀ ਦੁਨੀਆ ਨੂੰ ਮਾਇਆ ਦੀ ਭੁੱਖ ਹੈ ਜੇ ਇੱਥੇ ਆ ਕੇ ਵੀ ਮਾਇਆ ਦੀ ਭੁੱਖ ਹੈ ਰਹਿ ਗਈ ਫਿਰ ਭਗਤੀ ਕਾਦੀ ਹੋਈ ਪਰ ਉਹਨਾਂ ਵਾੜਾ ਵਾਪਸ ਕਰਤੀ ਕਹਿੰਦਾ ਭੁੱਖੇ ਭਗਤ ਨੇ ਕੀ ਜਾ ਆਪਣੀ ਲਈ ਉਹ ਭੁੱਖੇ ਜਿਹਨੂੰ ਮਾਇਆ ਦੀ ਜੋ ਭੁੱਖ ਹੋਵੇ ਭਗਤੀ ਨਹੀਂ ਕਰਦਾ ਹੁੰਦਾ ਇਹ ਭਗਤੀ ਨਹੀਂ ਹੈ ਫਿਰ ਮੈਨੂੰ ਮਾਇਆ ਦੀ ਭੁੱਖ ਨਹੀਂ ਮਾਇਆ ਦੀ ਭਗਤੀ ਨਹੀਂ ਕਰਨੀ ਇਹ ਭਗਤੀ ਮੈਂ ਨਹੀਂ ਕਰਨੀ ਹੈ ਮੈਨੂੰ ਮਾਇਆ ਦੀ ਭੁੱਖ ਹੈ ਔਰ ਭੁੱਖੇ ਭਗਤੀ ਨਹੀਂ ਕਰਦੇ ਹੁੰਦੇ ਉਹ ਸਿਰ ਮਾਇਆ ਦੀ ਪ੍ਰਾਪਤੀ ਵਾਸਤੇ ਹੀ ਉਹਨਾਂ ਦੀ ਭਗਤੀ ਹੁੰਦੀ ਹੈ ਭਗਤੀ ਨਹੀਂ ਮਾਇਆ ਦੀ ਪ੍ਰਾਪਤੀ ਕੋਈ ਭਗਤੀ ਨਹੀਂ ਰੀਤੀਆਂ ਸਿਧੀਆਂ ਵਾਸਤੇ ਕੋਈ ਭਗਤੀ ਨਹੀਂ ਤਾਂ ਫਸਣਾ ਵਾਲੀ ਗੱਲ ਇਹ ਮਾੜਾ ਆਪਣੀ ਲਈ ਜਾ ਮੈਨੂੰ ਕੀ ਲੋੜਾ ਹੋਵਾਂ ਗੂੰ ਸੰਤਨ ਰਹਦੋ ਮੈਂ ਤਾਂ ਸੰਤਨਣਾ ਬੰਗਾ ਮੈਂ ਨਹੀਂ ਕਿਸੇ ਦਾ ਦੇਣਾ ਮੇਰੇ ਦੀਆਂ ਸਿਧੀਆਂ ਬੰਗਾ ਮੈਂ ਕਿਸੇ ਦਾ ਕਰਜ਼ਾ ਦੇਣਾ ਰੀਤੀ ਸਿਧੀਆਂ ਮਾਇਆ ਤੋਂ ਹੋ ਗਿਆ ਵੀ ਭਾਈ ਮੇਰੇ ਤੇ ਲੈਣ ਦੇਣਾ ਕਿਸੇ ਦਾ ਮੈਂ ਪੂਰਾ ਕਰਦਾ ਉਹ ਮੈਂ ਕਰ ਜਾ ਥੋੜੀ ਦੇਣਾ ਕਿਸੇ ਦਾ ਵਿਵਰਤੀ ਸਿੱਧੀ ਬੰਗਾ ਬਾਇਆ ਬੰਗਾ ਵੀ ਬਾਇ ਉਹਦਾ ਤਾਰਨਾਗਲੇ ਜਨਮ ਜਨਾ ਦੇਣਾ ਪਵੇ ਮੈਨੂੰ ਇਹ ਵਿਸ਼ਵਾਸ ਨਹੀਂ ਹੈ ਅਗਲੇ ਜਨਮ ਦਾ ਇਹ ਗੱਲਾਂ ਨੂੰ ਮੈਂ ਨਹੀਂ ਮੰਨਦਾ ਪਰਣਾ ਤੜਿਆਂ ਨੂੰ ਮੈਨੂੰ ਸੰਤ ਲੈਣਾ ਚਾਹੀਦੀ ਹੈ ਮੈਨੂੰ ਤੋੜ ਚਾਹੀਦੀ ਹੈ ਗਿਆਨ ਕੀ ਆਈ ਜਾਂਦੀ ਗਿਆਨ ਦੀ ਤੋੜ ਚਾਹੀਦੀ ਹੈ ਮੈਨੂੰ ਤਾਂ ਰੋਸ਼ਨੀ ਚਾਹੀਦੀ ਹੈ ਉਹ ਕਹਿੰਦੇ ਨਹੀਂ ਫਿਰ ਇਹਦੇ ਨਾਲ ਹੁੰਦੀ ਕਰੋਣਾ ਕਾ ਵੀ ਹੁੜਕੀ ਕਰੀ ਫੇਰੇ ਆਦ ਆਇਆ ਉਹ ਹੋ ਵੀ ਜਿਹੜੇ ਸੰਤ ਮੰਗਰ ਵਾਲੇ ਹੁੰਦੇ ਉਹਦੇ ਉਹ ਤਾਂ ਕਹਿੰਦੇ ਹੀ ਹੁੰਦੇ ਨੇ ਵੀ ਤੈਨੂੰ ਕੁਝ ਨਹੀਂ ਮਿਲਣਾ ਕਿਉਂ ਸਦਾ ਹੋਇਆ ਹੈ ਇਹਦੇ ਨਾਲ ਕੁਝ ਮਿਲਦਾ ਨਹੀਂ ਹੈ ਉਹ ਇਹਨਾਂ ਨੂੰ ਵਾਲਾ ਕਹਿੰਦੇ ਨੇ ਉਹ ਇਹਨਾਂ ਨੂੰ ਵਾਲਾ ਕਹਿੰਦੇ ਨੇ ਇਹ ਤਾਂ ਕਹਿੰਦੇ ਨੇ ਮੰਗਰ ਜਿਹੜਾ ਜਾਊਗਾ ਗਰੇਦੀ ਉਨ ਪਾਊਗਾ ਵੀ ਹੋ ਸਕਦਾ ਉਹਨਾਂ ਕੋਲ ਕੁਝ ਹੋਵੇ ਫੇਰ ਮੰਗਰ ਗਿਆ ਉੱਥੇ ਜਾ ਕੇ ਜਾਗਰਤ ਬੜੇ ਫੇਖਾਂ ਖੋਲੀਆਂ ਇਹ ਲੱਗਦਾ ਅਸਲਾ ਹੈ ਅੰਤਰਾਤਮਾ ਦੇ ਪੁੱਛਾਰੇ ਵੀ ਹੁੜਕੀ ਕਰਾਂ ਇਹ ਪੁੱਛ ਨਹੀਂ ਰਿਹਾ ਕਰ ਰਹੀ ਜਿੰਨਾ ਜਰ ਪੁੱਛ ਨਹੀਂ ਨਾ ਰਹਾ ਅੰਤਰਾਤਮਾ ਤੋਂ ਉਹ ਨਾ ਜਰ ਪਰਮੇਸ਼ਰ ਝਾਕਦਾ ਹੀ ਨਹੀਂ ਫਿਰ ਫੋੜਨਾ ਕਿਥੋਂ ਠੋਟਿਆ ਪਰਮੇਸ਼ਰ ਨੇ ਫੋੜਨਾ ਦਿੱਤਾ ਵੀ ਜਾ ਮਗਰ ਚਲਾ ਜਾ ਫਿਰ ਚੇਤਨੂ ਇਹੀ ਭੁੱਖਾ ਤਮ ਜਾ ਮਗਰ ਚਲਾ ਜਾ ਫਿਰ ਚਲਾ ਗਿਆ ਮਗਰ ਕੰਨਾ ਵੀ ਮਿਓ ਜਦ ਭੁੱਖੀ ਹੈ ਉਹਨਾਂ ਵਰਗਾ ਦਰੂ ਭੁੱਖੀ ਟੋਲਦੇ ਫਿਰਦੇ ਸੀ ਉਪਰ ਵਿਚਾਰੀ ਨੇ ਕਹ ਦੂ ਤਾ ਲਗੋਰਾ ਫਲਾਣਾ ਇਹ ਉਹ ਖੁਦ ਹੀ ਕੱਲ ਦਾ ਕੋਈ ਅਸਰ ਹੋਇਆ ਪਤਾ ਸੀ ਵੀ ਸਦਾਈ ਹੈ ਨਾਲ ਹੀ ਸੀ ਨਾ ਪਰ ਭੁੱਖ ਜ਼ਰੂਰ ਵਧ ਗਈ ਇਹ ਬੰਦੇ ਸੀਗੇ ਵੀ ਗੁਰੂ ਤੋਂ ਕੋਈ ਰਾਤਾ ਮਿਲਿਆ ਹੋਇਆ ਹੈ ਨਹੀਂ ਸੀ ਰਾਤ ਕਿਵੇਂ ਮੜੇ ਰੋਕ ਕੇ ਮੈਂ ਵੜਿਆ ਤੇਰਾ ਆਤਮਾ ਤੋਂ ਤੇ ਕਿਹਾ ਤੇ ਸਮਾਸ਼ ਨੂੰ ਬੈਠ ਦੇ ਤੂੰ ਰਾਹ ਦੇ ਬਸ ਫਿਰ ਵਲ ਗਿਆ ਰਾ ਉਧਰ ਰੋ ਧਿਆਨ ਉੱਥੇ ਸੀ ਉਧਰ ਗੱਲ ਪੈ ਗਈ ਕੰਨ ਚ ਜੇ ਸੋਚਾਂ ਤਾਂ ਉਹ ਕੋ ਵਸੁਰ ਚਲੇ ਆ ਯਾਰ ਮਿਲ ਹੋ ਗਿਆ ਉਹਨਾਂ ਕਲਿੱਕ ਕਰਕੇ ਗੱਲ ਜਦ ਅੱਗੇ ਰੋਟੀ ਕੋ ਲਗੇ ਰਾਣੀ ਕਬੀਰ ਵਾਲੀ ਗੱਲ ਕਬੀਰ ਸਤਗੁਰੂ ਸੂਰ ਮੈਂ ਬਾਣ ਜੋ ਬਾਹਿਆ ਇੱਕ ਇੱਕੋ ਹੀ ਬਾਣ ਨਾਲ ਫੇਰ ਆਨੰਦ ਪਿਆ ਮੇਰੀ ਮਾਏ ਸਤਗੁਰੂ ਦੇ ਪਾਇ ਜਿਹਨੂੰ ਭੁੱਖ ਹੋਵੇ ਉਹਨੂੰ ਮਿਲ ਜਾਂਦਾ ਇਹ ਕੋਈ ਰਿਕਾਰਡ ਨਹੀਂ ਭੁੱਖ ਹੋਵੇ ਤਾਂ ਮਿਲਿਆ ਨਹੀਂ ਅੱਜ ਤੱਕ ਦਾ ਰਿਕਾਰਡ ਹੈ ਜਿਹਨੂੰ ਭੁੱਖ ਹੋਵੇ ਨਾਮ ਦੀ ਉਹਨੂੰ ਮਿਲ ਜਾਂਦਾ ਕਿੱਥੋਂ ਮਿਲਿਆ ਜੇ ਕਿਵੇਂ ਦੇਵੇ ਉਹ ਦੇ ਦਿੰਦੇ ਹਿੱਲਾ ਕੋਈ ਬਣਾਵੇ ਚਾਹੇ ਉਹਨੂੰ ਸਿੱਧਾ ਹੀ ਦੇ ਦਵੇ ਤਦ ਵੀ ਦੇ ਸਕਦਾ ਹੋ ਘਰ ਤਾਂ ਤੇਰੇ ਸਭ ਕੁਝ ਹੈ ਜਿਹੜਾ ਘਰ ਸਭ ਕੁਝ ਹੈ ਬੰਗੇ ਦਾ ਸਹੀ ਕੋਈ ਨਾਮ ਕੋਈ ਬੰਗੇ ਵੀ ਇਹ ਤਸ ਕਰਨਾ ਨਾਮ ਬੰਗਦੇ ਲੈਂਦੇ ਹੀ ਦੀ ਇਹ ਤਾਂ ਦਿੱਤਾ ਹੋਇਆ ਨਹੀਂ ਲੈਂਦੇ ਗੁਨਾਹ ਕੀ ਹੈ ਨਾ ਗੁਰਵਾਲੇ ਸਭ ਉਹ ਦੱਸ ਦਿਆ ਲੈਂਦਾ ਕੌਣ ਸਭ ਪਖੰਡਾ ਹੈ ਕੋਈ ਨਹੀਂ ਲੈਂਦਾ ਗੁਨਾਹ ਕਰੇ ਸਾਰੇ ਵੰਡੇ ਲਿਆ ਕਿਸਨ ਵਗ ਸਾਰੇ ਦੰਦਰ ਹੈ ਨਾ ਕਰ ਜਾ ਜਾਗੇ ਲਿਆ ਕਿਸਨ ਲੈਣ ਦੇ ਕੋਈ ਨਹੀਂ ਸਭ ਇਹ ਰੋਣਾ ਹੀ ਰੋਣਾ ਹੁੰਦਾ ਨਾ ਲੋਕਾਂ ਦਾ ਲੈਣ ਵਾਲੇ ਬੱਲੇ ਬੱਲੇ ਹੁੰਦੇ ਥੋੜੇ ਉੱਤੇ ਲੈਣੇ ਹੁੰਦੇ ਉੱਦਰ ਲੈਣੇ ਵਾਲੇ ਵੀ ਬਹੁਤ ਥੋੜੇ ਹੁੰਦੇ ਆਹ ਪੀੜਾ ਨਾਮ ਲੈਣ ਵਾਲੀਆਂ ਜਿਹੜੀਆਂ ਪੀੜਾ ਕੱਠੀਆਂ ਹੋ ਜਾਂਦੀਆਂ ਨੇ ਆਹ ਹੁਣ ਪੀੜਾ ਹੋਊਗੀ ਤੇ ਫਰਗੜਾ ਸਾਹਿਬ ਨਾਮ ਲੈਣ ਵਾਲਾ ਕੋਈ ਬਰੀ ਨਹੀਂ ਨਾਮ ਲੈਣ ਵਾਲੇ ਉੱਥੇ ਹੀ ਪੀੜਾ ਜਾਂ ਕਰਨਾ ਸੀ ਤੂੜ ਫੱਕੜੀਆਂ ਤੇ ਆ ਕੇ ਉਹਦਾ ਤੂੜ ਫੱਕੜ ਨੂੰ ਉਹ ਤੋੜਨਾ ਉਹ ਤੋੜ ਹੋਰ ਤਰਾਂ ਦੀ ਇਹ ਤੋੜ ਅਸੀਂ ਕਹਿ ਦਿੰਦੇ ਵੈਸੇ ਖੇ ਹੈ ਤੋੜਣੀ ਹੈ ਉਹ ਤੋੜਨੇ ਹੁੰਦੀ ਅਸੀਂ ਆਪਣੀ ਬੋਲੀ ਤੋੜ ਤੋੜਦਾ ਗਿਆ ਹੁੰਦੀ ਰਹੋ ਤਾ ਕੋਈ ਗਿਆਨ ਹੋਣਾ ਅਧਵੀ ਗਿਆਨ ਵਾਲ ਨੇ ਹੋਈ ਪੀੜ ਜਾ ਕੀ ਗੱਲ ਕਿਹਨੂੰ ਸੁਣਾਊਗਾ ਜੇ ਜੇ ਸੱਚ ਬੋਲਣ ਲੱਗ ਜਵੇ ਧੱਕੇ ਮਾਰ ਕੇ ਕਢ ਦੇਣਾ ਉਥੋਂ ਕਿਸੇ ਸਹੇਤੇ ਬੋਲਣ ਨਹੀਂ ਦਿੱਤੇ ਹਗਾਣੋਂ ਦੇ ਹੱਥ ਪੈ ਸਾਬ ਚੜਦੇ ਤਾਂ ਬਹੁਤ ਹੈ ਇਹ ਹਾਲਤ ਸੱਚ ਦੀ ਹੈ ਜਿਹੜੂ ਵੀ ਜਾ ਕੇ ਬੋਲਦੇ ਵੇ ਉੱਥੇ ਸੱਜਣੋਂ ਨਹੀਂ ਬਰਦਾਸ਼ਤ ਕਰਦੇ ਲੋਕ ਐਵੇਂ ਗੱਲਾਂ ਨੇ ਹਾਂ ਨਾ ਕਰ ਅਗਲੀਆਂ ਉਹ ਨੱਕ ਵੀ ਰਗੜਦੇ ਨੇ ਮਾਇਆ ਵਾਸਤੇ ਗਿਆ ਉੱਥੇ ਇਹ ਭਗਤੀ ਸਾਰੀ ਮਾਇਆ ਵਾਸਤੇ ਹੁੰਦੀ ਹੈ ਕਿਸੇ ਕਿਸਮ ਦੀ ਵੀ ਭਗਤੀ ਹੋਵੇ ਮਾਇਆਤਾਰੀ ਆਵੜਦੇ ਨੇ ਜਿਆਦਾ ਲੋਕ ਜਦ ਕਿਸੇ ਧਰਮ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਨੇ ਉਹ ਇਦਾਂ ਬਾਰਡ 9% 99.9% ਲੋਕ ਜਿਹੜੇ ਉਹਦੇ ਨੇ ਮਾਇਆਦਾਰੀ ਹੁੰਦੇ ਮਾਇਆ ਦੇ ਭੁਖੜੇ ਸिखਾਂ ਹੀ ਵਹੀ ਗੱਲ ਕੋਈ ਸਾਰਜ ਲੋਕ ਹੈ ਮਾਇਆਦਾਰੀ ਮਾਇਆ ਦੇ ਭੁਖੜੇ ਗੁਰਬਾਨੀ ਨੂੰ ਰਿਜੈਕਟ ਕਰ ਦਿਓ ਬਿਲਕੁਲ ਇੱਕ ਉਹ ਜੋ ਮਿਲੂਗਾ ਹੁਕਮ ਨਾਲ ਮਿਲ ਰਿਹਾ ਧਰਮ ਦੇ ਵਿੱਚ ਨਾਮ ਦੀ ਗੱਲ ਹੈ ਜਿਹਨੇ ਲੈਣਾ ਆ ਜਾਓ ਇਹ ਲੈ ਲੈਣਾ ਸਾਡੇ ਕੋਲ ਆਉਣ ਦੀ ਲੋੜ ਨਹੀਂ ਇਹਨਾਂ ਬਹਾਦਰ ਲੋਬਾ ਸਾਰੇ ਕੌਣ ਨੇ ਦੀ ਲੋਬੀ ਦਾ ਬਸਾ ਨਾ ਕੀ ਜਾ। ਉਹ ਤੇ ਦਾ ਲੋਬੀ ਤੇ ਭਰੋਸੇ ਨਹੀਂ ਕਰਦੇ। ਤੇ ਜੀ ਭਰੋਸਾ ਹੀ ਨਹੀਂ ਕਰਦਾ ਗੁਰੂ। ਉਹ ਆਪਣੇ ਘਰ ਕਦੋਂ ਬੁਲਾਉਂਦਾ? ਕਦੋਂ ਕਹੂਗਾ ਮੇਰੇ ਕੋ ਆਵੇ। ਕਦੋਂ ਸਪਰਸ ਕਰੂਗਾ? ਆ ਜਿਹੜੇ ਲੋਕ ਏਜੰਟ ਬਣਾ ਬਣਾ ਕੇ ਸਪਰਸਾਂ ਕਰਕੇ ਲੋਕਾਂ ਨੂੰ ਬੁਲਾਉਂਦੇ ਨੇ ਨਾ। ਕਿਉਂ ਬੁਲਾਉਂਦੇ ਨੇ ਫਿਰ? ਕਿਹਨਾਂ ਕੋ ਨਾਮ ਹੈਗਾ? ਕੁਚ ਨਹੀਂ ਹੋ। ਉਹ ਤਾਂ ਆਇਆ ਗੁਰੂ ਚੇਲਾ ਲਾਲਚੀ ਦੋਨੋਂ ਖੇਲੇ ਦੋ। ਉਧਰ ਕਾ ਗੁਰੂ ਵੀ ਲਾਲਚੀ ਹੈ ਲੋ ਵੀ ਹੈ, ਦਰੇ ਵੀ ਲੋ ਵੀ ਨੇ, ਲੋਕ ਵੀ ਲੋ ਵੀ ਨੇ। ਉਹ ਆਪਣੇ ਦੋਤੇ ਆਏ ਆਪਣੇ ਦੋਤੇ ਨੇ ਇੱਕੋ ਲੈਣ ਜਾਂਦੇ ਨੇ ਉਹ ਇਹਨਾਂ ਵਾਲਾ ਵੀ ਖੋਲਦ। ਇਹ ਤਾਂ ਕੁਝ ਉੱਤੇ ਲੈਣ ਜਾਂਦੇ ਨੇ ਉਹ ਇਹਨਾਂ ਵਾਲੇ ਵੇੜ ਪ ਜਾਂਦੇ ਨੇ। ਇਹ ਦੌ ਹੈ ਇਹਨਾਂ ਦੇ। ਗੁਰੂ ਚੇਲਾ ਲਾਲਚੀ ਦੋਨੋਂ ਖੇਲੇ ਦੋ। ਇਹ ਦੋ ਨੇ ਇਹਨਾਂ ਦੇ। ਇਹ ਧਰਮ-ਧਰਮ ਕੋਈ ਨਹੀਂ ਹੈ ਕਿਤੇ ਵੀ ਅਡੇਰਾਂ ਡੂਰਿਆਂ ਤੇ ਸੋ ਬਕਵਾਸ ਦਾਵਾ ਪੈਸਾ ਕਿ ਤੁਹਾਨੂੰ ਡੇਰਾਂ ਕੋਈ ਨਾ ਅਰਬ ਖਰਬ ਰੁਪਏ ਕਿਥੇ ਨੇ ਸ਼ਕਤੀ ਨਹੀਂ ਪਰਤਪਾਨ ਬਿਨ ਭਗਤੀ ਦੀ ਸ਼ਕਤੀ ਤੋਂ ਭਗਤੀ ਦੀ ਹਰਤੇ ਕੀ ਹੁੰਦੀ ਹੈ ਭਗਤੀ ਦੀ ਸ਼ਕਤੀ ਤੇ ਗਿਆਨ ਜਿਹੜੀ ਭਗਤੀ ਦਾ ਗਿਆਨ ਨਹੀਂ ਹੈ ਉਹ ਭਗਤੀ ਦੀ ਸ਼ਕਤੀ ਕੋਈ ਨਹੀਂ ਹੈ ਗਾਂਧੀ ਸ਼ਕਤੀ ਬੁੱਧੀ ਦਾ ਬਲ ਹੁੰਦਾ ਬੁੱਧ ਬਲ ਹੁੰਦਾ ਸਾਰੀ ਗੱਲ ਬੁੱਧੀ ਦੀ ਹੈ ਜੇ ਬੁੱਧੀ ਬਲਵਾਨ ਨਹੀਂ ਹੁੰਦੀ ਤਾਂ ਭਗਤੀ ਨਹੀਂ ਹੋ ਰਹੀ ਬੁੱਧੀ ਬਲਵਾਨ ਹੋ ਫੇਰੇ ਸ਼ਿਵ ਛੋਟਾ ਜਿਹਾ ਲੱਗੂਗਾ ਨਹੀਂ ਸ਼ਿਵ ਤੋਂ ਡਰ ਜਾਂਦੇ ਲੋਕ ਬ੍ਰਹਮਾ ਵਿਸ਼ਨੂੰ ਤੋਂ ਜਾਂਦੇ ਲੋਕ ਦੇ ਵੀ ਦੇ ਬਦਦਰ ਡਿਜੀਨ ਲੋਕ ਕਿਉਂ ਨਹੀਂ ਡਰਦੇ ਕਿਸੇ ਤੋਂ ਉਹ ਤਾਂ ਬਾਲਾ ਹੈ ਸ਼ਕਤੀ ਹੈ ਸ਼ਕਤੀ ਨਾਲ ਡਰਨ ਨਹੀਂ ਦੇ ਸ਼ਕਤੀਸ਼ਾਲੀ ਨਹੀਂ ਡਰਦਾ ਹੁੰਦਾ ਕਿਸੇ ਤੇ ਕਮਜ਼ੋਰ ਡਰਦਾ ਹੁੰਦਾ ਤਾਂ ਤਾਂ ਕੌਣ ਹੁੰਦਾ ਕਮਜ਼ੋਰ ਪੈ ਕਮਜ਼ੋਰੀ ਦਾ ਦੂਆ ਨੂੰ ਇੱਕ ਦਾ ਸ਼ਿਕਾਰ ਖੇਡਦਾ ਫਿਰਦਾ ਸ਼ੇਰ ਦਾ ਉਦੋਂ ਤਾਂ ਸ਼ੇਰ ਲੁਕਦਾ ਫਿਰਦਾ ਡਰਦਾ ਇੱਕ ਜੰਗਲ ਜੀ ਸ਼ੇਰ ਤੋਂ ਡਰਦਾ ਮੈਨੂੰ ਨਾ ਖਾਏ। ਇਹ ਦੋਆਂ ਗੱਲਾਂ ਦਾ ਹੀ ਫਰਕ ਹੈ। ਇੱਕ ਤਾਂ ਸ਼ੇਰ ਨੂੰ ਟੋੜਦਾ ਮਿਲੇ ਮੈਂ ਵਾਰ ਸ਼ਿਕਾਰ ਕਰਾਂ। ਇੱਕ ਸ਼ੇਰ ਤੋਂ ਵਜਦਾ ਫਿਰਦਾ ਵੀ ਮੈਨੂੰ ਮਾਰਨ ਆ ਦੇਵੇ ਖਾ ਰਾਂ ਜਾਵੇ। ਜਿਹੜੇ ਕਮਜ਼ੋਰ ਬੰਦੇ ਆਲੇ ਨੇ ਉਹ ਇਹਨਾਂ ਦੇਵਤਾਂ ਤੋਂ ਡਰਦੇ ਨੇ। ਜਿਹੜੇ ਸ਼ਕਤੀਸ਼ਾਲੀ ਨੇ ਉਹ ਇਹਨਾਂ ਨੂੰ ਲੱਭਦੇ ਨੇ ਵੀ ਕੋਈ ਮਿਲਦਾ ਨਹੀਂ। ਸ਼ਕਤੀਸ਼ਾਲੀ ਦੱਸੀਏ। ਨਾਨਕ ਟੋੜਦਾ ਹੀ ਫਿਰਦਾ ਸੀ ਸ਼ਕਤੀਸ਼ਾਲੀਆਂ ਨੂੰ, ਉਹ ਕੀ ਕਰਦਾ ਸੀ? ਗੁਰੂ ਜਨਨ ਜਦ ਫਿਰਦੇ ਸੀ ਛੋਲਦੇ ਕਹੈਣਾ ਪਟ ਕਦੇ ਛੇਰ ਫਿਰਦਾ ਹੁੰਦਾ ਅਗਰਾਂ ਫਿਰ ਰਿਹਾ ਜਿਵੇਂ ਜੰਗਲ ਛੇਰ ਫਿਰਦਾ ਨਾ ਉਦੋਂ ਦਾ ਫਿਰ ਰਿਹਾ ਵਾਹ ਕੋਈ ਬਦਲ ਜਿਹਦੇ ਸ਼ਕਤੀ ਹੈ ਇਹ ਬੁੱਧ ਵਾਲਾ ਉਹਦਾ ਛੇਰ ਹੁੰਦਾ ਉਹਦੀ ਆਵਾਜ਼ ਛੇਰ ਵਰਗੀ ਹੁੰਦੀ ਹੈ ਗੁਰੂ ਪਰਵਾਹ ਨਹੀਂ ਕਿਸੇ ਦੀ ਪਰਵਾਹੀ ਹੈ ਸੱਚ ਬੋਲਣ ਦੀ ਪਰਵਾਹ ਤੋਂ ਉਹ ਉਹ ਰਾਇਣਾ ਜੁਰ ਉਹ ਨਵੇਂ ਪੜਦਾ ਨਾ ਨੂੰ ਦੋਹ ਜਿਆ ਕਮਜ਼ੋਰੀ ਹੈ ਉਹ ਗਿਆਨ ਦੀ ਉਹਨੂੰ ਕੋ ਕਰਵਾਦੀ ਭੇਨ ਭਗਤੀ ਸ਼ਕਤੀ ਨਹੀਂ ਪਰਤਪਾਣ ਭਗਤੀ ਜਿਹੜੀ ਭਗਤੀ ਵਿੱਚ ਸ਼ਕਤੀ ਨਹੀਂ ਹੈ ਜਿਹੜੀ ਭਗਤੀ আর ਸ਼ਕਤੀ ਇਕੱਠੀਆਂ ਕਰੈ ਨੇ ਆ ਭਗਤੀ ਸ਼ਕਤੀ ਹੈ ਬਾਇਆ ਦੀ ਸ਼ਕਤੀ ਨਹੀਂ ਹੁੰਦੀ ਭਗਤੀ ਦੇ ਵਿੱਚ ਕਦੇ ਵੀ ਸਾਡੇ ਸ਼ਕਤੀ আর ਭਗਤੀ ਇਕੱਠੀਆਂ ਨੇ ਪਖੜਨ ਬੜਾ ਲਿਆ ਨੇ ਸ਼ਕਤੀ ਉਹਦੇ ਗਿਆਨ ਦੀ ਬੁੱਧ ਵੱਲ ਦੀ रूपहीन बुद्ध बल हीर वोए परदेशन दूर ते आई बुद्धि दा बालाय शक्ति है, और कदी शक्ति के संसार दी शक्ति शक्ति नहीं बुद्धि वाणी दी बुद्धि ए ता दो चार दिन दी शक्ति हुंदी है संसार दी शक्ति जेड़ा नाल कह ਸਭ ਝੂਠ ਇਹਨਾਂ ਨੇ ਫਰੇਵ ਕੀਤਾ ਹੈ ਗੁਰੂ ਨਾਲ بڑا ਪਖੰਡ ਧੋਖਾ ਕੀਤਾ ਬਸਨਾਲਿਆਂ ਨੇ ਬੱਦੇ ਵਾਦਰ ਤੋਂ ਲੈ ਕੇ ਹੀ ਪਾਣੀ ਸ਼ੁਰੂ ਹੋ ਗਿਆ ਸੀ ਸਾਰੇ ਦੂਏ ਆਵੜੇ ਡੁਪਲੀਕੇਟ ਬੱਦੇ ਜਿਹੜੇ ਰਲੇ ਹੋਏ ਤਾਂ ਉਦੋਂ ਮੁਸਲਮਾਨਾਂ ਨਾਲ ਉਹ ਆਵੜੇ ਸਾਰੇ ਪਿੱਛੇ ਜਿਹੜੇ ਅੰਗਰੇਜ਼ਾਂ ਨਾਲ ਵਾਲੇ ਇਹਦੀ بڑے بڑے ਉਹ ਆਵੜੇ ਹੁਣ ਸਿੱਖੀ ਚ ਇਹਨਾਂ ਦੀ ਸ਼ਕਤੀ ਸੰਸਾਰੀ ਸ਼ਕਤੀ ਨਹੀਂ ਹੈ ਫਕੀਰ ਨਾ ਸੰਸਾਰੀ ਸ਼ਕਤੀ ਲਈਦੀ ਹੈ। ਉਹ ਸੰਸਾਰੀ ਜੇ ਸ਼ਕਤੀ ਲਈਦੀ ਹੈ ਤਬ ਰਾਜ ਲਈਦਾ ਰਾਜੋ ਨਰਕ ਮਿਲਦਾ ਉਹਦੇ ਵਿੱਚ। ਸਾਡੇ ਜਿਨੀ ਹੈਗਾ ਨਰਕਾਂ ਦੀ ਗੱਲ। ਜਿਹੜੀ ਭਗਤੀ ਦੀ ਗੱਲ ਕਰਦੇ ਨੇ ਉਹ ਹਿੰਦੂ ਕਰਦੇ ਨੇ। ਮੁਸਲਮਾਨਾਂ ਦੀ ਭਗਤੀ ਸ਼ਕਤੀ ਹੋ ਸਕਦੀ ਹੈ ਉਹ। ਬਾਕੀ ਭਗਤੀਆਂ ਜੋ ਹੋਊਗੀ ਸਾਡੇ ਵਾਲੀ ਜੋ ਹੈ ਨਹੀਂ। ਕਿਉਂਕਿ ਸਾਡੀ ਇੱਕੋ ਮਤ ਵੱਖਰੀ ਮਤਾਂ ਨਾਰੀ ਮਤਾਂ ਹੈ। ਦੇਹਾਰਾ ਖਾਲਸਾ ਦਿਹਾੜੀ ਮਤ ਹੈ ਇਹਦੇ ਵਿੱਚ ਬਾਕੀ ਸਾਰੀਆਂ ਵਤਾਂ ਦੇ ਵਿੱਚ ਸਾਰੇ ਧਰਮਾਂ 'ਚ ਸ਼ਕਤੀ ਜਿਹੜੀ ਸੰਸਾਰੀ ਹੈ ਸਿਰਫ ਇੱਕ ਵਤ ਹੈ ਗੁਰਮਤਿ ਵਿੱਚ ਭਗਤੀ ਹੈ ਜੀ ਇਹਨੇ ਪੜਨੇ ਚੱਲਣਾ ਬਸ ਯਾਨੀ ਆਪੇ ਪੜਨੇ ਚੱਲਣਾ ਹੈ ਚੱਲਣ ਦਾ ਉਪਦੇਸ਼ ਦੇਣਾ ਆਪਣਾ ਹਕੂਮਤ ਤਾਂ ਕਰਨੀ ਹੀ ਹੈ ਜੇ ਹਕੂਮਤ ਨਹੀਂ ਕਰਨੀ ਤੇ ਸ਼ਕਤੀ ਘਾਟੀ ਹੈ ਸ਼ਕਤੀ ਦਾ ਹੈ ਉਹ ਨਹੀਂ ਕੋਈ ਜਿਹਨਾਂ ਸ਼ਕਤੀ ਦਾ ਹੰਕਾਰ ਦਾ ਪ੍ਰਤੀਕ ਹੈ ਸ਼ਕਤੀ ਦਾ ਹੰਕਾਰ ਦਾ ਪ੍ਰਤੀਕ ਹੈ ਸ਼ਕਤੀ ਵਾਲਿਆਂ ਨੂੰ ਸਾਗਤ ਕਿਹਾ ਹੋਇਆ ਹੈ ਮੰਗਦੇ ਨੇ ਸਾਗਤ ਨੇ ਸਾਰੇ ਉਹ ਤਾਂ ਤਾਂ ਮਾਰੇ ਰੋਸ ਨਾ ਕੋਈ ਸੰਸਾਰੀ ਲੜਾਈਆਂ ਸਖਤਾਂ ਦੀ ਸਾਰੀ ਇਹ ਸਾਗਤ ਨੇ ਸਾਰੇ ਇਹਨਾਂ ਦੀ ਕੋਈ ਵੀ ਸਿੱਖ ਨਹੀਂ ਸਿੱਖ ਸਕਦੇ ਨਹੀਂ ਹੁੰਦਾ ਸੰਸਾਰੀ ਸ਼ਕਤੀ ਦੀ ਪ੍ਰਾਪਤੀ ਕਰਨ ਵਾਲੇ ਨੂੰ ਹੀ ਸਕਦਾ ਹੈ ਸ਼ਰੀਕ ਖੁਦਾ ਬਣਦਾ ਉਹ ਆਪਣਾ ਹੁਕਮ ਚਲਾਉਂਦਾ ਜਿਹਨੇ ਆਪਣਾ ਹੁਕਮ ਚਲਾਉਣ ਉਹ ਪਰਮੇਸ਼ਰ ਦੇ ਬਾਣੇ ਚ ਰਹਿਊਗਾ ਉਹਦਾ ਤਾਂ ਮਨ ਵਾਦੀ ਹੈ ਐਸੇ ਖਤਰਨਾਕ ਅਸਤੇ ਦਿੱਤੇ ਸਿੱਖੀ ਰੂਹਨ ਦੇ ਮਤਵਾਨਾਂ ਦੇ ਲੋਕਾਂ ਨੇ ਵਿਚਾਰਾਂ ਦੇ ਸੋਚਿਆ ਯਾਰ ਪੁਠਾਰ ਤਾਂ ਦਿੱਤਾ ਹੋਇਆ शक्ति ਸ਼ਕਤੀ ਦੀ ਗੱਲ ਕੀਤੀ जरूर, पर शक्ति ਪਰ ਸ਼ਕਤੀ ਕਿਹੜੀ मत ਦੁਜਾ ਮਤਾਂ ਦੇ ਸਮਝ ਦੇ ਵਿੱਚ ਨਹੀਂ ਆ ਰਿਹਾ ਭਗਤੀ ਦੀ ਸ਼ਕਤੀ ਦੀ ਇਹਦੀ ਸ਼ਕਤੀ ਹੈ ਕਿ ਸਾਨੂੰ ਪਤਾ ਲੱਗ ਜਾਣਾ ਹੈ ਦਰਗਾਹ ਦਾ ਦਰਸ਼ਨ ਹੋ ਜਾਣਾ ਇਹ ਸ਼ਕਤੀ ਹੈ ਭਗਤੀ ਨਿਰੰਕਾਰ ਦੀ ਸੋਝੀ ਆ ਜਾਣੀ ਸ਼ਕਤੀ ਹੈ ਜੈ ਸੋਝੀ ਆ ਗਈ ਫਿਰ ਕੀ ਬਣਦਾ ਫਿਰ ਬਣਦਾ ਦਾਸ ਇਹ ਗੁਰੂ ਨਹੀਂ ਬਣਦਾ ਹੁੰਦਾ ਗੁਰੂ ਕੋਣ ਬਣਦਾ ਗੁਰੂ ਬਣਦਾ ਤੂੰ ਸ਼ਕਤੀ ਹੈ ਉਹ ਗੁਰੂ ਬਣਦਾ ਸਾਖਤ ਗੁਰੂ ਬਣਦਾ ਜਿਹੜਾ ਸੰਤ ਹੈ ਉਹ ਦਾਸ ਬਣਦਾ ਸੇਵਾ ਕੋ ਦੂ ਭਲੇ ਸੇਵਾ ਕਰਦਾ ਉਹ ਨਾ ਸੇਵਾ ਕਰਦਾ ਸੇਵਾ ਕੋ ਦੂਪਲੇ ਇੱਕ ਸੰਤ ਇਕ ਰਾਮ ਰਾਮ ਦੇ ਪਰਥਾਇ ਸੰਤ ਸੇਵਾ ਕਰਦਾ ਲੋਕਾਂ ਦੀ ਸੇਵਾ ਕਰਦਾ ਰਾਜ ਕਰਨਾ ਸੇਵਾ ਦੀ ਹੁੰਦੀ ਬਕਵਾਸ ਹੈ ਸਭ ਰਾਜ ਦੀ ਸੇਵਾ ਆ ਕੈਂਚੀ ਵਾਲੀ ਸੇਵਾ ਹੁੰਦੀ ਹੈ ਜਿਹੜੇ ਪੁਲਸ ਕਰਦੀਆਂ ਨਾ ਉਹ ਸੇਵਾ ਪੁਲਸ ਦਾ ਰਾਜ ਸੇਵਾ ਹੀ ਹੁੰਦੀ ਹੈ ਪਹਿਲਾਂ ਬੈਦ ਦੇ ਕਰ ਲੋ ਡਾਂਗਾ ਵਾਰੋ ਪੈਨੋ ਦਾ ਬੈਦਗਾ ਲੋ ਆਦਮਾ ਗਏ ਆਦਮਾ ਗਏ ਜੇ ਲੋਕ ਪਗੜ ਫੜਾ ਮੈਂ ਚਲਾਉ ਪੁਲਸ ਵਾਲਿਆਂ ਨੂੰ ਕਹਿੰਦੇ ਡਾਂਗਾ ਨਾ ਕੁੱਟੋ ਇਹਨਾਂ ਨੂੰ ਇਹ ਸੇਵਾ ਇਹ ਸੇਵਾ ਨਹੀਂ ਐ ਫਰਾਡ ਐ ਇਹਦਾ ਹਸਾਬ ਦੇਣਾ ਪਊਗਾ ਅੱਗੇ ਬੈਠਾ ਹਸਾਬ ਨਾਲ ਇਹ ਸਿੱਖੀ ਵੀ ਨਹੀਂ ਐ ਇਹ ਤਾਂ ਬਹੁਤ ਅਤਿ ਗਰੀ ਹੋਈ ਗੱਲ ਐ ਸਿੱਖੀ ਤੋਂ ਸਿੱਖੀ ਤੋਂ ਕੀ ਦੂਜੀਆਂ ਧਰਮਾਂ ਤੋਂ ਬਿਗਰੀ ਹੋਈ ਗੱਲ ਐ ਦੁਨਿਆਵੀ ਤੌਰ ਤੇ ਬਿਗਰੀ ਹੋਈ ਗੱਲ ਐ ਅਤਿਆੰਤ ਨੀਚਤਾ ਦੀ ਗੱਲ ਐ ਇਹ ये तो दगा है ये दगा है, है. भी उची सूची जी दलो शायद टूटी सूची जी दलो है ना ये नहीं है ये तो दगा है सदाई mm. विश्वासघात है विश्वासघात तो बड़ा अपराध कोई नहीं करता विश्वासघात ਪਰ ਪਵਲੋਗ ਨਾ ਜਿਹੜੇ ਵਿਸ਼ਵਾਸ ਕਰ ਲਵੇ ਉਹਦੇ ਨਾਲ ਵਿਸ਼ਵਾਸ ਕਰ ਪਰੋਂਗੇ ਤੇ ਪਰਵਾਹ ਕੋਈ ਨਹੀਂ ਪਰ ਹੁੰਦੀ ਅਣੀ ਇਸ ਨਾਲ ਪੁੱਛ ਲੋ ਕਿੱਥੇ ਗਿਆ ਕਿੱਥੇ ਗਿਆ ਉਹਦਾ ਵੰਸ ਕਿੰਨਾ ਅਖਜਰਤੀ ਚਲਾ ਗਿਆ ਕਿੱਡਾ ਬੜਾ ਰਾਸੀ ਰਜੇਸ਼ ਦਾ ਕਿੱਥੇ ਗਿਆ ਕੋਈ ਨਾ ਲੈਣਾ ਲਾਬਦਾਦੀ ਵੀ ਕੋਣ ਹੈ ਇਹ ਦੁਨੀਆ ਰਿਆਸਤਾਂ ਨਾਲ ਕੋਈ ਨਾ ਕੋਈ ਹੈਗਾ ਪਿਛੇ ਨਾ ਉਹਦਾ ਕੁਝ ਵੀ ਨਹੀਂ ਲੱਭਦਾ ਇਹਨਾਂ ਬੂਰਤੀਆਂ ਵਾਲੀਆਂ ਸੀ ਨਾ ਗੋਸਾਰਿਆਂ ਚ ਉਹਨੇ ਬਾੜੀਆਂ ਸੀ ਇਹਨੂੰ ਉਹਦਾ ਕੱਖ ਵੀ ਨਹੀਂ ਲੱਗਦਾ ਦੋ ਜਾਂਦਾ ਸੋਕੂ ਲੱਗਦਾ ਇਹਨੂੰ ਉਹਦਾ ਕੱਖ ਵੀ ਲਾਉਣਾ ਇਹ ਬਹੁਤ ਵੱਡਾ ਅਪਰਾਧ ਹੈ ਇਹਨਿਕ ਕੱਖ ਰਹਿਣ ਦਾ ਪਿੱਛੇ ਲੋਕ ਤਾਂ ਨਹੀਂ ਡਰਦੇ ਨੇ ਨਹੀਂ ਡਰਦਾ ਕੋਈ ਦੇਸਾ ਜੋਰ ਕਰਵੇਂ ਕਿ ਸੋਈਦਾ ਜੋਰ ਦੇਖ ਲਵੇ ਕਰਤੇ ਹੁਣ ਹੋਰ ਕੋਈ ਦੇਖ ਲਵੇ ਤੇ ਕਰਕੇ रिजल्ट આવਣਾ ਬਾਅਦ ਚ रिजल्ट ਆਊਗਾ ਟਾਈਮ ਨਾਲੇ ਆਉਂਦਾ ਏ रिजल्ट ਤਾਂ ਟਾਈਮ ਦੱਸੂਗਾ ਸੱਚ ਇਹੀ ਐ ਇਹੀ ਹੋਊਗਾ ਕਿਆ ਬਲੜ ਦਊਗਾ ਟਾਈਮ ਤਾਂ ਲੱਗਦਾ ਹੀ ਹੈ ਨਾ ਹਾਂਜੀ ਬਿਨ ਭਗਤੀ ਸ਼ਕਤੀ ਨਹੀਂ ਪਰਤਪਾਣ ਪਰਤਪਾਣ ਪਰਤਪਾਣ ਉਹਦੇ ਚੱਲ ਨਹੀਂ ਆਉਂਦੇ ਪਿੰਦ ਚੱਲ ਨਹੀਂ ਪਉਂਦਾ ਆਪਣਾ ਭਗਤੀ ਦੀ ਸ਼ਕਤੀ ਬਿਨਾ ਕਰ ਉਨੀ ਫਾਇਰ ਤਰ ਤਾਗੇ ਸਦੇ ਆ ਕੇ ਘਰ ਚ ਜੇ ਭਗਤੀ ਦੀ ਸ਼ਕਤੀ ਨਹੀਂ ਹੈ ਜੇ ਨਹੀਂ ਫਾਇਰ ਤਰ ਤਾ ਆ ਕੇ ਉਹ ਕਿਸੇ ਦੀ ਸਮਝ ਨਹੀਂ ਆ ਰਿਹਾ ਮੇਰੇ ਕਰਾਇਆ ਹੈ ਰਾਜਾ ਰਾਮ ਤਾਰਾ ਤਾ ਆਊਗਾ ਜੇ ਭਗਤੀ ਹੈ ਜੇ ਹਿਰਦੈ ਸੱਚਾ ਸੁੱਚਾ ਹਿਰਦੈ ਜੇ ਹਿਰਦੈ ਕਪਟਾ ਕਿਵੇਂ ਆਜੂ ਕਪਟੀ ਦੇ ਗਾਲੀ ਉਤੋਂਦਾ ਹੋ ਬਹੁਤ ਕਰਤੋਂ ਹੋਮ ਅਰ ਜਗਦਾਨ ਬਤੇਰੇ ਹੋਮ ਜਗਦਾਨ ਕਰੀ ਜਾਂਦੇ ਦਿਖਾਵਾ ਵੀ ਤੇਰੇ ਨਾਂ ਜਗਦਾਨ ਕਰਦੇ ਆ ਕਪਟ ਰੱਖ ਕੇ ਕਰਦੇ ਨੇ ਸਭ ਕੁਝ ਅੰਦਰ ਕਪਟਾ ਸਾਰੀ ਭਗਤੀ ਦੇ ਜਿਹੜੀ ਭਗਤੀ ਦੇ ਅੰਦਰ ਕਪਟਾ ਉਹ ਕਾਮਯਾਬ ਨਹੀਂ ਉਹ ਤਾਂ ਘਟ ਘਟ ਕੇ ਅੰਦਰ ਕੀ ਜਾਣਤਾ ਹੈ ਜਿਹਨੇ ਸਭ ਕੁਝ ਲਟਾਇਆ ਤੋ ਤੇ ਮੇਰਾ ਮੁਝ ਮੇਰੇ ਨਹੀਂ ਜੋ ਸੱਚਾ ਹੈ ਵੈਸੇ ਲਟਾਇਆ ਵੀ ਕੁਝ ਨਹੀਂ ਕੀ ਲਟਾਇਆ ਸੱਚੇ ਬੋਲੇ ਆ ਲਟਾਇਆ ਕੁਛ ਨਹੀਂ ਗੇ ਥਾਈ ਨਹੀਂ ਸੀ ਕੁਛ ਆਪਣਾ ਐਵੇਂ ਬਣਿਆ ਹੋਇਆ ਸੀ ਮੇਰਾ ਇਸ ਦੀ ਇਵਾਨਤ ਵਿੱਚ ਖਿਆਨਤ ਉਹ ਭਾਰਤ ਵਿੱਚ ਜਿਹੜੀ ਖਲਤੀ ਉਹ ਛੱਡਿਓ ਹੈ ਕੋਈ ਦਿੱਤਾ ਕੁਛ ਨਹੀਂ ਹੈ ਮੈਂ ਆਪਣਾ ਬਨ ਕਹਿਤਾ ਸੀ ਮੇਰਾ ਮੇਰਾ ਹੈ ਨਹੀਂ ਸੀ ਇਹ ਵਿੱਚ ਖਿਆਨਤ ਹੈ ਸੀ ਨਾ ਛੱਡਿਓ ਹੀ ਆ ਨਾ ਉਹ ਦਿੱਤਾ ਉਹ ਕਿਸੇ ਨੇ ਕੁਛ ਨਹੀਂ ਕੀਤਾ ਲੈ ਕੇ ਕੀ ਆਇਆ ਸੀ ਇਹ ਕੀ ਲੈ ਕੇ ਆਇਆ ਸੀ ਕੀ ਲੈਣ ਆਇਆ ਸੀ ਉਹ ਜਿਹੜਾ ਲੈਣ ਆਇਆ ਸੀ ਉਹ ਭੁੱਲ ਗਏ ਹੋਰੇ ਪਾ ਲਿਆ ਨਾਗਾਂ ਦੀ ਪਟਿਆਰੀ ਚੱਕ ਲਈ ਸਿਰ ਤੇ ਉਹਨੂੰ ਜਫਾ ਪਾਉਂਦੇ ਨੇ ਇਹ ਬਾਇਆ ਦਾ ਨਾਗਾਂ ਦੀ ਪਟਿਆਰੀ ਆ ਸੱਪਾਂ ਦੀ ਐਡਾਂ ਕਮਾਰ ਦਿੰਦੀ ਐ ਨਾਮ ਛੜਤਾ ਨਾਗਾਂ ਦੀ ਬਡਾਰੀ ਚੱਕਲੀ ਜਗ੍ਹਾ ਜਗ੍ਹਾ ਨਾਗ ਹੁੰਦੇ ਨਾਲ ਦੇਵਤਿਆਂ ਦੇ ਨਾਗਾ ਤੇ ਹੁੰਦੇ ਵਿਰੋਧ ਹੱtre ਹੁੰਦੇ ਨਾ ਨਾਗ ਸਪਨੀਆਂ ਨਾਗਦਾਰ ਸਰ ਨਾਗਦਾਰ ਸਪਨੀਆਂ ਇੱਕ ਪਾਸੇ ਦੇਵਤੇ ਆਊਗਾ ਦੇਵਤਿਆਂ ਦੇ ਅਦਰਬਾਂਗੇ ਗਣਗਾ ਨਾਲੇ ਨਾਗੋ ਸਬਜ਼ੀ ਵਾਲੇ ਫਿਰ ਦਿੰਦੇ ਸਪਲਾਈ ਸਰ ਤੇ ਉਹ ਡੱਲੀ ਨਾਲ ਕਹਿੰਦੇ ਨੇ ਸ਼ਿਵਜੀ ਦਾ ਉਹ ਨਾਗ ਨੇ ਸਾਰੇ ਉਹਨਾਂ ਨੂੰ ਕੀ ਹੋਇਆ ਅਸੀਂ ਸ਼ਿਵਜੀ ਦੇ ਭਗਤ ਰਹਿ ਓ ਜੰਗਮ ਜੰਗਮਾ ਜੋਗੀ ਜੰਗਮ ਧਿਆਨ ਤਰ ਹੈ ਉਹ ਜੰਗਮ ਨੇ ਜਿਹੜੇ ਸਾਰੇ ਨਾਗ ਉਹਨਾਂ ਨੂੰ ਕੀ ਹੋਇਆ ਸ਼ਿਵਜੀ ਦਾ ਗੁਣ ਉਹ ਕਰਦੇ ਨੇ ਵਿਸ਼ਨੂੰ ਦਾ ਗੁਣ ਉਹ ਦੋਏ ਕਰਦੇ ਨੇ ਜਿਹੜੇ ਤਾਂ ਨੇ ਕਿੱਧਰ ਤੋਂ ਉਹ ਤਾਂ ਵਿਸ਼ਨੂੰ ਦਾ ਗੁਣ ਕਰਦੇ ਨੇ ਉਹਨੇ ਨਾਗ ਨੇ ਦੂਏ ਉਹਦੇ ਤਾਂ ਆਦਮੀਆਂ ਨੇ ਹੋ ਉਹ ਤੇ ਆਪਣੀ ਹੁੰਦਾ ਉਹ ਟੱਲੀ ਵਾਲਿਆਂ ਦੇ ਮੱਥੇ ਤੇ ਉਹਨਾਂ ਨੂੰ ਨਾ ਕਿਹਾ ਹੋਇਆ ਇਹ ਹੋਰੇ ਕੋ ਦਸੀ ਜਾਂਦਾ ਵੀ ਸਭ ਕੋ ਗੁਣਗਾਨ ਕਰ ਲੂਗਾ ਵਿਸ਼ਨੂ ਦੇ ਭਗਤ ਨੇ ਜਿਹੜੇ ਉਹਨਾਂ ਦੇ ਦਰਬ ਵਗੈਰਾ ਦੇ ਗੁਣਗਾਨ ਕਰਦੇ ਨੇ ਦੇਵਤਿਆਂ ਦਾ ਕਿੰਦਰ ਨੇ ਨਾ ਹੀ ਤੋਂ ਗੁਣਗਾਨ ਕਰਦੇ ਸ਼ਿਵੀਆ ਗੁਣਗਾਨ ਕਰਨ ਵਾਲੇ ਸ਼ਿਵ ਭਗਤ ਨੇ ਸਮਝ ਲਈ ਜੰਗਤ ਜੰਗਤ ਬਗਾਇਦੇ ਨੇ ਜੰਗਤ ਜੋਗੀ ਜਗ ਜਗੂ ਜੋਗੀ ਵੀ ਉਹਨਾਂ ਕੰ ਸ਼ਿਵ ਜੀ ਦਾ ਕਰਦੇ ਨੇ ਜੋਗੀ ਜਗ ਜਗੂ ਜੋਗੀ ਪਰ ਘਰ ਘਰ ਫਿਰਕੇ ਨਹੀਂ ਕਰਦੇ ਜੰਗਤ ਉਹ ਘਰ ਘਰ ਫਿਰਕੇ ਕਰਦੇ ਨੇ ਜੋਗੀ ਆਪਣੇ ਥੂੜੇ ਦੇ ਬੈਠ ਕੇ ਕਰਦੇ ਨੇ ਉਸ ਤੀ ਸ਼ਿਵ ਜੀ ਕਰਦੇ ਨੇ ਪਰ ਬੈਠ ਕੇ ਪ੍ਰਚਾਰ ਕਰਦੇ ਨੇ ਪਰ ਆਪਣੇ ਉੱਥੇ ਬੈਠ ਕੇ ਜਿਹੜਾ ਉਹਨਾਂ ਕੋਲ ਚਲਾ ਜਾਵੇ ਉਸ ਨੂੰ ਕਰਦੇ ਨੇ ਸ਼ਿਵ ਨੂੰ ਵੱਡਾ ਕਹਿਣਾ ਹੀ ਉਹਨਾਂ ਨੇ ਸੇਖ ਵੀ ਆਪਣਾ ਗੁਰੂਆਂ ਨੂੰ ਵੱਡਾ ਕਹਿੰਦਾ ਹੀ ਨੇ ਕਿ ਉਹ ਤੋਂ ਗਿਆਨ ਦਿੱਤਾ ਉਹ ਮੈਨੂੰ ਭਗਤਾਂ ਨੂੰ ਵੱਡਾ ਅਸੀਂ ਕਹਣਾ ਹੀ ਆ ਕਿ ਉਹ ਤੋਂ ਕੋਈ ਮਿਲਿਆ ਸਾਨੂੰ ਉਹ ਵੀ ਕਹਿੰਦੇ ਹੋਣਾ ਨਾ ਉਹਨੂੰ ਕੋਈ ਮਿਲਿਆ ਹੋਊ ਪਤਾ ਨਹੀਂ ਕੀ ਬਰਦਾ ਕੀ ਨਹੀਂ ਮਿਲਦਾ ਉਹ ਹੋ ਜਾਣ ਕਿਵੇਂ ਉਹ ਕਿਉਂ ਕਹਿੰਦਾ ਕਿਉਂ ਨਹੀਂ ਕਹਿੰਦੇ ਉਹ ਰੋਲ ਬਤਾਉ ਸਾਨੂੰ ਜੋ ਮਿਲਿਆ ਸੀ ਤਾਂ ਉਸ ਕਰਕੇ ਗਾਜ ਬਿਨ ਏਕ ਨਾਮ ਇਕ ਚਿਤ ਬਿਨ ਏਕ ਨਾਮ ਦੇਖੋ ਏਕ ਨਾਮ ਫੇਰ ਆ ਗਿਆ ਏਕ ਨਾਮ ਉਤਰਿਆ ਹੈ ਤੇਰਾ ਏਕ ਨਾਮ ਉਤਾਰੇ ਸਤਿ ਸਰ ਨਾਮ ਹੈ ਤੇਰਾ ਤਾਂ ਤੇ ਨਾਮ ਦਾ ਫਿਰ ਬਹੁਤ ਨੇ ਕਿਰਤਾਂ ਬਨਾਮ ਨੇ ਸਾਰੇ ਉਹ ਜਿਹਨੇ ਬਾਕੀ ਨਾਮ ਨੇ ਸਾਡੇ ਧਰੇ ਹੋਏ ਨੇ ਜਿਹਨੂੰ ਅਸੀਂ ਨੋ ਕਹਿੰਦੇ ਅਸਲ ਨਾਮ ਹੈ ਕੋਈ ਹੈ ਉਹ ਕੀ ਉਹ ਜਾਸਾ ਤੇਰਾ ਉਹ ਤੇਰਾ ਗਿਆਨ ਹੈ ਤੇਰੀ ਸੋਚੀ ਹੈ ਤੂੰ ਕੀ ਹੈ ਇਹ ਸਵਾਲ ਦਾ ਜਵਾਬ ਹੈ ਉਹ ਨਾਮ ਤੂੰ ਕੀ ਹੈ ਇੱਕ ਕੀ ਹੈ ਇਹ ਸਵਾਲ ਦਾ ਜਿਹੜਾ ਜਵਾਬ ਹੈ ਨਾ ਉਹ ਨਾਮ ਗੁਰਾ ਇੱਕ ਦੇ ਬੁਝਾਈ ਨਾਮ ਨਾਲ ਬੁਝਾਰ ਤੇ ਨਾਮ ਹੋ ਜੀ ਜੈ ਜੀ ਨਾਲ ਬੁਝਾਰ ਤੇ ਸਭ ਸਾਰੀ ਕਾਹ ਬੁਝਾਰ ਤੇ ਡੋਰਾ ਬਿਨਾਂ ਨਾਮਾ ਪਸੂਆ ਉਹ ਜਿਹੜਾ ਗਿਆਨ ਹੈ ਨਾ ਆਤਮ ਗਿਆਨ ਉਹ ਨਾਮ ਹੈ ਉਹਤੇ ਬਿਨਾਂ ਕਿਸੇ ਦੀ ਭਗਤੀ ਕਬੂਲ ਨਹੀਂ ਹੈ ਕੋਈ ਭਗਤੀ ਕਬੂਲ ਨਹੀਂ ਹੈ ਬਿਨ ਇੱਕ ਨਾਮ ਬਿਨ ਇੱਕ ਨਾਮ ਇੱਕ ਚਿਤ ਲੀਨ ਇਤ ਲੀਨ ਇੱਕ ਚਿਤ ਚਿਤੇ ਕੋਹਜ ਵਿੱਚ ਮਨਪਉ ਦੇ ਵਿੱਚ ਮਨ ਚਿਤ ਵਿੱਚ ਸਮਾਜ ਵਿੱਚ ਚਿਤ ਲੋਜ ਸਮਾਜ ਜਿੰਨਾ ਜਰ ਹੁਕਮ ਨੇ ਵਿੱਚ ਚਿਤ ਨਹੀਂ ਸਵਾਉਦਾ ਇੱਕ ਹੋ ਕੇ ਬਿਨ ਏਕ ਨਾਮ ਇੱਕ ਚ ਤਲੀਨ ਫੋਕਟੋ ਸਰਬ ਧਰਮਾਂ ਮਹੀਨ ਕਿਉਂਕਿ ਏਕ ਨਾਮ ਹੁਕਮ ਹੈ ਦੇ ਵਿੱਚ ਲੀਨ ਹੋੜ ਸ਼ਬਦ ਵਿੱਚ ਲੀਨ ਹੋਣਾ ਜੋ ਬਿਨਾ ਕਰਨਾ ਤੇ ਸੁਣ ਵਾਲਾ ਉਹ ਉਹ ਇੱਕ ਜਦ ਤਲੇਰ ਹੋਏ ਤੇ ਇੱਕ ਲੀਨ ਹੋਇਆ ਜੀ ਜਾ ਸਕਦਾ ਸਭ ਫੋਗੜ ਧਰਮ ਨੇ ਬਾਕੀ ਫੋਕਟੋ ਸਰਬ ਧਰਮਾਂ ਬਹੀਨ ਬਾਕੀ ਸਾਰਾ ਕੋਈ ਫੋਕਟ ਹੈ ਧਰਮ ਬਹੀਰ ਧਰਮੇ ਨਹੀਂ ਹਨ ਉਹ ਧਰਮ ਮੰਨੇ ਨੇ ਲੋਕਾਂ ਨੇ ਧਰਮ ਬਹੀਨ ਲੇ ਹੋ ਧਰਮ ਕੀ ਹੈ ਧਰਮ ਹੈ ਸੱਚ ਸੱਚੇ ਧਰਮ ਹੈ ਜਿੱਥੇ ਸੱਚ ਹੈ ਨਹੀਂ ਉਹ ਧਰਮ ਹੈ ਹੀ ਨਹੀਂ ਸੱਚ ਬਹੀਰ ਸੱਚ ਬਹੀਰ ਧਰਮ ਧਰਮ ਨਹੀਂ ਹੁੰਦਾ ਜਿੱਥੋਂ ਸੱਚ ਦਾ ਗਿਆਨ ਨਹੀਂ ਹੁੰਦਾ ਧਰਮ ਨਹੀਂ ਹੁੰਦਾ ਧਰਮ ਲੋਕ ਮੰਨਦੇ ਜਦ ਤੱਕ ਇਸ ਕਰਕੇ ਧਰਮ ਹੈ ਇੱਕ ਹੋ ਗਿਆ ਉਹ ਸੱਚ ਸੱਚ ਦੀ ਜਾਣਕਾਰੀ ਦੇਣ ਵਾਲਾ ਧਰਮ ਧਰਮ ਬਾਕੀ ਮਤਾਂ ਨੇ ਬਾਕੀ ਮਤਾਂ ਨੇ ਉਹ ਲਿਖਿਆ ਵੀ ਸਭ ਧਰਮ ਵਿੱਚ ਸੇਸ਼ਟ ਧਰਮ ਉਹ ਬਤਾਂ ਜੇ ਧਰਮ ਨੇ ਤਾਂ ਸੇਸ਼ਟ ਕੀ ਹੈ ਸੇਸ਼ਟ ਕੋਈ ਹੈ ਸਭ ਧਰਮ ਵਿੱਚ ਸੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰੂ ਹਰ ਨਾਮ ਕੀ ਹੈ ਨੂੰ ਜਾਣ ਫਹਿਲੇ ਸਮਝ ਹਰ ਕਾ ਨਾਮ ਨਹੀਂ ਜਾਣੇ ਨਾਮ ਜਾਣੇ ਆਰਾਮ ਕਾ ਪਿਆਰੇ ਬੂੜੇ ਫਿਰ ਪਾਚੇ ਪਸਤਾਨ ਨਾਮ ਜਾਣੇ ਤੋਂ ਬਣਾ ਜਪਣ ਲੱਗੇ ਕੁਝ ਜਾਣੇ ਤੋਂ ਬਣਾ ਜੜਾ ਕਰਨ ਲੱਗੇ ਉਹ ਫੋਕਟ ਕਰ ਰਹੇ ਜਾਣਿਆ ਕੁਛ ਨਹੀਂ ਕਰਨ ਬਹਿਲੇ ਲੱਗੇ ਸੁਣੀ ਸੁਣਾਈ ਗੱਲ ਹੈ ਬਗਰ ਬਚਲੇ ਹਾਂਜੀ ਸੋ ਪ੍ਰਸਾਦ ਟੋਟਕ ਛੰਦ ਜੈ ਜੰਪਤ ਜੁਗਨ ਜੁਜੂੰ ਪਿਛਲੇ ਛੰਦ ਵਿੱਚ ਸਾਲੇ ਧਰਬ ਤਕਰੀਬਨ ਗਿਣ ਦਿੱਤੇ ਸਾਰੀਆਂ ਬੱਤਾਂ ਗਿਣ ਦਿੱਤੀਆਂ ਰਿਜ਼ਲਟ ਕੀ ਕੱਢਿਆ ਰਿਜ਼ਲਟ ਕੱਢ ਕੇ ਪਿਛਲੀ ਪੰਕਤੀ ਦੱਸ ਫੋਕਟੋ ਸਰਵ ਧਰਮਾਂ ਮਹੀਨ ਬਾਅਦ ਫੋਕਟੋ ਸਭ ਧਰਮਾਂ ਪਿਛਲੇ ਅਗਲਾ ਛੰਦ ਸ਼ੁਰੂ ਹੋ ਗਿਆ ਕਹਿੰਦੇ ਕਰਨਾ ਕੀ ਹੈ ਜੈ ਜੰਪਤ ਜੋਗੋ ਇਹ ਕਹਿੰਦੇ ਤੁਸੀਂ ਕੀ ਕਰਿਓ ਪਿਛਲੇ ਤੜਪ ਤੜ ਸਾਰੇ ਫੋਕੜ ਨੇ ਹੁਣ ਤੁਸੀਂ ਕੀ ਕਰਨਾ ਸਵਾਲ ਹੈ ਐਨੀ ਵਈ ਅਗਲਾ ਛੰਦ ਪਿਛਲੇ ਨਾਲ ਅਲੱਗ ਹੈ ਕਥਾ ਇਹ ਜਿਹੜੀ ਕਥਾ ਹੁੰਦੀ ਹੈ ਪਿਛਲੇ ਦੇ ਨਾਲ ਅਗਲੀ ਗੱਲ ਰਿਲੇਟਡ ਹੁੰਦੀ ਹੈ ਤੇ ਕਥਾ ਕਿਵੇਂ ਬਣੂ ਸਾਰੇ ਸਰ ਭੋਗੜ ਕਹਿ ਕੇ ਕਹਿੰਦੇ ਕਰਨਾ ਕੀ ਹੈ ਤੁਸੀਂ ਇਸ ਸਮੇਂ ਵਿੱਚ ਹੁਣ ਜਿਹੜਾ ਜੋਗਾ ਹੈ ਹੁਣ ਤੁਸੀਂ ਕੀ ਕਰਦੇ ਸਵਾਲੇ ਜੈ ਜੰਪਤ ਜੈ ਜੰਪਤ ਜੁਗਣ ਜੁਹ ਜੂੰ ਜੈ ਜੰਪਤ ਅਚ ਜੁਗਣ ਜੁਹ ਜੂੰ ਜੁਹ ਜੁਗ ਇਹ ਮੈਨੂੰ ਉਹਨੇ ਹੋਰ ਆਹ ਲੱਗਦਾ ਹੈ ਜੈ ਜਦ ਪਤਾ ਜੋਗਣ ਜੋ ਜੋ ਜੋ ਹਮ ਜੋ ਜੋ ਹੁੰਦੀ ਐ ਕਿਸੇ ਪਿੰਡ ਦੀ ਜੋ ਹੁੰਦੀ ਐ ਏਰੀਆ ਜੂਦਾ ਬਸਰਦਾ ਏਰੀਆ ਜੋ ਜੋ ਆਪਣੀ ਜੂਝ ਰਹਿ ਕੇ ਡਰੇ ਡਰੇ ਸੱਚ ਦੇ ਦਾਰੇ ਚ ਰਹਿ ਕੇ ਖਤ ਦਾ ਦਾ ਰਾਖੀ ਸੁਨ ਤੋਖ ਦਾ ਦਾ ਰਾ ਸੱਚ ਦਾ ਦਾ ਜਿਹੜਾ ਸਤ ਸੁਨ ਤੋਖ ਦਾ ਦਾ ਰਾ ਉਹ ਸੱਚ ਦਾ ਦਾ ਬਾਆ ਦੀ ਕਿਸੇ ਵੀ ਇਛਾ ਦਾ ਤਿਆਗ ਕਰਕੇ ਫਿਰ ਜਪਿਆ ਜਾ ਸਕਦਾ ਉਹਦਾ ਪਹਿਲਾ ਜਿਹੜਾ ਜਪਣਾ ਉਹ ਨਿਸਫਲ ਹੈ ਜਪਿਆ ਹੀ ਜਪੇ ਨਹੀਂ ਜਾ ਸਕਦਾ ਜੇ ਕਿਸੇ ਵੀ ਕਿਸਮ ਦੀ ਜਰਾ 마ਸ਼ਾ ਵਾਲੀ ਬਾਸ਼ਨਾ ਜਿੰਨਾ ਚਿਰ ਹਿਰਦੇ ਚ ਹੈਗੀ ਹੈ ਉਹ ਨਾਮ ਜਪਿਆ ਹੀ ਨਹੀਂ ਹੋਇਆ ਜਪਿਆ ਜਪੇ ਨਹੀਂ ਰਿਹਾ ਕੁਝ ਹੋਰੇ ਕਰੇ ਜੇ ਜਪਰਿਆ ਤਾਂ ਫੜ ਲਈ ਤੋ ਕਤੇ ਅੰਤਵਲਾ ਹੋ ਤਿਆਂ ਦਿਨ ਉਹ ਜਪੜ ਤਿਓ ਇਸੇ ਕਰਕੇ ਪਰਡੇ ਨੂੰ ਧੋ ਕੇ ਧੂਪ ਦੇਣ ਦੀ ਗੱਲ ਕੀਤੀ ਸੀ ਪਹਿਲਾਂ ਤਦੂ ਦੇਖੋ ਜਾਓ ਜਪਣ ਫੇਰ ਲਗੋ ਜਪਣ ਬਾਅਦ ਚਲ ਅਗਲੇ ਵਾਲਾ ਪੜਨਾ ਸਾਫ ਕਰ ਲਓ ਉਹ ਨਾ ਪਹਿਲਾਂ ਹੀ ਦੇਣ ਲੱਗੇ ਪਹਿਲਾਂ ਜਪਣ ਲੱਗੇ ਪੜਨਾ ਸਾਹਿਬ ਕਹਿੰਦਾ ਉਹ ਪੜਨਾ ਜਿਹੜਾ ਦੱਸ ਰਿਹਾ ਉਹਦਾ ਵੀ ਸਾਫ ਨਹੀਂ ਸੰਤਾਂ ਨੇ ਆਪਣੇ ਪੜਦੇ ਸਾਫ ਨਹੀਂ ਦੂਏ ਦਾ ਕੀ ਕਰਨਾ ਉਹ ਕਹਿੰਦੇ ਨਹੀਂ ਪੜਨਾ ਸਾਫ ਕਰ ਲੂ ਉਹ ਕਿਹੜਾ ਰਾਮ ਜਪਾਉਂਦੇ ਨੇ ਇਹ ਕਰਦੇ ਨੇ ਕੁਝ ਉਹਦਾ ਗੋਲੂ ਚੇਲਾ ਲਾਲਚੀ ਦੋਨੋਂ ਖੇਲੇ ਦਾ ਵਾਲੀ ਗੱਲ ਆ ਬੰਦੇ ਆ ਜਾਣੀ ਗੱਲ ਰਸੀ ਹੋਈ ਹੈ ਇਹ ਉਹਨਾਂ ਨੇ ਦਸੀਆ ਜਿਨ੍ਹਾਂ ਨੇ ਕਾਮਯਾਬੀ ਹਾਸਲ ਕੀਤੀ ਕਾਮਯਾਬੀ ਦੀ ਚੀਜ਼ ਕੀ ਹੈ ਜੈ ਜੰਪੋ ਜੈ ਕਹਿੰਦੀ ਹੈ ਬੰਝ ਜਤਨ ਤੁਸੀਂ ਆਪਣਾ ਨਹੀਂ ਜਿੱਤੇ ਜਾਣਦੇ ਹੋਤੇ ਮਨ ਨਹੀਂ ਜਿੱਤੇ ਜਾਂਦੇ ਕਿਸੇ ਤੇ ਵੀ ਇਹ ਸਮਝ ਲਓ ਸਤਗੁਰੂ ਤੋਂ ਜਿੱਤਿਆ ਕਿਵੇਂ ਜਾਊਗਾ ਮਨ ਜੰਪੋ ਜਪਣਾ ਜਾਣਨਾ ਹੈ ਮਨ ਕੇ ਮੈਂ ਜਾਂ ਬਹੁਤ ਦੀਆਂ ਕਮਜ਼ੋਰੀਆਂ ਵੀ ਜਾਣਨੀਆਂ ਨੇ ਤੇ ਤਾਕਤਾਂ ਵੀ ਜਾਣਨੀਆਂ ਨੇ ਦੁਸ਼ਮਣ ਦੀ ਕਮਜ਼ੋਰੀ ਵੀ ਜਾਣਨੀ ਤੇ ਦੁਸ਼ਮਣ ਦੀ ਤਾਕਤ ਵੀ ਜਾਣਨੀ ਮਨ ਨੂੰ ਜਿੱਤਣ ਦੀ ਜਿਹੜੀ ਹੈ ਪਹਿਲਾਂ ਵਿਧੀ ਉਹਨੂੰ ਜਾਣ ਲੋ ਪਹਿਲਾਂ ਉਹਨੂੰ ਸਮਝੋ ਕਦੇ ਸਾਡਾ ਮਨ ਜਿੱਤਣਾ ਹੁਣ ਤਾਂ ਕੋਈ ਗੱਲ ਨਹੀਂ ਹੈ ਵਾਝ ਤੇ ਗਿਆ ਗੱਲ ਬਣ ਗਈ ਜੋਗ ਉਹਦੇ ਜੋਗ ਅਸਾਂ ਦੇ ਯੋਗ ਜਿਹੜਾ ਲਫਜ਼ ਹੈ ਇਹੋ ਕੋਤੇ ਯੋਗ ਬਣਿਆ ਹੋਇਆ ਲਫਜ਼ ਹੈ ਇਹੋ ਕੋਤੇ ਯਾ ਜੋੜ ਬਣਿਆ ਹੋਇਆ ਲਫਜ਼ ਹੈ ਜੁਦ ਨੂੰ ਕਹਿੰਦੇ ਦੋ ਚੀਜ਼ਾਂ ਦੇ ਜੋੜ ਨੂੰ ਯੋਗ ਕਹਿੰਦੇ ਨੇ ਯੋਗ ਯੋਗਨ ਦੋ ਚੀਜ਼ਾਂ ਦਾ ਜੋੜ ਜਿਵੇਂ ਬਗਣਾ ਦੋ ਵੇਲੇ ਮਿਲਦੇ ਨੇ ਦੋ ਜੀਵਾਂ ਦੇ ਮਲਾਬਦਾਂ ਨੂੰ ਯੋਗ ਹੈ ਯੋ ਜਾਂ ਸ਼ੁਰੂ ਹੁੰਦਾ ਹੈ ਆਤਮਾ ਹੋਰ ਮਾਇਆ ਦੁਹਾਨਾ ਬੇਲ ਹੁੰਦਾ ਫਿਰ ਯੁਗ ਸ਼ੁਰੂ ਹੁੰਦੇ ਜੁਕੇ ਨਹੀਂ ਹੁੰਦਾ ਜਦ ਸ਼ੁਰੂ ਹੁੰਦਾ ਜਦ ਆਤਮਾ ਸਰੀਰ ਚ ਨਹੀਂ ਜਾਂਦੀ ਯੁਗ ਜਦ ਸ਼ੁਰੂ ਹੁੰਦਾ ਜਦ ਆਤਮਾ ਸਰੀਰ ਚ ਪਰਵੇਸ਼ ਕਰੇ ਮਾਇਆ ਦੇ ਨਾਲ ਜੁੜ ਜਵੇ ਫਿਰ ਯੁਗ ਸ਼ੁਰੂ ਹੁੰਦੇ ਉਹ ਤਾਂ ਪਹਿਲਾ ਕੋਈ ਯੁਗ ਨਹੀਂ ਜਿਹੜਾ ਸਾਧ ਹੈ ਉਹ ਉਹਦਾ ਨਵਾਂ ਹੈ ਉਹ ਸੱਚ ਨਾਲ ਸੱਚੇ ਜੁੜਿਆ ਹੋਇਆ ਜੁੜਦਾ ਹੁੰਦਾ ਹੀ ਉਹ ਤਾਂ ਸੱਚੇ ਸੱਚੇ ਨਾਲ ਜੁੜੇ ਆਏ ਸਾਰੇ ਉਹ ਤੇ ਘਰ ਘਰ ਗੁਰਮੁਖ ਭਗਤੀ ਹੁੰਦੀ ਉਹ ਬਾਹਰ ਨਾਲ ਜੁੜਦੀ ਗੱਲ ਐ ਹੀ ਨਹੀਂ ਆਏ ਜਿਹੜੇ ਯੋਗ ਨੇ ਦੂਏ ਬਾਹਰ ਇਹ ਤੇ ਨੇ ਯੋਗ ਚਾਰ ਨਹੀਂ ਹੁੰਦੇ ਸਾਜੋ ਦਾ ਮਤਲਬ ਸੱਜਿਆਂ ਜੁੜੇ ਹੋਏ ਨੇ ਸਾਰੇ ਦੋ ਜੀ ਜਾਣੇ ਵੇਲ ਤੋਂ ਯੋਗ ਬੁਲਦੇ ਜਦੋਂ ਮਾਇਆ ਦੇ ਨਾਲ ਸਰੀਰ ਦਾ ਝੋਲ ਹੋ ਗਿਆ ਨਾ ਦੋਏ ਅੰਡ ਤੇ ਬ੍ਰਹਮੰਡ ਹੋ ਗਏ ਅੰਡ ਤੇ ਬ੍ਰਹਮੰਡ ਹੋਏ ਨੇ ਜਿਹੜਾ ਮਾਇਆ ਦਾ ਅੰਡ ਹੈ ਜਿਹੜੇ ਅੰਡਕੋਸ਼ ਹੈ ਉਹ ਕਾਹਦੇ ਨਾਲ ਜੁੜਦਾ ਹੈ ਉਹ ਚੇਤਨਾ ਕਰਕੇ ਹੀ ਜੁੜਦਾ ਹੈ ਬੀਜ ਤਾਂ ਜੰਬਦਾ ਹੈ ਜੇ ਬੀਜ ਵਿੱਚ ਆਤਮਾ ਹੈਗੀ ਹੈ ਜੇ ਬੀਜ ਵਿੱਚ ਜੇ ਹੀ ਨਹੀਂ ਵੀ ਜਿਹੜਾ ਸਾਡੇ ਕੋਲ ਜਣਸਾਂ ਨੇ ਸਾਡੇ ਕੋਲ ਜਰਾ ਕਿਸੇ ਇੱਕ ਲੱਗ ਜਾਵਾਲਦੋ ਜਾਂ ਗਰਭ ਕਰਦੋ ਜਬਦ ਨਹੀਂ ਜਬਦੋ ਜੇ ਵਿੱਚ ਆਤਮਾ ਰਹੇਗੀ ਜਬ ਇਹ ਉਹ ਨਹੀਂ ਜਬਦੋ ਤੇ ਬਾਕੀ ਤਾਂ ਚੀਜ਼ ਹੋਦੀਆਂ ਇਹ ਜਬ ਲਗਾਤੇ ਨਹੀਂ ਮੈਂ ਜਦਾ ਹੀ ਉਹਦੇ ਜਿਹੜੇ ਵਿੱਚ ਸੈੱਲ ਡੈੱਡ ਹੋ ਜਾਂਦੇ ਆਤਮਾ ਨਿਕਲੀ ਸੈੱਲ ਡੈੱਡ ਜੈ ਸਭ ਸਮਾਂ ਜਿਹੜਾ ਹੈਗਾ ਸਮਾਂ ਮਾਇਆ ਤੋਂ ਬਿਨਾਂ ਨਾ ਪੈ ਰਿਉਂਦਾ ਕੁਕਾ ਸਮੇਂ ਦਾ ਉਸਰੇ ਮਾਇਆ ਤੇ ਹੁਣ ਜਿਹੜੇ ਸਾਇੰਸਦਾਨ ਵੀ ਸਮਾਂ ਨਾਪਦੇ ਨੇ ਮਾਇਆ ਤੋਂ ਨਾਪਦੇ ਨੇ ਕਿੰਨੀ ਪ੍ਰਾਣੀਏ ਆਤਮਾ ਦਾ ਪ੍ਰਾਣੀ ਹੁੰਦੀ ਹੋਣੀ ਸੱਚ ਪ੍ਰਾਣਾ ਹੁੰਦਾ ਆਤਮਾ ਦਾ ਕੋਈ ਪ੍ਰਭਾਵ ਆਵਾਜ਼ ਤੇ ਸਮੇਂ ਦਾ ਪ੍ਰਭਾਵ ਹੈ ਕੋਈ ਨਹੀਂ ਚਾਹੇ ਦੋ ਹਿੱਸਿਆਂ ਚ ਰਹੇ ਜਾਂ ਇੱਕ ਚ ਰਹੇ ਏ ਇਹ ਜਿਹੜਾ ਜੀਵਾਤਮਾ ਜੀਵ ਹੈ ਨਾ ਜਿਹੜਾ ਇਹ ਰੂਪ ਦੀ ਕੋਈ ਕਹਿ ਸਕਦਾ ਇਹ ਕਦੋਂ ਨਾ ਕਾ ਨਹੀਂ ਸਕੇ ਕੋਈ ਤੂੰ ਕਦ ਕਾ ਇਹਦੀ ਵੀ ਕੋਈ ਦੱਸ ਸਕਿਆ ਕਦੋਂ ਦਾ ਪਜਾਗਾ ਜਨਮ ਭੂਤ ਆਦਮੀ ਦੀ ਦਾ ਖੇਰਲੀ ਜੁਨੀ ਹੈ ਪਹਿਲੀ ਜੁਨੀ ਜਿਹਨੇ ਭੁਗਤਾ ਕੌਣ ਦੱਸੂ ਇਹਨੂੰ ਸ੍ਰਿਸ਼ਟੀ ਕਦੋਂ ਦਾ ਚੱਲੂ ਹੋਈ ਹੈ ਕੌਣ ਦੱਸੂਗਾ ਜੋ ਕਰਤਾ ਸੱਚੀ ਕੋ ਸਾਜੇ ਆਪੇ ਜਾਣੇ ਅੱਜ ਲੋਕਾਂ ਦਾ ਸੁਣੀ ਚਲ। ਇਸ ਕਰਕੇ ਆਤਮਾ ਬਾਰੇ ਵੀ ਕਿਸੇ ਐਸੇ ਨਹੀਂ ਦੱਸਿਆ ਨਾ ਉਹ ਦੱਸ ਸਕਦਾ। ਇਹ ਤਾਂ ਪ੍ਰਭਾਵ ਕੋਈ ਨਹੀਂ ਹੈ ਸਮਝ ਲੋ। ਪ੍ਰਾਣੀ ਨਹੀਂ ਹੁੰਦੀ ਹੈ ਦੱਸੇ ਕੌਣ? ਜੋ ਗਿਰਫ ਮਾਇਆ ਤੋਂ ਹੀ ਪਤਾ ਲੱਗਦਾ ਸਮਝੇਗਾ। ਮਾਇਆ ਕਿੰਨੀ ਪ੍ਰਾਣੀ ਹੋ ਚੁੱਕੀ। ਕਿੰਨਾ ਇਹ ਤਾਂ ਪ੍ਰਭਾਵ ਪਹਿ ਚੁੱਕਿਆ ਹੀ ਸਾਇੰਸ ਕੋਚ ਕਰ ਲਈ ਔਰ ਕੀ। ਪਰ ਕੋਈ ਤਰੀਕਾ ਨਹੀਂ। ਜੋ ਕੋ ਨਾ ਮਾਇਆ ਤੇ ਮਾਇਦਬਨਾ ਜੁਗਰੀਤ ਜੋੜ ਮਾਇਆ ਦੇਤੇ ਬਾਇਦਾ ਆਤਮਾ ਨੂੰ ਸਰੀਰ ਤਾਂ ਚੱਲਣਾ ਇਹ ਜੁਗ ਹੈ ਹੁਣ ਜੋਗਾ ਸਾਡੇ ਕੋਲ ਇੱਕ ਕਲ ਜੋ ਕਾਦੇ ਕਹਿੰਦੇ ਆ ਸੀ ਕਲ ਤਾਂ ਕਹਿੰਦੇ ਆ ਇਸ ਕੋਈ ਦੇ ਵਿੱਚ ਉਧਰ ਸਾਡੇ ਕਲਪਨਾ ਚੱਲਦੀ ਏ ਬੁੱਝ ਕਲ ਜੋ ਤਾਂ ਕਹਿੰਦੇ ਆ ਕਲਪਨਾ ਕਰਦਾ ਹੈ ਨਾ ਜੀਵ ਕਲਪਨਾ ਕਰਦਾ ਕਰਕੇ ਉਹ ਕਲਜੋਗ ਕਰ ਦਿੰਦੇ ਜੀਵ ਕਲਜੋਗ ਹੀ ਨਹੀਂ ਹੈ ਜੀਵ ਨੇ ਪੈਦਾ ਕੀਤਾ ਹੈ ਕਲਜੋਗ ਅੰਦਰ ਆਪਣੇ ਕਲਜੋਗ ਆਪ ਪੈਦਾ ਕਰ ਲੈ ਸੱਜੋਗ ਪੈਦਾ ਕਰ ਸਕਦਾ ਸੱਜੋਗ ਦੀ ਭੁੱਖ ਪੈਦਾ ਕਰ ਸਕਦਾ ਇੱਛਾ ਕਰ ਸਕਦਾ ਹਾਂ ਕਲਜੋਗ ਦੀ ਇੱਛਾ ਛੱਡ ਦੇ ਸੱਜੋਗ ਆਪੇ ਹੋ ਗਿਆ ਅਲਜੋ ਕੰਦ ਕਰ ਲਵੇ ਛੰਦ ਕਰ ਲਵੇ ਸਜੂ ਆਪੇ ਹੋ ਗਿਆ ਜੇ ਤਾਂ ਮਿਲਿਆ ਹੋਇਆ ਆਪਣੇ ਨਾਲ ਬੋਲਦੇ ਜੇ ਤਾਂ ਆਪਣੇ ਕਿਤਨੂ ਮਿਲਿਆ ਹੋਇਆ ਆਪਣੇ ਬੋਲ ਨਾਲ ਮਿਲਿਆ ਹੋਇਆ ਫਿਰ ਤਾਂ ਕਲਪਨਾ ਬੰਦ ਆ ਫਿਰ ਤਾਂ ਇਹਦਾ ਸੱਚ ਹੋ ਗਿਆ ਜੇ ਮਾਇਆ ਦੀ ਭੁੱਖਾ ਕੋਈ ਸੋਚਦਾ ਮਾਇਆ ਬਾਰੇ ਸੋਚਦਾ ਕਲਪਨਾ ਕਰਦਾ ਫਿਰ ਕਲਜੂ ਇੱਕ ਘੜੀ ਨਾ ਮਿਲਤੇ ਤਾਂ ਕਲਜੂ ਹੁੰਦਾ ਕਲਜੂ ਹਰ ਵਕਤ ਨਹੀਂ ਰਹਿੰਦਾ ਜੇ ਉਹ ਜੋ ਗੁਰ ਜਿਹੇ ਇਹ ਸਮਝਦੇ ਰਹੇ ਜੁਗ ਫਿਰ ਹਰ ਵਕਤ ਗਲਜੂ ਰਹੇ ਹਰੇਕ ਦੇ ਅੰਦਰ ਫੇਟੇ ਸਰਕਾਰੇ ਦਾ ਸਵਾਲੇ ਪੈਸਾ ਨਹੀਂ ਦੁੱਦਾ ਇੱਥੋਂ ਸਰਕਾਰਾ ਕੋਈ ਹੋ ਜੂ ਇਹ ਕਲ ਜੋ ਨਾ ਦੀ ਇਹ ਜਿਹੜੇ ਇਹਨਾਂ ਨੇ ਦੱਸੇ ਤੇ ਇਸ ਨਾ ਦੀ ਕੋਈ ਚੀਜ਼ ਹੈ ਦੀ ਜੀ ਜੋ ਕੈਸਾ ਨਹੀਂ ਜਿਹੇ ਦੱਸੇ ਤੇ ਸਾਨੂੰ ਇਹ ਗੱਲ ਅਲੱਗ ਆ ਵੀ ਜਿਹੜੇ ਸਾਡੇ ਮਹਾਂਪੁਰਖ ਹੋਏ ਨੇ ਨਾ ਜਿਹਨੂੰ ਅਸੀਂ ਮਹਾਂਪੁਰਖ ਮੰਨ ਲਿਆ ਉਹ ਵਾਪਣ ਦੇ ਛਲੇ ਤੇ ਬੱਬਰ ਵਾਲੇ ਜੋ ਕੁਝ ਹੋਣਾ ਕੋ ਦੱਸਿਆ ਹੋਇਆ ਉਹਨਾਂ ਨੇ ਜੋ ਗੱਲ ਹੀ ਖੋਜੇ ਇੱਥੇ ਖੋਜ ਦੱਸਿਆ ਹੋਇਆ ਤੇ ਜੋ ਗੁਰਬਾਣੀ ਦੱਸਿਆ ਹੋਇਆ ਉਹ ਕਹਿੰਦੇ ਗੁਪਤੇ ਬੁੱਝੇ ਮਨ ਜਿਹੜਾ ਹੈ ਨਾ ਸ੍ਰਿੰਡਲ ਕਰ ਜਾਂਦਾ ਹੈ ਹੋ ਜਾਂਦਾ ਜਦ ਆਪਣੇ ਆਪ ਨੂੰ ਜਾਣਦਾ ਹੈ ਜਪਦਾ ਆਪਣੇ ਆਪ ਨੂੰ ਜਗ ਕੋ ਫੇਰ ਪਤਾ ਲੱਗਦਾ ਜੁਗਾਂ ਦਾ ਪਹਿਲਾਂ ਕਿ ਪਤਾ ਲੱਗ ਜੂਗਾ ਗੁਰਮੁਖ ਬੁੰਜਾ ਜੋ ਕਿ ਤਤਵਾਰੇ ਘਟਕੜ ਵਰਤਾਂ ਉਧਰ ਬੁਝਾਰੇ ਜਿਹੜਾ ਆਹ ਜਪੂ ਜਾਂ ਜਪਣ ਲੱਗਦਾ ਜੁਗ ਕਲਯੁਗ ਪਹਿਲਾਂ ਹੀ ਖਤਮ ਹੋ ਜਾਂਦਾ ਜਿਹਦੇ ਅੰਦਰ ਕਲਯੁਗ ਹੈ ਉਹ ਨਾਮੇ ਨਹੀਂ ਜਪ ਸਕਦਾ ਜਪੇ ਜਾਂ ਜਪਣ ਲੱਗੂ ਜਦ ਖਤਮ ਕਰ ਜੋ ਤਾਂ ਪਹਿਲਾਂ ਕਲਯੁਗ ਖਤਮ ਹੋ ਜਾਂਦਾ ਹੈ ਜਦ ਤੱਕ ਜਪਦੇ ਨੂੰ ਵੀ ਸੁਣਦੇ ਨੂੰ ਵੀ ਕਰ ਜੋ ਰਹਿਤ ਥੱਲੇ ਡੁੱਬਾ ਰਹੇ ਲੋਕਾ ਹੈ ਰਹੇ ਅੰਦਰ ਫੇਰ ਵੀ ਗੱਲ ਨਹੀਂ ਪੈਂਦੀ ਅੰਦਰ ਸਾਡੇ ਮਾਇਆ ਦੀ ਭੁਖ ਹੁੰਦੀ ਹੈ ਮੂਹ ਦੇ ਵਿੱਚ ਰਹਉਂਦੇ ਅੰਦਰ ਕੁਝ ਹੋ ਹੈ ਮੂਹ ਦੇ ਵਿੱਚ ਕੁਝ ਹੋ ਰਿਹਾ ਹੈ ਜਨਮਨ ਹੋਰ ਮੁਖ ਹੋਰ ਸੇ ਕਾੜੇ ਕਚਾ ਨਾਲ ਤਾਂ ਬਾਣੀ ਵੜਦੇ ਨੇ ਅੰਦਰ ਕੁਝ ਹੋਰ ਚੱਲਦੀ ਹੈ ਗੱਲ ਜਾਏ ਜੰਪਤ ਜੋਗਣ ਜੁਹ ਜੁਵੰ ਜਾਏ ਜਪੋ ਇਹ ਜਪੋ ਜਾਨੋ ਕਿ ਜਿਹੜੀ ਹੈ ਨਾ ਅੰਦਰ ਕਲਪਨਾ ਚੱਲਦੀ ਹੈ ਇਹ ਬੰਦ ਕਿਵੇਂ ਕਰ ਬੰਦ ਕਰਦੀ ਇਹਨੂੰ ਸਮਝ ਲਓ ਵੀ ਇਹ ਬੰਦ ਕਿਵੇਂ ਕਰਦੀ ਕਲਪਨਾ ਹੀ ਕਾਲ ਹੈ ਜੇ ਕਲਪਨਾ ਬੰਦ ਹੋ ਗਈ ਆਉਣਾ ਜਾਣਾ ਮੁੱਕ ਗਿਆ ਆਉਣਾ ਜਾਣਾ ਮੁੱਕ ਗਿਆ ਕਾਲ ਬੰਦ ਹੋ ਗਿਆ ਕਾਲੇ ਕਲਪਨਾ ਜਿੱਦਣ ਇਹ ਸਮਝ ਲਿਆ ਕਿ ਕਲਪਨਾ ਹੀ ਕਾਲ ਹੈ ਉਦੋਂ ਕਲਪਨਾ ਦੁਸ਼ਮਣ ਲੱਗੂਗੀ ਉਹਨਾਂ ਚ ਦੁਸ਼ਮਣ ਨਹੀਂ ਲੱਗਦੀ ਉਹ ਨਹੀਂ ਤਾਂ ਕਲਪਨਾ ਜੋ ਪਦਾਰਥ ਪਦਾਰਥ ਦੀ ਦੇ ਨੇ ਇਹਦਾ ਹੋਰ ਰੂਪ ਦੀ ਦੇ ਜਿੱਦਣ ਇਹ ਗੱਲ ਗੁਰਬਾਣੀ ਵਾਲੀ ਮੰਨ ਲਈ ਕਬੀਰ ਦੀ ਕਾਲ ਕਲਪਨਾ ਕਦੇ ਨਾ ਖਾਏ ਇਹ ਉਹ ਨਾਗਣੀ ਆ ਪੰਜ ਮੁਖ ਵਾਲੀ ਪੰਜ ਮੁਖ ਇਸ ਹੋਰ ਕਿਸੇ ਸੱਪ ਸੱਪਣ ਦੇ ਪੰਜ ਮੁਖ ਨਹੀਂ ਹੁੰਦੇ ਇਹ ਮਾਇਆ ਦੇ ਪੰਜ ਮੂਰ ਹੈ ਇਹ ਕਲਪਣਾ ਦੇ ਪੰਜ ਮੂਰ ਹੈ ਭੱਜੇ ਬਕਾਰ ਲੈ ਕਿਸੇ ਨੇ ਕੋਦੇ ਮੰਗਦੀਏ ਕੋਈ ਮੁਖ ਦੇ ਖੋਲਣ ਦੀਏ ਕੋਈ ਕਰੇ ਖੋਲਣ ਦੀ ਇਹਨਾਂ ਦੇ ਬੱਚੇ ਇਹ ਡਿਮਾਂਡ ਹੈ ਪੰਜਾਂ ਮੁਖ ਦੀ ਹੋਰ ਕੋਈ ਸੱਪਣੀ ਹੈਗੀ ਐਵੇਂ ਨਕਸ਼ੇ ਬਣਾਏ ਹੋਏ ਨੇ ਉਹ ਤਾਂ ਐਵੇਂ ਨਖੇਦੀਵੇਂ ਗਿਆਨ ਖੜੇ ਦੀ ਦੂਜੀ ਤਲਵਾਰ ਅਸੀਂ ਲੋਹੇ ਦੀ ਬਣਾ ਲਈ ਉਹਦਾ ਮੂਰਖਾ ਨੇ ਐ ਬਣਾ ਕੇ ਬੜਾ ਅਸੀਂ ਕੁਝ ਹੋਰ ਉਹ ਪੱਕਾ ਸਮਝ ਲਿਆ ਪੱਕਾ ਨਹੀਂ ਸੀਗਾ ਉਹ ਗੱਲਾਂ ਪੱਕੀਆਂ ਸਮਝ ਲੀਆਂ ਤਾਂ ਸਰ ਵੀ ਲਿਖਦੇ ਨੇ ਜੇ ਜਿੱਦੇ ਤੇ ਜੱਬ ਪੜ੍ਹ ਕੇ ਬਾਨੋ ਘਾਰੂੜ ਕੇ ਬਲ ਸੇ ਘਾਰੂੜ ਹੁੰਦਾ ਹੈ ਗੁਰਮਤਿ ਗਿਆਨ ਬਾਨੋ ਘਾਰੂੜ ਕੇ ਬਲ ਇਹ ਮੰਨ ਲੋ ਗੁਰਮਤਿ ਦੇ ਗਿਆਨ ਨਾਲ पाला गया शक्ति आगी तो शक्ति दी गल जल्दी है मानो गालड़ के बल से लड्डी पांच मुखी जग सांप पर कारी काले सपड़े पांच बेजान हो के बेजान हो आए कल्पना हो जाती है गुरमत ज्ञान ना कल्पना आए पै जाती है जिमे बेजान हो के पै जाती है लड्डी पांच मुखी जग ਜੋ ਵੀ ਲਫਜ਼ ਆ ਗਿਆ ਉੱਥੇ ਜੋ ਗੱਥੇ ਵੀ ਇਹ ਉਹਦਾ ਜੁੜਿਆ ਅੱਜ ਕਿਦੋਂ ਕਰ ਪੜੋ ਉੱਥੇ ਵੀ ਆ ਨਾ ਉਹਨਾਂ ਨੇ ਤਾਂ ਕਹਿਆ ਪੰਡਤ ਕਹਿੰਦਾ ਜੀ ਪੰਜ ਮੂਹੇ ਵਾਲੀ ਸੱਪਣ ਵਿਦਵਾਨਾਂ ਨੇ ਰੋਣਾ ਪਾ ਲਿਆ ਕਿਹੜੀ ਹੁੰਦੀ ਆ ਉਹ ਇਹ ਗੱਲ ਤਾਂ ਪੁੱਜਣ ਵਾਲੀ ਸੀ ਜੇ ਤਾਂ ਪੁੱਜਣ ਵਾਲੀ ਗੱਲ ਕਰਦੇ ਫਿਰ ਤਾਂ ਹੋਰ ਸੀ ਜੇ ਸੱਚੀ ਮੁੱਝੀ ਦੀ ਹੁੰਦੀ ਫਿਰ ਬਾਬੜ ਦੇ ਚਲੇ ਰਹੇਗੇ ਏ ਪੰਡਤ ਜਿਹੜੇ ਵਿਦਵਾਨ ਨੇ ਵਾਬਰ ਦੇ ਚਲੇ ਰਹੇਗੇ ਉਹ ਗੱਲਾਂ ਨੂੰ ਉਹ ਅਧੂਏ ਢੱਗ ਚ ਲੈ ਕੇ ਸੱਚ ਬੋਲ ਲਿਓ ਆ ਤਾਂ ਕੁਰਬਾਨੀ ਜੀ ਵੀ ਬਹੁਤ ਕੁਝ ਕਿਹਾ ਹੋਇਆ ਕੁਰਬਾਨੀ ਜੀ ਵੀ ਬਹੁਤ ਕੁਝ ਕਿਹਾ ਹੈ ਉੱਥੇ ਵੀ ਬੁੱਝਣ ਵਾਲੀਆਂ ਗੱਲਾਂ ਨੇ ਸੀਤਾ ਲక్ష్ਣੋਂ ਵਿਛੜ ਗਿਆ ਉੱਥੇ ਬਹੁਤ ਕੁਝ ਕਿਹਾ ਹੈ ਉਹ ਸਭ ਕੁਝ ਬੁੱਝਣ ਵਾਲਾ ਸੀ ਉਹਨੂੰ ਤਾਂ ਭੁੱਲ ਨਹੀਂ ਸਕਦੇ ਰਾਉ ਨੂੰ ਤਾਂ ਹਾਂ ਉੱਥੇ ਵੀ ਇਹਨਾਂ ਬਹੁਤ ਸ਼ੰਕਾ ਪਰ ਉਥੇ ਚੁੱਪ ਤਾਂ ਨੇ ਛਿੱਤਰ ਤੇ ਡਰਦੇ ਨੇ ਉਹਦੇ ਖਿਲਾਫ ਨਹੀਂ ਬੋਲ ਸਕਦੇ ਉਹਦੇ ਖਿਲਾਫ ਤਾਂ ਬੋਲ ਨਹੀਂ ਸਕਦੇ ਪ੍ਰਚਾਰ ਹੋਇਆ ਗੁਰਿਆਈ ਦੇਤੀ ਉਹਦੇ ਤਾਂ ਬੰਦੀ ਬੈਠੇ ਨੇ ਸ਼ੰਕਾ ਉੱਥੇ ਵੀ ਬਹੁਤ ਹੈ ਇਹਨਾਂ ਨੂੰ ਅਰਥ ਇਹ ਕਹ ਨੇ ਸਾਰੇ ਗੋਟ ਖਿਲਾਫ ਕਰ ਨੇ ਅਰਥ ਠੀਕ ਹੈ ਜੀ ਕਿਉਂ ਕਰ ਨੇ ਫਿਰ ਇਹਨਾਂ ਨੇ ਅਰਥ ਅਰ ਉਹ ਗਲਤ ਅਰਥ ਵੀ ਬਣ ਜਾਂਦੇ ਨੇ ਗਲਤ ਅਰਥਕ ਨੂੰ ਮੰਨੀ ਜਾਂਦੇ ਨੇ ਤੇ ਨਿਕੇਲੇ ਪ੍ਰਵਾਹ ਨੂੰ ਮੰਨੀ ਜਾਂਦੇ ਨੇ ਵਰਮਾਣੀ ਦਾ ਤਰੀਕੇ ਲੈ ਮੱਦੀ ਹੋਣੀ ਪਰ ਉਹ ਤਾਂ ਮੰਦੀ ਹੋਣੀ ਹੈ ਇਸ ਕਰਕੇ ਇਹਨਾਂ ਦੇ ਵਿਦਵਾਨਾਂ ਦੇ ਬੱਲੇ ਕੁਝ ਨਹੀਂ ਹੈ ਇਹਨਾਂ ਨੇ ਆ ਬੈਠੇ ਜਣ ਜਦੋਂ ਕੱਲ ਬਾਹਰ ਆ ਜਾਣੇ ਬਿੱਲੀ ਥੈਲੇ ਤੇ ajo ਬਿੱਲੀ ਥੈਲੇ ਦੇ ਵਿੱਚ ਹੈ ਨਾ ਵਰਮਾਣੀ ਸੋਚੀ ਹੈ ਜੋ ਥੈਲੇ 'ਚ ਆ ਬਿੱਲੀ ਇਹ ਬਾਹਰ ਆਈ ਆਵੇਂ ਚੁੱਪ ਕਰ ਜਾਣਗੇ ਲੱਭੇ ਸਾਲੂ ਕਿਹੜਾ ਪਤਾ ਸੀ ਕੀ ਐ ਫਿਰ ਐ ਕਹਿਣ ਲੱਗ ਜਾਨਗੇ ਇਹਨਾਂ ਦਾ ਕੀ ਐ ਹਾਂਜੀ ਪੈ ਕੰਪੈ ਮੀਰ ਪਿਆਲ ਭੂੰਗ ਦੇਖੋ ਪੈ ਕੰਪੈ ਮੀਰ ਪਿਆਲ ਭੂੰਗ ਜਿਸ ਵਕਤ ਤੁਸੀਂ ਇਹ ਭਗਤੀ ਕਰ ਲਈ ਨੋ ਸਮਝ ਲਿਆਵੇ ਬੰਦੂ ਜਤਣ ਕਿਵੇਂ ਜਤਣ ਕਾਂਬਾ ਛਿੜ ਜੂਗਾ ਅੰਦਰ ਨਾਲ ਆਵੇਂ ਭਗਤ ਨਾ ਹੋਈ ਜਿੰਨਾ ਜਰ ਹੁਕਮ ਦੀ ਹੁਕਮ ਦੀ ਸਮਝ ਨਹੀਂ ਆਉਂਦੀ ਉਹਨਾਂ ਜਰ ਹੁਕਮ ਦੀ ਭੈ ਨਹੀਂ ਹੈ ਸਾਡੇ ਅੰਦਰ ਜਿੱਦਾਂ ਹੁਕਮ ਦੀ ਸੁਝਾ ਨਾ ਉਦੋਂ ਹੁਕਮ ਦੀ ਐਡੀ ਭੈ ਖੜੀ ਹੋ ਜੂਗੀ ਅੰਦਰ ਕਿ ਸੰਸਾਰ ਦੀ ਕੋਈ ਭੈ ਰਹਿਣੀ ਹੋਈ ਨਹੀਂ ਉਹਨੇ ਮੁਕਾਬਲੇ ਚ ਸਧਾਰ ਨਹੀਂ ਭੈ ਨਹੀਂ ਰਹਿਣੀ ਕੋਈ ਵੀ ਸੰਸਾਰ ਦੀਆਂ ਦਾ ਭਾਇਆ ਛੋਟੀਆਂ ਨੇ ਡਰ ਉਹਦਾ ਮੁਕਾਬਲੇ ਸੰਸਾਰ ਦੇ ਡਰਤਾ ਬਿਲਕੁਲ ਢਣਕੇ ਨਹੀਂ ਹਨ ਕੁਛ ਵੀ ਨਹੀਂ ਹਨ ਉਹਦਾ ਸੂਰਜ ਜਿੱਡਾ ਡਾਰਾ ਇਹ ਰੇ ਤੋੜ ਕੇ ਖਲੂਕੇ ਜਿਵੇਂ ਘਰ ਡੁੱਟਦੀ ਹੁੰਦੀ ਹੈ ਸਵਾਲ 'ਚ ਘਰ ਦਾ ਸੂਰਜ ਰੋਖ ਲੂਗੀ ਗੱਲ ਗਾਂਕੂ ਤੇ ਆਪਣੇ ਆਜੇ ਜੇ ਇੱਕ ਕਣਕਾ ਕਰਤਦਾ ਖਲੂਕਾ ਸੂਰਜ ਨੂੰ ਢੱਕ ਲੂਗਾ ਇਹ ਤਾਂ ਇਹ ਜੇ ਭੈਣ ਬਬੂਲੀ ਬੂਮਲੀ ਜੀ ਨਾਲ ਤਾਂ ਅਸੀਂ ਡਰੀ ਜਾਂਦੇ ਆ ਸਿਆਦ ਪਾਇ ਪੈ गया ਨਾ ਪੈਵਨ ਭਗਤ ਨਾ ਹੋਏ ਤੇਰੀ ਉਸ ਪੈ ਬਿਨਾ ਭਗਤੀ ਨਹੀਂ नहीं हो सकती। ਅਜਰ ਹੁਕਮ ਦੀ ਪੈ है जर नहीं ਉਹਨਾਂ ਚਰ ਭਗਤੀ ਨਹੀਂ ਹੋ ਸਕਦੀ ਜਿਨਾਂ ਜਦ ਉਹ ਖੰਡਾ ਮਿਲ ਤੋਂ ਬਾਅਦ ਦੇਖ ਲਿਆ ਨਾ ਇਹਨਾਂ ਨੇ ਜਿਹੜਾ ਸਾਜਿਆ ਪ੍ਰਥਮੇ ਖੰਡਾ ਸਾਜ ਕੇ ਜਿਹੜਾ ਸਭ ਸਾਰਾ ਪਾਇਆ ਉਹ ਖੰਡਾ ਨਹੀਂ ਦੇਖਿਆ ਉਹਦੀਆਂ ਦੋਹੇ ਤਾਰਾਂ ਜੀ ਇੱਕ ਤਾਰ ਹੈ ਦੀ ਹੈ ਖੰਡੇ ਦੀ ਕਲਪਨਾ ਉਹ ਆਪਣਾ ਉਹ ਕਲਪਨਾ ਵਾਲੀ ਤਾਰ ਲਈ ਬੈਠੇ ਨੇ ਅੰਦਰ ਉਹੀ ਦਾ ਜਨਮ ਹੋਣ ਦਾ ਕਾਰਨ ਹੈ ਕਲਪਨਾ ਇੱਕ ਪਰਪਲਾਉਣ ਵਾਲੀ ਧਾਰ ਹੈ ਇੱਕ ਭਗਤੀ ਲਾਉਣ ਵਾਲੀ ਧਾਰ ਹੈ ਫਿਰ ਭਗਤੀ ਲਾਉਣ ਵਾਲੀ ਧਾਰ ਦੇ ਅੱਗੇ ਗੜ ਦੇਣਗੇ ਔਰ ਕਲਪਨਾਂ ਵਾਲੀ ਦੇ ਅੱਗੇ ਗੜ ਦਿੱਤਾ ਹੋਇਆ ਗੜ ਨਹੀਂ ਰਹਿਣਾ ਹੈਗਾ ਇਹ ਕਬੀਰ ਆਏ ਤਾਂ ਜਾਏਗਾ ਕਬੜੇ ਮਾਰ ਕੇ ਲਾਏ ਭਾਰਗ ਦੋਨੇ ਜਿਹੜੇ ਮਰਗੀ ਮਾਰ ਕੇ ਜਾ ਚਾਹੇ ਦਾ ਮਨ ਮਤਾਲੇ ਮਾਰ ਕੇ ਜਾ ਆਪਣੀ ਵਰਗੀ ਨਾ ਚੱਲ ਆਪਣੇ ਭਾਣੇ ਚਾਹ ਗੁਰਕੇ ਪਾਣੀ ਚੱਲ ਸਬਾਏ ਗੁਰਬਾਣੀ ਤੇ ਗੁਰਕੇ ਪਾਣੀ ਚੱਲਣ ਦੀ ਕੋਈ ਬਤ ਗੱਲ ਨਹੀਂ ਕਰਦੀ ਸਾਰਿਆਂ ਵੱਤਾਂ ਆਪਣੇ ਭਾਣੇ ਚੱਲਣ ਦੀ ਗੱਲ ਕਰਦੀ ਹੁੰਦੀ ਇਸ ਕਰਕੇ ਇੱਕ ਦੂਜੀਆਂ ਜਿਹੜੀਆਂ ਵੱਤਾਂ ਨੇ ਉਹਨਾਂ ਦਾ ਕੋਈ ਰਸਤਾ ਹੈ ਉਹ ਬਾਣੀ ਦੂਜਾ ਬਾਣੀ ਤੋਂ ਉਲਟ ਹੈ ਗੁਰਬਾਣੀ ਤੋਂ ਹੈ ਆਪਣੇ ਭਾਣੇ ਚੱਲਣੇ ਪਾ ਵੀ ਚੋਟਾਂ ਖਾਏ ਜੋੜ ਦਾ ਖੜੀ ਪੈਣੀ ਆ ਖੜਨਾ ਤਾਂ ਚੱਲ ਜਾਨਾ ਧਾਰ ਤਾਂ ਚੱਲੂਗੀ ਇਸ ਗਾਣ ਦਾ ਵੜਿਆ ਜਾਣਾ ਬਈ ਨਾ ਉੱਥੇ ਵੀ ਨਹੀਂ ਪਰ ਵਿਛੜਿਆ ਹੀ ਰਹਣਾ ਜੋੜ ਵੀ ਖਾਇਗਾ ਰਹੇਗਾ ਵੀ ਵਿਛੜਿਆ ਹੈ ਜੋੜ ਵੀ ਲੱਗੂਗੀ ਸਰੀਰ ਵੀ ਛੱਡਾਂ ਪੈ ਮਾਇਆ ਵੀ ਛੱਡਣੀ ਪਊਗੀ ਮਰਨਾ ਵੀ ਪਊਗਾ ਪਰ ਇਹ ਵਿਛੜਿਆ ਹੋਇਆ ਹੈ ਗੁਰ ਕੇ ਪਾਣਾ ਭਾਈ ਵਿੱਚ ਬੋਝ ਬੈਠਾ ਹੈ ਸਰੀਰ ਨੂੰ ਛੱਡ ਕੇ ਬੋਝ ਚ ਵਜੇਗਾ ਜਾ ਸਰੀਰ ਤਾਂ ਛੱਡਣ ਹੀ ਪਿਆ ਡਿਗਿਆ ਤਾਂ ਆਂਗੇ ਠਿਕਾਣੇ ਉਹ ਘਰ ਤਾਂ ਚੱਲਿਆ ਗਿਆ ਆਪਣੇ ਸਰੀਰ ਛੱਡ ਗਿਆ ਘਰ ਚੱਲਿਆ ਗਿਆ ਜਲਮੁਰ ਕਟਿਆ ਗਿਆ ਅਸਲ ਚ ਮਰ ਕੇ ਹੀ ਜਾਂਦਾ ਹੋ ਗਿਆ ਸਰੀਰ ਜਿਉਂਦਾ ਛੱਡਣ ਦਾ ਮਤਲਬ ਇਹੀ ਹੈ ਸਰੀਰ ਜਿਉਂਦੇ ਛੱਡਣ ਦਾ ਮਤਲਬ ਇਹੀ ਹੈ ਪਹਿਲਾਂ ਹੀ ਬਹੁਤ ਬਚਪੇ ਜੋ ਜਾ ਕੇ ਪਹਿਲਾਂ ਗੁਰਕੇ ਪਾਣੇ ਚ ਭੇਜੋ ਇਸਰੀ ਲਾਜੋ ਭਾਈ ਸਾਡਾ ਬਿੱਲ ਹੈ ਉਹ ਕਾਹਦਾ ਹਾਈਕਲ ਪਰਸੋਂ ਦਾ ਲੈਂਦੋਂ ਖੜਾ ਸਾਡੇ ਦਾ ਸਭ ਜਗ੍ਹਾ ਹੈ ਨਹੀਂ ਅੱਧਿਆਨੇ ਹਲਕਦੇ ਨੇ ਬੇਦੀ ਲੱਗਦੇ ਨੇ ਲੈ ਜਾਓ ਇਹਨੂੰ ਅਜਿਹਾ ਇਹ ਦੁਖੀ ਕਰਤੇ ਤੇਰੇ ਸਾਈਕਲ ਲੋਡ ਤਾਂ ਸਹੀ ਕੇ ਲਾਇਆ ਇਹ ਤੇ ਪਰ ਪਰਸੋਂ ਨੇ ਬਹੁਤ ਦੁਖੀ ਹੋ ਥਾਂ ਥੋੜਾ ਦੋ ਤਣੇ ਵਾਰ ਤਾਂ ਪੈਡਲ ਲੱਗਿਆ ਇਹਦਾ ਲੱਗੜ ਵਰਦਿਆ ਨੇ ਉਹਦਾ ਕਬੀਰ ਤਾਂ ਦੁਖੀ ਹੋਇਆ ਸਰੀਰ ਤੋਂ ਫਗਤਾਂ ਦੁਖੀ ਨੇ ਸਾਰਾ ਸਰੀਰ ਛੋਟ ਛੋਟੀ ਉਮਰ ਛੱਡ ਤੇ ਗੁਰੂਆਂ ਉਹਨਾਂ ਨੇ ਕੀ ਲੈਣਾ ਦਾ ਸਰੀਰ ਤੇ ਕਾਬੂ ਹੋ ਗਿਆ। ਹੈ। ਪੈ ਕੰਪੇ ਮੇਰ ਪਿਆਲ ਭੂਮ ਪੈ ਕੱਪ ਪੈ ਦੇ ਨਾਲ ਕੰਬ ਜਾਂਦਾ ਹੈ। ਕਾਣ ਮੇਰ ਦਿਮਾਗ ਕੰਬ ਜਾਂਦਾ ਹੈ। ਦਿਮਾਗ ਦੇ ਵਿੱਚ ਪੈ ਵੜ ਨਾ ਰਾਜ ਕਰੇਗਾ ਖਾਲਸਾ ਸਭ ਨਿਕਲ ਜੂਗੀ ਫੂਕ ਜਦਲ ਦੇਖ ਲਿਆ ਹੁਕਮ ਸਾਰੀ ਫੂਕ ਨਿਕਲ ਜੂਗੀ ਤੇ ਚੋ। ਵੇਰ ਹੈ ਦਮਾਗ ਪਿਆਰਾ ਹਿਰਦਾ ਦਿਲ ਦਾ ਦਿਮਾਗ ਦੋਏ ਕ ਬੁਝਣਗੇ ਆ ਧਰਤੀ ਤੇ ਆਰਾਮ ਨਾ ਪੈ ਜੂਗਾ ਕਿੱਕ ਉਹ ਧਰਤੀ ਤੇ ਫੇਕੀ ਕਰਦਾ ਹੁੰਦਾ ਆਦਮੀ ਜਿਹੜਾ ਦਹਿਲ ਜਵੇ ਉਹ ਦਿਲ ਫੜ ਕੇ ਬਹਿ ਜਾਂਦਾ ਡਿਗ ਸੋਚਾਂ ਦੇ ਕਾਬਲੇ ਰਹੂਗਾ ਹੱਥ ਪੈ ਠੱਡੇ ਹੋ ਜਾਣਗੇ ਜਦੋਂ ਭੈ ਦੇਖ ਲਿਆ ਹੁਕਮ ਦਾ ਵਕੀਰ ਦਾ ਅਜਾ ਹੁਕਮ ਨੇ ਪੈਦਾ ਪਤਾ ਨਹੀਂ ਹੈ ਜੇ ਨਾਲ ਦੇਖ ਲਿਆ ਸਭ ਕੁਝ ਛੱਡ ਕੇ ਆਰਾਮ ਨਾਲ ਪਹਿਲਾਂ ਹੀ ਉਹ ਕਹਿੰਦਾ ਠੀਕ ਹੈ ਅभी ਰਾਜਿਆਂ ਦੱਬੀ ਜਾਂਦੂ ਆਪਣੀ ਖਬਰ ਉਹ ਇੱਕ ਤੋਰ ਕੇ ਜਾਂਦਾ ਇੱਕ ਟੇਲ 'ਚ ਜਾਂਦਾ ਹੈ ਏਸੀ ਚਾਵਣਾ ਕਰ ਵਿੱਚ ਬੈਠਾ ਆਰਾਮ ਨਾਲ ਹੋਰ ਤੋਰੇ ਵਾਲੇ ਨੂੰ ਨਾ ਦਾ ਰਾਮ ਦੇ ਨਾ ਇਹੋ ਆਪਣਾ ਸੰਸਾਰ ਦਾ ਚੱਲਦਾ ਰਹਿਣਾ ਸੰਸਾਰ ਲਾਹੀ ਹੈ ਉਹਦਾ ਆਪਣਾ ਨਿਸ਼ਚਿਤ ਤੇ ਹੈ ਇਹ ਡਰ ਕੇ ਬੁੱਠੇ ਪਾਸੇ ਨੂੰ ਜਾ ਰਹੇ ਆਪਣੇ ਘਰ ਨੂੰ ਜਾ ਰਹੇ ਆ ਕਹਾਂ ਤੂੰ ਚਲੋ ਆਇਓ ਦੋਹਰੀ ਗੱਡੀ ਗੱਡੀਆਂ ਨਾਲ ਚੱਲਦੀਆਂ ਰਹਿੰਦੀਆਂ ਨੇ ਇਹ ਚਾਰ ਸਟੇਸ਼ਨ ਪਰੇ ਵੀ ਜਲੇ ਜਾਓਗੇ ਤੁਰ ਕੇ ਫੇ ਆਜੋਗੇ ਗੱਡੀ ਦਾ ਤੁਰੋਂ ਚੱਲਦੀ ਐ ਇਧਰ ਇਧਰ ਟਕ ਚੱਲਦੀ ਐ ਨਾ ਤੇ ਮਰਜੀ ਚੜ੍ਹ ਜਿਓ 100 ਕਿਲੋਮੀਟਰ 200 ਕਿਲੋਮੀਟਰ ਪਿਛੇ ਨੂੰ ਮੁੜ ਜਾਓਗੇ ਫੇਰ ਆ ਜਾਓ ਟ੍ਰੇਨ ਤੇ ਜਾਮਨਦੀ ਚੜਜੋ ਚੜ ਜਾਏ ਸੇ ਟ੍ਰੇਨ ਪਰ ਸਾਰੇ ਨੂੰ ਜੇਕਰ ਇਹਨੇ ਘਰ ਜਾਣਾ ਪਾਲਾ ਬਣ ਕੇ ਜਾਊਗਾ ਪਾਲ ਬੰਦੇ ਤੇ ਮੈਨੂੰ ਜਾਂ ਨਹੀਂ ਹੋਣਾ ਜੇ ਦੇ ਲਾ ਇੱਥੇ ਹੀ ਲੱਗੇ ਰਹਿਣ ਤਾਂ ਜੂਨੀਆ ਹੋਰ ਬਥੇਰੀਆਂ ਨੇ ਕੁੱਤੇ ਬਿੱਲੀਆਂ ਦੀਆਂ ਥੱਲੇ ਕੋਈ ਜ਼ਰੂਰੀ ਨਹੀਂ ਤੁਹਾਨੂੰ ਆਜੂ ਮਿਲੇਗਾ ਹਰੂ ਕੋਈ ਜ਼ਰੂਰੀ ਨਹੀਂ ਐਵੇਂ ਇਸੇ ਕਰਕੇ ਜਲ ਮਿਲੇ ਜਿਹੜੇ ਚੱਜ ਆਦਮੀ ਬਣਾਤਾ ਖਬਰ ਕਿ ਨਾ ਕੋਈ ਗਰੀਬ ਬਣਾ ਦੇ ਬਹੁਤ ਅਮੇ ਇਹਨੂੰ ਬਹੁਤ ਗਰੀਬ ਵੀ ਤਾਂ ਬਣਾਇਆ ਜਾ ਸਕਦਾ ਤੇ ਜਲਬ ਲੈਦੇ ਬਾਤ ਤਾਂ ਸਾਨੂੰ ਪਤਾ ਹੀ ਨਹੀਂ ਕੌਣ ਕਿੱਥੋਂ ਆਇਆ ਹੋਏ ਇਹ ਗੱਲ ਦਾ ਜਦੋਂ ਪੇਡ ਖੁੱਲਣ ਲੱਗਦਾ ਫੇਰ ਕਬਲ ਹੈ ਬਈ ਭੂਗਨ ਨਾ ਸਾਰੇ ਜੇ ਉਸੇ ਅਤਿਆੰਤ ਗਰੀਬ ਦੇ ਪੈਦਾ ਕਰਦਾ ਇਹ ਨੂੰ ਸਿਆਣਦਾ ਹੀ ਨਹੀਂ ਹੁਣ ਤੂੰ ਆਤਮਾ ਹੀ ਇਹਨਾਂ ਕਾਢ ਕੇ ਜਿੱਥੇ ਮਰਜੀ ਬਾਦਵੇਂ ਹੋ ਬੋੜਨ ਦਾ ਆਦਮਾ ਨੂੰ ਇਹ ਸਰੀਰ ਤਾਂ ਮਿੱਟੀ ਚ ਰਲ ਜਾਣੀ ਜਿਨ੍ਹਾਂ ਦਾ ਲੁੱਟ ਕੇ ਖਾਦਾ ਜੋ ਉਹਦੇ ਨੇ ਪਤਾ ਫੀਤੀ ਜਲ ਬੇਦਰ ਰਹਿਮ ਤੇ ਪਤਾ ਲੱਗੇ ਬਿਗਰੀ ਬਿਗੀ ਹੁੰਦੀ ਇਹ ਪਤਾ ਨਹੀਂ ਜਦੋਂ ਪਤਾ ਲੱਗਦਾ ਨਾ ਸਮਝ ਆਉਦੀ ਐਸ ਗੱਲ ਦੀ ਕੱਬ ਜਲਦਾ ਜਦੋਂ ਇਹ ਗੱਲਾਂ ਨਹੀਂ ਸਮਝ ਆਉਂਦੀ ਕਿ ਇਹ ਗਰੀਬ ਕਿਉਂ ਨੇ ਇਹਨਾਂ ਨੇ ਕੋਈ ਮਾੜੇ ਕਰਮ ਕੀਤੇ ਨੇ ਕੁਝ ਗਲਤੀਆਂ ਕੀਤੀਆਂ ਨੇ ਦੁਖਦਾਰੂ ਉਹਨਾਂ ਨੂੰ ਦੁਆ ਦਿੱਤੀ ਹੈ ਦੁਖ ਇਹਨਾਂ ਨੂੰ ਦੁਖ ਦੁਆ ਦਿੱਤੀ ਹੈ ਕਾਲ ਦੀ ਦੁਆਈ ਹੈ ਤਾਪਸ ਸਰਬ ਜਲੇ ਰੂਥਲੰ ਜਲੇ ਰੂਥਲ ਜਲੇ ਰਾਰੇ ਰੂਕੜਾ ਤਪ ਸਰਬ ਜਲੇ ਰੁਥਲਮ ਇਧਰ ਕੀ ਕਰ ਰਹੇ ਨੇ ਲੋਕ ਲੋਕ ਕੀ ਕਰਨ ਗਏ ਰੇ ਤਪ ਤਾਪ ਦੇ ਤਪ ਕਰਨ ਗਏ ਨੇ ਉਹ ਗਿਆਨ ਵਾਲੇ ਉੱਥੇ ਆ ਗਈ ਆਪਣੇ ਏਰੀਆ ਦੇ ਚ ਰਹਿ ਕੇ ਜੱਪਣ ਨਹੀਂ ਲੱਗੇ ਹੋਏ ਮਨੁ ਜਤਨ ਦਾ ਜਿਹੜਾ ਵਿਧੀ ਹੈ ਉਹ ਉਹਨੂੰ ਸਮਝਣ ਨਹੀਂ ਲੱਗੇ ਹੋਏ ਜਾਣਨ ਨੂੰ ਲੱਗੇ ਹੋਏ ਲੋਕੋ ਤਪ ਤਪਣ ਲੱਗੇ ਹਨ ਤਪ ਜਿਹੜੀ ਮਨ ਨੂੰ ਚੰਗੀ ਲੱਗੇ ਨਾ ਆਪਾਂ ਆਪਣੇ ਮਨ ਨੂੰ ਚੰਗੀ ਲੱਗੇ ਉਹਦੇ ਨਾਲ ਮਨ ਮਜ਼ਬੂਤ ਹੋਦ ਮਨ ਮਜ਼ਬੂਤ ਹੋਕਰ ਵਧੂਗਾ ਮਨ ਮਜ਼ਬੂਤ ਹੋਕਰ ਵਧੂਗਾ ਤਬ ਤਪਣ ਤਪ ਤਪ ਉਸ ਸਰਬ ਜਲੇ ਰੂ ਥਲੰ ਥਲ ਜਲ ਔਰ ਥਲ ਦੇ ਵਿੱਚ ਆਰੁਲਾਫਦਾ ਉਹ ਰਾਣਾ ਕੱਲਾ ਹੈ ਛੌੜ ਕਰਦਾ ਜਾਲਾ ਔਰ ਥਲ ਦੇ ਵਿੱਚ ਕੋਈ ਪਾਣੀ 'ਚ ਬੈਠ ਕੇ ਤਪ ਪਹਾੜਾਂ ਤੇ ਬੈਠ ਕੇ ਤਪ ਕਰਨ ਲੱਗੇ ਲੋਕ ਸਾਰੇ ਔਰ ਤਪ ਨੂੰ ਬੜਾ ਚੰਗਾ ਸਮਝਦੇ ਨੇ ਤਪਸਥਾਨ ਉਹਨੂੰ ਹੁੰਦਾ ਟੱਕੀ ਵਾਲੇ ਨੇ ਬਣਾਇਆ ਸੀ ਤਪ ਇਹਨਾਂ ਨੂੰ ਇਹ ਹੀ ਪਤਾ ਵੀ ਤਪ ਜਿਹੜਾ ਹੁੰਦਾ ਹੰਕਾਰ ਦਾ ਪ੍ਰਤੀਕ ਹੁੰਦਾ ਇਹਨਾਂ ਦਾ ਇਹ ਨਹੀਂ ਪਤਾ ਵੀ ਤਪ ਗੁਰਮਤਿ ਜਪ ਖੰਡਣ ਕੀਤਾ ਹੋਇਆ। ਬਹੜਾਣਾ ਜਪ ਵੀ ਖੰਡਣ ਕੀਤਾ ਹੋਇਆ ਹੈ। ਇੱਕ ਜਪ ਤਪ ਖੰਡਣ ਹੈ, ਇੱਕ ਜਪ ਤਪ ਬੁੱਢਣ। ਅਸਲੀ ਜਪ ਤਪ ਕੀ ਹੈ ਦੱਸਿਆ ਹੋਇਆ, ਨਕਲੀ ਜਪ ਤਪ ਛੱਡੇ ਛੱਡਣ ਨੂੰ ਕਹੇ ਹੋਏ ਨੇ। ਮਨ ਨੇ ਜਪ ਤਪ ਬਣਾਏ ਹੋਏ ਨੇ ਛੱਡਣ ਨੂੰ ਕਹੇ ਹੋਏ ਨੇ ਜਿਹੜਾ ਪਰਮੇਸ਼ਰ ਨੇ ਦੱਸਿਆ ਜਪ ਤਪ ਉਹ ਬੁੱਢਣ ਉਹ ਕਰ ਨੂੰ ਕਿਹਾ ਹੈ। ਡੁਪਲੀਕੇਟ ਚੀਜ਼ਾਂ ਛੱਡ ਦੇਣੀਆਂ ਨੇ ਤੁਹਾਨੂੰ ਦੀਆਂ ਅਸਲੀ ਲੈ ਲੈਣੀਆਂ ਨੇ ਤਨੁਚਰਤੋ ਇੰਦਰ ਕੁਬੇਰ ਬਲੰ ਕੁਬੇਰ ਕੁਬੇਰ ਉਹਨਾਂ ਦੁਨੀਆਂ ਦੇ ਸਭ ਤੋਂ ਤਣਾਡਾ ਆਦਮੀ ਰੇ ਜਿਹੜੇ ਵੱਡੇ ਵੱਡੇ ਤਣਾਡਾ ਆਦਮੀ ਰੇ ਉਹ ਕੁਬੇਰ ਨੇ ਜਿਹੜੇ ਵੱਡੇ ਵੱਡੇ ਰਾਜਨ ਹੋਏ ਦੁਨੀਆਂ ਦੇ ਉਹ ਵੀ ਤਨੁਤਨ ਕਹਿੰਦੇ ਨੇ ਕੱਲੇ ਤਨੁਤਨ ਕਹਿਣ ਨਾਲ ਤਾਂ ਗੱਲ ਨਹੀਂ ਵੰਡੀ ਇਹਦਾ ਕਬੀਰ ਦੀ ਪੈਸੇ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ ਕਬੀਰ ਉਹਨੂੰ ਖਰੀਦ ਨਹੀਂ ਸਕਦਾ ਕਬੀਰ ਉਹਨੂੰ ਐ ਸਮਝਦਾ ਮੇਰੇ ਨਾਲ ਕਿਤੇ ਪੈਸਾ ਦੇ ਕੋਈ ਜ਼ਿਆਦਾ ਸਾਰਾ ਉਹਦੇ ਵਸੂਚ ਜਿਹੜਾ ਰਾਜਾ ਹੈ ਉਹ ਸਮਝਦਾ ਵੀ ਮੇਰੇ ਵਸਤੇ ਬਾਹਰ ਉਹ ਧਨ ਦਾਨ ਘੈਰ ਹੈ ਨਾ ਤਾਂ ਤੁਸੀਂ ਕਬੀਰ ਬਣ ਸਕਦੇ ਹੋ ਤਪ ਨਾਲ ਨਾ ਤੁਸੀਂ ਅੰਦਰ ਵਰਗਾ ਰਾਜ ਬਣ ਸਕਦੇ ਹੋ ਜੇ ਬਣ ਵੀ ਜਾਓ ਫਿਰ ਵੀ ਤੁਹਾਨੂੰ ਅਸਰ ਹੋਣਾ ਪਊਗਾ ਜੇ ਬਣ ਵੀ ਜਾਓ ਰਾਜ ਲੈ ਕੇ ਫਿਰ ਵੀ ਤੁਹਾਨੂੰ ਅਸਰ ਹੋਣਾ ਪਊ ਪਹਿਲਾਂ ਹੀ ਉਹਦੇ ਨਾਲ ਜੁੜ ਜਾਓ ਪਹਿਲਾਂ ਹੀ ਦੁਆਰਾਖ ਤੇਰ ਕਰਨ ਲੋ ਜਾਬਾੜਾ ਤਾ ਬੜਾ ਇਹ ਮਤਲਬ ਹੈ ਲੋ ਦੁਈ ਭਗਤੀ ਦਾ ਮਤਲਬ ਇਹ ਹੈ ਕਿ ਉਹ ਤੁਹਾਨੂੰ ਤਾਂ ਕਹਿ ਰਹੇ ਨੇ ਤੱਪ ਕਰਕੇ ਜੇ ਉਧਰ ਨੂੰ ਜਾਣਾ ਹੈ ਰਾਜਾ ਬਣਨਾ ਹੈ ਜਾਂ ਇਹਨਾਂ ਧਨਵਾਨ ਬਣਨ ਦੋਇਡ ਬੰਡਾ ਨੇ ਆਦਮੀ ਦੀ ਹੋਰ ਖਿਡ ਬਣਨ ਤੱਪ ਦੇ ਵਿੱਚੋਂ ਫੇਰ ਵੀ ਤੁਹਾਨੂੰ ਉਸ ਨੂੰ ਕਹਿਣਾ ਪੈਣਾ ਉਹ ਕਹਿ ਰਹੇ ਨੇ ਕਿਉਂ ਰਾਜਾ ਬਣਿਓ ਕੀ ਫਾਇਦਾ ਉਸ ਰਾਜਾ ਬਣ ਦਾ ਉੱਥੇ ਆ ਕੇ ਵੀ ਉਹ ਗੱਲ ਹੈ ਉੱਥੇ ਆ ਕੇ ਵੀ ਹੱਥ ਖੜੇ ਕਰਨੇ ਪੈਣੇ ਨੇ ਮੁੰਡੇ ਹੱਥ ਖੜੇ ਕਰ ਦੋ ਹੋਜੀ ਅਨਕੇਦ ਸਰੂਪ ਅਭੇਦ ਅਭੇਉ ਕਿਉਂਕਿ ਅਨਕੇਦ ਸਰੂਪ ਹੈ ਉਹਦਾ ਗਵਰਨੂ ਖੇਦ ਹੈ ਡਰ ਪਏ ਹੈ ਰਾਜੇਂਦਰ ਨੂੰ ਡਰ ਪਏ ਹੈ ਰਾਜੇ ਨੂੰ ਡਰ ਪਾਇਆ ਧਨਾੜਾ ਨੂੰ ਡਰ ਪਾਇਆ ਦੋਰ ਨੂੰ ਡਰ ਪਾਇਆ ਪਰ ਉਹਨੂੰ ਡਰ ਪਾਇ ਕੋਈ ਨਹੀਂ ਤਾਂ ਜ਼ੈਨ ਦੇ ਬੇਅੰਤ ਤੂੰ ਜਿਹਨੂੰ ਡਰ ਪਾਇ ਕੋਈ ਨਹੀਂ ਉਹ ਤਾਂ ਐਸਾ ਸਾਰਾ ਹੋਦਾ ਹੀ ਐ ਸਾਰੀਆਂ ਧਰਤੀਆਂ ਉਹਦੀਆਂ ਨੇ ਸਭ ਕੁਝ ਉਹਦਾ ਹੈ ਡਰཔ་ ਕੋਈ ਨਹੀਂ ਐਸਾ ਰਾਜਾ ਕੋਈ ਨਹੀਂ ਹੋ ਸਕਦਾ ਐਸਾ ਆਦਮੀ ਕੋਈ ਨਹੀਂ ਹੋ ਸਕਦਾ ਡਰཔ་ ਇਹੋ ਰਹੇ ਤੋ ਫੇ ਕਹਿੰਦੀ ਫੜ ਗੀ ਨਹੀਂ ਉਹਦਾ ਹਰਥਾਂ ਹਾਜ਼ਰ ਹੈ ਹਰਥਾਂ ਹਾਜ਼ਰ ਹੈ ਫੜ ਗੀ ਕਿਸਦੀ ਜੀ ਦੀ ਉਹਦਾ ਕੋਈ ਗਿਰਫਤਾਰ ਨਹੀਂ ਕਰ ਸਕਦਾ ਫੜ ਨਹੀਂ ਸਕਦਾ ਕੋਈ ਲੜ ਨਹੀਂ ਸਕਦਾ ਹੁਕਮ ਨੂੰ ਕੋਈ ਮੋੜ ਨਹੀਂ ਸਕਦਾ ਉਨੇ ਕੋਈ ਰਾਜੇ ਲਈ ਲਾਡੇ ਕੋ ਜਿਆਦਾ ਸਮਝਾਉਂਦੇ ਫਿਰ ਬਿਆਨਤ ਬਿਆਨਤ ਫਿਰ ਕਹਦੇ ਨੇ ਅਨਖੇਰ ਸਰੂਪ ਅਭੇਦ ਅਪਹੰ ਅਭੇਦ ਹੈ ਉਹ ਭੇਦ ਹੈ ਵੈਸੇ ਨਹੀਂ ਭੇਦ ਭਾਵ ਨਹੀਂ ਕਿਸ ਤਰ੍ਹਾਂ ਕਰਦਾ ਹੈਗਾ ਭੇਦ ਭਾਵ ਨਹੀਂ ਕਿਸ ਕਰਦਾ ਕਿਸੇ ਨਾਲ ਹੀ ਸੰਬੰਧ ਆ ਵੀ ਆ ਬੇ ਦੇਖੋ ਰਾਜਾ ਵੀ ਸਮਝੂ ਮੇਰਾ ਤੇਰਾ ਤਨ ਆਣ ਨੂੰ ਵੀ ਸਮਝੂ ਮੇਰਾ ਤੇਰਾ ਉਹ ਨਹੀਂ ਕਿਸੇ ਨੂੰ ਵੇ ਉਹ ਸਭ ਉਹਦਾ ਹੀ ਨੇ ਆਪੇ ਦਾ ਆਪੇ ਨੂੰ ਨਾ ਉਹ ਪਾਇਆ ਕਿਸੇ ਦੀ ਪੈਦਾ ਰਹਿਤਾ ਪੈਦਾ ਰਹਤਾ ਕਈ ਤਾਂ ਪੈਣ ਬਣ ਕੇ ਆਪਣਾ ਬਣਾਉਂਦੇ ਨੇ ਨਾ ਵੀ ਇਹ ਜੇ ਬਿਸਟਰ ਫੜ ਗਿਆ ਆਪਣੀ ਜਾਂਦੀ ਰਹੂਗੀ ਹਕੂਮਤ ਉਹ ਤਾਂ ਡਰਦੇ ਉਹਦੇ ਨਾਲ ਪ੍ਰੇਮ ਕਰਦੇ ਨੇ डरदे भी दा गर्जगा ने गड़णा मिट्टी उदी गर्जए गजदा गड़णा मिट्टी है ओनु गर्ज नहीं है किसे सै इस कारे उ डरनी है सावन ओदा तक गर्जए ओनु किसे सै गर्ज नहीं जे गागनी डरबी कोई नहीं अनखंड अपहुत अछेद अछैं अनघड़ ਉਹ ਇਹਦਾ ਟੁਕੜਾ ਨਹੀਂ ਕੱਟ ਸਕਦਾ ਖੰਡ ਨਹੀਂ ਕਰ ਸਕਦਾ ਖੰਡਣ ਉਹਦਾ ਮਨ ਖੰਡਲ ਨਹੀਂ ਹੁੰਦਾ ਹਨ ਖੰਡ ਆਪੂਤ ਖੰਡ ਕੋਈ ਨਹੀਂ ਕਰ ਸਕਦਾ ਇਹ ਆਪਣੇ ਆਪੇ ਛੁੱਟਦਾ ਆਪਣੇ ਆਪ ਜਾਏ ਆਪਣੇ ਆਪ ਨੂੰ ਖੰਡਣ ਕਰ ਲਵੇ ਕੋਈ ਨਹੀਂ ਕਰ ਸਕਦਾ ਹਨ ਖੰਡ ਆਪੂਤ ਆਪੂਤਾ ਆਹ ਬਾਹਰ ਦਾ ਸਰੀਰ ਨਹੀਂ ਹੁੰਦਾ ਵਾਇਆ ਨਾਲ ਕੋਈ ਲੇਕ ਨਹੀਂ ਵਾਇਆ ਦਾ ਕੋਈ ਸ਼ਰੀਰ ਨਹੀਂ ਹੈ ਉਹਦਾ ਅਪੂਤ ਹੈ ਅਛੇਦ ਅਛੇਦ ਕੋਈ ਉਹ ਚੁਰਾਖ ਨਹੀਂ ਕਰ ਸਕਦਾ ਛੇਦ ਨਹੀਂ ਸਕਦਾ ਕੱਟ ਨਹੀਂ ਸਕਦਾ ਵੱਡ ਨਹੀਂ ਸਕਦਾ ਆਛੇ ਉਹਦੀ ਮਹਤਉ ਹੈ ਤਾਂ ਉਹਦੀ ਰੋਸ਼ਨੀ ਘਟਦੀ ਹੈ ਰੋਸ਼ਨੀ ਨੂੰ ਕੋਈ ਢੱਕ ਨਹੀਂ ਸਕਦਾ ਉਹ ਗੁਪਤਰੀ ਕਰ ਸਕਦਾ ਕੋਈ ਉਹਨੂੰ ਕੋਈ ਐਸੀ ਵੱਡੀ ਵੱਡੀ ਚੀਜ਼ ਨਹੀਂ ਹੈ ਜਿਹੜੀ ਉਹਨੂੰ ਢੱਕ ਦੇਵੇ ਇਆ ਕੋਈ ਐਸੀ ਬੜੀ ਭੈਰ ਹੀ ਜਿਹੜੀ ਉਹਦੀ ਲਾਈਟ ਘਾ ਦੇਵੇ ਅਛਾ ਯੰਗ ਉਹਦਾ ਕਿਸੇ ਦਾ ਪ੍ਰਭਾਵ ਪੈਂਦਾ ਹੀ ਨਹੀਂ ਛਾਹ ਉਹਦਾ ਕਿਸੇ ਦਾ ਪ੍ਰਭਾਵ ਪੈ ਜਾਣਾ ਜੱਗਾ ਆ ਬੜਾ ਕੋਈ ਪ੍ਰਭਾਵ ਨਹੀਂ ਹੁੰਦਾ ਕਿਸੇ ਦਾ ਅਨਕਾਲ ਅਪਾਲ ਦਿਆਲ ਸੁੰਗ ਹੈ ਕੱਲ ਤੋਂ ਪਰੇ ਹੈ ਕੱਲ ਨਹੀਂ ਹੁੰਦਾ ਉਹਦਾ ਕੱਲ ਦਾ ਤਾਂ ਕੋਈ ਅਸਰ ਨਹੀਂ ਸਮੇਂ ਦਾ ਕੋਈ ਅਸਲੀ ਜੋਤ ਹੈ ਜੋਤ ਦਾ ਕੀ ਸੁਣ ਅਪਾਲ ਅਪਾਲ ਹੈ ਕੋਈ ਉਹਦੀ ਪਾਲਣਾ ਕਰਦਾ ਪਾਲਣਾ ਕਰ ਪਰ ਮਦੋਦੀ ਕਰੇ ਜੇ ਸਰੀਰ ਹੋਵੇ ਕੋਈ ਸਰੀਰ ਤਾਂ ਹੈ ਹੋਰੀ ਦਿਆਲ ਹੈ ਸਭ ਤੇ ਸੁਆੰਗ ਹਾਂ ਸੁਆੰਗ ਰਾਮਾ ਜੀ ਸਾਰਿਆਂ ਦੀ ਸ੍ਰਿਸ਼ਟੀ ਦਾ ਪ੍ਰਾਣ ਆਦਾਰ ਸਾਰਿਆਂ ਦੇ ਅੰਦਰ ਸੋਇ ਉਲੈ ਗਿਆ ਦੇਦੇ ਚੱਲਣਾ ਸਭ ਮੈਂ ਚਾਨਣ ਚੱਲੂ ਉਹਦਾ ਹੀ ਚੱਲਣਾ ਉਹਦੀ ਰੋਸ਼ਨੀ ਇਕ ਕੋ ਰੋਸ਼ਨੀ ਹੈ ਸਾਰਿਆਂ ਦੇ ਅੰਦਰ ਜਿਬੀ ਜਬਾਂ ਕਾ ਹੈ ਬਾੜ ਹੈ ਨਾ ਘਾਟ ਹੈ ਨਾ ਘਾਟ ਵੜ ਇਕੜਾ ਚੱਲਣਾ ਸਭ ਦੇ ਲਈ ਇਕੜਾ ਚੱਲਣ ਕੋਈ ਜੁਦ ਕੋਈ ਫਰਕ ਨਹੀਂ ਹੁੰਦੀ ਇਹਦੇ ਜਹ ਮੇਰ ਆਕਾਸ਼ ਭੂੰ ਜਿਨੇ 베ਰ ਅਕਾਸ਼ ਔਰ ਪ੍ਰਥਵੀ ਟਕਾਏ ਹੋਏ ਨੇ ਪਹਾੜ ਵੀ ਟਕੇ ਹੋਏ ਨੇ ਚਾਹ ਪਾਣੀ ਚੇ ਆਕਰ ਖੜੇ ਤਾਂ ਵਿਚਾਲੇ ਨੇ ਨਾ ਅਕਾਸ਼ ਦੇ ਕਾਹਦੇ ਵਿਚਾਲੇ ਖੜੇ ਪਾਣੀ ਖੜੇ ਨੇ ਜ਼ਮੀਨ ਖੜੀ ਹੈ ਅਕਾਸ਼ ਖੜੇ ਸਭ ਕੁ ਟਕਾਇਆ ਹੈ ਉਹਨੇ ਅਕਾਸ਼ ਤੇ ਟਕਾਇਆ ਹੈ ਰਲ ਦੇਖੋ ਕਿਨੇ ਪਲੈਨ ਸਾਰੇ ਅਕਾਸ਼ ਤੇ ਪਿਚੇ ਜਿਹਦੇ ਸਾਰੇ ਕਾਇਦੇ ਧਰਕੇ ਰੱਖੇ ਨੇ আর ਕਦੂਰਾਂ ਟਕਰਾਉਂਦੇ ਨੇ ਥੱਲੇ ਡੁੱਲ ਰਿ ਗਰੇ ਟੱਗੇ ਹੋਏ ਨੇ ਉਦਹੀਂ ਖੜੇ ਨੇ ਕੋਈ ਰੱਸੀ ਨਹੀਂ ਕੋਈ ਥੱਲੇ ਕੋਈ ਆਸਰਾ ਨਹੀਂ ਟਕਾਇਆ ਹੋਇਦ ਜਿੱਥੇ ਟਕਾਤੇ ਉਸ ਏਰੀਏ ਚ ਕੋਈ ਬੀਬੀ ਜਾਂਦੇ ਇਧਰ ਉਧਰ ਨਹੀਂ ਜਾਂਦੇ ਹਾਂ ਅਣਖੰਡ ਅਮੰਡ ਪ੍ਰਚੰਡ ਨਰੰਗ ਉਹ ਨਾਰਾ ਧਰਮ ਦਾ ਅਸਲ ਦੇ ਵਿੱਚ ਬਨ ਕਰਕੇ ਨਾ ਰਹਿੰਦਾ ਚਿਤ ਕਰਕੇ ਨਾ ਰਹਿੰਦਾ। ਨਰਵੀ ਕਹਤੋਂ ਨੂੰ। ਨਰ ਤਾਂ ਕਿ ਜਦੋਂ ਉਹ ਕੁਝ ਕਰ ਰਿਹਾ ਹੈ ਨਾ ਕਰ ਰਿਹਾ ਹੈ ਬੰਦੇ ਲੈਵਲ ਤੇ ਇੱਛਾ ਹੈ ਉਹਦੇ ਵਿੱਚ। ਇੱਛਾ ਉਹਦੇ ਬੰਦੇ ਵਿੱਚ। ਚਿੰਤਾ ਉਹਦੇ ਬੰਦੇ ਵਿੱਚ। ਤਾਂ ਉਹ ਚਿੰਤਾ ਵਾਲਾ ਪਾਸਾ ਨਾਰਾ ਹੈ। ਜਿਹੜਾ ਕੋ ਕੋ ਸ੍ਰਿਸ਼ਟੀ ਚਲਾ ਰਿਹਾ ਹੈ। ਉਹ ਨਾਰਾ ਹੈ। ਚਿਤ ਕਰਕੇ ਨਰਾਇਣ ਹੈ। ਹੁਕਮ ਕਰ ਕੇ ਨਾ ਇਹਦਾ ਹੁਕਮ ਹਨ ਹੁਕਮ ਬੰਦੇ ਵਿੱਚੋਂ ਪੈਦਾ ਹੋਇਆ ਇੱਛਾ ਮਨ ਵਿੱਚੋਂ ਪੈਦਾ ਹੋਈ ਹੈ ਉਹਦੀ ਬੰਦੇ ਵਿੱਚੋਂ ਇੱਛਾ ਪੈਦਾ ਹੋਈ ਹੈ ਉਹਦੇ ਵਿੱਚ ਬੰਦੇ ਵਿੱਚ ਮਲੀਦਤਾ ਨਹੀਂ ਹੈ ਉਹਦੇ ਠੀਕ ਹੈ ਮਨ ਦੇ ਵਿੱਚ ਦੇਖੋ ਨਾ ਮਨ ਉਹਦਾ ਹੈ ਪ੍ਰਗਟਾ ਕੰਮ ਕਰ ਰਿਹਾ ਫੇਰ ਵੀ ਉਹਦੇ ਚ ਬਲੀਦਤਾਰੀ ਹੈ ਸਾਡੇ ਮੰਦ ਦੇ ਵਿੱਚ ਬਲੀਦਤਾ ਹੁੰਦੀ ਹੈ ਜਾਂ ਪ੍ਰਗਟ ਹੁੰਦਾ ਹੈ ਉਹਦੇ ਵਿੱਚ ਬਲੀਦਤਾਰੀ ਉਹਦੇ ਵਿੱਚ ਪਰਪਕਾਰੇ ਹੁੰਦਾ ਕਿੰਦਾ ਵੀ ਸਰਦੀ ਸਰਬ ਕੀ ਕਿੰਦਾ ਜਸਮਨ ਜਸਮਨ ਮਾਨੋ ਦਾ ਬੱਕਰਾ ਜੁੜਿਆ ਆਈਮਾਨ ਕੰਮ ਕਰਿਆ ਲੋ ਉਹ ਸੰਨਾਰੇ ਜਿਹੜਾ ਸਾਸ ਰਸਤੀ ਨੂੰ ਸਭ ਵੀ ਜਿਹੜਾ ਇਸ ਅਸਿਸਟ ਜਿਹੜਾ ਜਿੱਥੋਂ ਹੁਕਮ ਨਿਕਲਦਾ ਹੈ ਉਹ ਨਾਰਾ ਹੈ ਇਸ ਕਰਕੇ ਨਰ ਕਹਤਾਂ ਨਾ ਗਰਮ ਘੁੰਡਲ ਜਦ ਆਇਆ ਸਤ ਰੇ ਨਾਲ ਗਰਮ ਘੁੰਡਲ ਜਦ ਆਇਆ ਫਿਰ ਅਸਰੀ ਇੱਥੇ ਪਤਾ ਨਹੀਂ ਹੁਕਮ ਹੁਕਮਾਇਰ ਦੇ ਵਿੱਚ ਹੀ ਆ ਹੁਕਮ ਆ ਜਣੀ ਸਾਰੇ ਅੰਦਰ ਅੰਦਰ ਹੁਕਮ ਨਹੀਂ ਆ ਫਿਰ ਉਹ ਅੰਦਰ ਮਾਇਲੇ ਬਿਤੇ ਆ ਹਾਇਲੇ ਵਿਚ ਰਹੇ ਨਾ ਲਪਟੇ ਬਸ ਪਾਇਜ ਸਵਾਲ ਨਹੀਂ ਰਿਹਾ ਸਾਰੇ ਨੂੰ ਘੜ ਨਹੀਂ ਰਿਹਾ ਘੜੀਆਂ ਘੜੀਆਂ ਵਾਰੀਆਂ ਨਹੀਂ ਹੋ ਰਿਹਾ ਦਾਲ ਨਹੀਂ ਹੈ ਉਹ ਕਲਾ ਕਲਾ ਦਾ ਆਜਲ ਹੋਇਆ ਨਰਨ ਦਾ ਨਰ ਬਣ ਗਿਆ ਜਲ ਕਲਾ ਦਾ ਨਰਨ ਤਾਹੀਦਾਰ ਬਣੇ ਨਰ ਦੀ ਕਲਾ ਹੈ ਨਰ ਅੱਛਾ ਗਮੇਪੁਰ ਆਹ ਦੇ ਵਿੱਚ ਨਰਨ ਦੀ ਕਲਾ ਹੈ ਉਹਦਾ ਪਾਣਾ ਨਰ ਹੈ ਨਹੀਂ ਹੈਗਾ ਉਹ ਨਾਰਾ ਆ ਅਨਖੰਡ ਅਮੰਡ ਪ੍ਰਚੰਡ ਨਰੰਗ ਇਹ ਦੀਆਂ ਬਰੀਕੀਆਂ ਹੋਰ ਸਬਜੀ ਦੀ ਉੱਥੇ ਦਾ ਗਿਆਨ ਇੱਥੋਂ ਲੈ ਕੇ ਉੱਥੇ ਦਾ ਗਿਆਨ ਹੋਰ ਸਮਝ ਆਉਂਦਾ ਜਿਆਦਾ ਸਮਝ ਆਉਂਦਾ ਮੈਂ ਆਪ ਨਾਨਕ ਕਲਾਤਾ ਰਹੇ ਜਗ ਵਿੱਚ ਪਰਵਰਿਓ ਉਹ ਅਰਥ ਕਾਦੇ ਕਰਤੇ ਨੇ ਉਲਟ ਆਹ ਨਹੀਂ ਸੀ ਪਤਾ ਇੱਥੇ ਨਾਨਕ ਨੂੰ ਨਾੜ ਗਏ ਤਾਂ ਉਹ ਨਾਨਕ ਕਥੇ ਨਾਨਾ ਨਾਨਕ ਨਰਨਾ ਨਾਨਕ ਨਗਨਾਰੇ ਨਾਰਤਾ ਜਸਦੀ ਜਾਂ ਗਰਭ ਕੋਟਲ ਦੇ ਵਿੱਚ ਸੀ ਸੱਚ ਕਰਨ ਨਾਲ ਨਹੀਂ ਹੁੰਦਾ ਹੁਣ ਸੱਚ ਕਰਨ ਜਾਂ ਉਹ ਫਿਰ ਪੈਨਾਲੀ ਰਹਿੰਦਾ ਨਾ ਰਹੇ ਹੁੰਦਾ ਨਾ ਨਾਰ ਹੁੰਦਾ ਉਦਾਸ ਹੁੰਦਾ ਉਹ ਦਾਸ ਹੁੰਦਾ ਹੈ। ਉਹ ਜਾ ਹੁਕਮ ਜਲੀਰ ਹੁੰਦਾ ਨਾ ਹੁਕਮੇ ਹੁੰਦਾ ਸਭ ਕੁਝ ਬਸ। ਹੁਕਮ ਹੈ ਨਾਰਾ। ਕੋਈ ਨਾ। ਉਹ ਆਪਣੇ ਨਾਲ ਹੈ ਹੀ ਨਹੀਂ ਕੁਝ। ਨਾ ਨਰਾਇਣ ਦੋਏ ਬਣ ਗਿਆ ਫਿਰ ਆਪ ਉਹ। ਜਾ ਜਾ। ਸੱਚ ਕੰਨ ਲਾਓ ਜੇ ਹੋਊਗਾ। ਕੱਲਾ ਕੱਲਿਆਂ ਨੂੰ ਨਹੀਂ ਉਹਨੂੰ ਕਰਕੇ ਦੇਖ ਸਕਦੇ। ਕੱਲੇ ਕਿਸੇ ਵਖਤ ਨੂੰ ਕਰਕੇ ਨਹੀਂ ਦੇਖ ਸਕਦੇ। ਕੱਲਾ ਦੇਖੋਗੇ। ਬਸ ਕੱਲਾ ਦੇਖਣ ਵਾਲੇ ਪਰਫਲੋ। ਉਹਨੂੰ ਕੱਲਾ ਕਰਕੇ ਹੁਣ ਦੇਖਦੇ ਆਂ ਕਿ ਬੂਸੇ ਸਮੁੰਦਰ ਚ ਪੈ ਗਈ ਉਹਨੂੰ ਕੱਲੀ ਕਰਕੇ ਕਿਵੇਂ ਦੇਖੋਗੇ ਹੁਣ ਤੁਸੀਂ ਕੱਲੇ ਹੀ ਕਰਕੇ ਦੇਖਣਾ ਬੇਵਕੂਫੀ ਤੋਂ ਸਭ ਕੁਝ ਨਹੀਂ ਪਰ ਗੜਾ ਹੋ ਦੇਖਣ ਦੀ ਕੋਸ਼ਿਸ਼ ਕਰਦੇ ਆਂ ਜਲਦੀ ਜਾ ਪਰ ਖੜਾ ਹੋ ਤੂੰ ਬੁੱਲ ਜਾ ਉਹਨੂੰ ਉਸ ਉਹਨੂੰ ਭੁਲਾ ਦੇਣਾ ਠੀਕ ਹੈ ਨਾਲ ਅਸੀਂ ਇੱਕ ਪਿੱਛੇ ਬਹੁਤ 30 ਸਾਲ ਪਹਿਲਾਂ 300 ਕਿਲੋਮੀਟਰ ਪਿੱਛੇ ਲੋਕਾ ਜਿ ਸੈ ਗਿਆ ਸੀ 300 ਕਿਲੋਮੀਟਰ ਤੇ ਜਾ ਕੇ ਰੁੱਦਾ ਚ ਨਾਲੇ ਨੂੰ ਯਾਦ ਕਰਦੇ ਉਹ ਪਿੱਛੇ ਪੈ ਗਿਆ ਸੀ 300 ਕਿਲੋਮੀਟਰ ਗਾਹਾਂ ਲਾ ਕੇ ਨਾਲੇ ਦੀ ਗੱਲ ਕਰਦੇ ਹੁਣ ਤੁਸੀਂ ਯਾ ਸੀਗਾ ਜਾਂ ਸੀਗਾ ਹੁਣ ਨਹੀਂ ਹੈ ਹਾਂ ਗੰਗਾ ਆ ਹੁਣ ਤੱਕ ਆਈ ਹੈ ਇਹ ਜਿਹੜੇ ਮੂਰਖ ਆਦਮੀ ਉੱਧਰ ਨੇ ਇਹ ਗੱਲ ਨਹੀਂ ਕਰ ਸਕਦੇ ਉਹਨਾਂ ਤੇ ਨਹੀਂ ਬੁੱਧੀ ਉਹ ਨਹੀਂ ਵਿਚਾਰਾਂ ਦੀ ਉਹ ਅਸਲ ਵਿੱਚ ਵਿਅਕਤੀਆਂ ਨਾਲ ਜੁੜ ਜਾਂਦੇ ਨੇ ਜਿੱਥੇ ਵਿਅਕਤੀਆਂ ਨੇ ਜੋੜੇ ਨੇ ਉੱਥੇ ਦੀ ਜੁੜੇ ਜਿੱਥੇ ਜੋੜ ਰਹੇ ਤੇ ਸਾਨੂੰ ਉਹਨਾਂ ਦੀ ਜੋ ਕਿਹਾ ਸੀ ਨਾ ਜੇ ਤਾਂ ਅਸੀਂ ਉਹ ਕੰਮ ਕਰਦੇ ਫੇਰ ਤਾਂ ਜੁੜ ਜਾਂਦੇ ਉੱਥੇ ਹੋਵੇ ਜਿਵੇਂ ਉਹ ਜੁੜੇ ਨੇ ਉਹਨਾਂ ਦੀ ਗੱਲ ਗੱਲ ਨਹੀਂ ਮੰਨੀ ਅਸੀਂ ਉਹਨਾਂ ਨਾਲ ਜੁੜ ਗਏ ਉਲਟੇ ਬਤਨ ਨਾਨਕ ਤੁਹਾਨੂੰ ਨਾਨਕੇ ਕਹਿਣ ਲੱਗੇ ਉਹਨੇ ਤੁਨ ਤੁਨ ਕਰਨ ਵਾਲੇ ਹੁੰਦੇ ਨੇ ਨਾ ਉਹ ਮੂਰਖ ਹੁੰਦੇ ਨੇ ਸਾਰੇ ਆ ਗਿਆ ਨਾ ਤੰਨ ਕਹੈਂ ਜੇ ਇੰਦਰ ਤੰਨ ਕਹਿੰਦਾ ਇੰਦਰ ਬਗੜਾ ਭਗਤਾ ਜਦੋਂ ਭਗਤ ਬਣ ਲਿਆ ਮਾਇਆਦਾਰੀ ਹੈ ਮਾਇਆਦਾਰੀ ਤੰਨ ਤੰਨ ਕਰਨ ਜਾਣਦੇ ਹੁੰਦੇ ਨੇ ਦੁਖਾਂ ਕਰਦੇ ਹੀ ਨਹੀਂ ਹੁੰਦੇ ਕੁਝ ਉਹ ਕਹਿੰਦੇ ਨੇ ਤੰਨ ਕਹਿਣਾ ਵੀ ਠੀਕ ਹੈ ਸਾਡੇ ਵੱਤ ਇਹਦੇ ਨਾਲ ਸਾਨੂੰ ਰਹਿਤ ਬੁੱਝ ਜੋ ਕੋ ਮਿਲਣਾ ਇਹ ਹੀ ਭਗਤੀ ਹੁੰਦੀ ਉਹਨਾਂ ਕੋਈ ਇਤੋਂ ਜ਼ਿਆਦਾ ਨਹੀਂ ਹੁੰਦੀ ਭਗਤੀ ਇਹ ਦੇਵਤਿਆਣੀ ਭਗਤੀ ਹੈ ਤੰਨ ਕਹਿਣਾ ਇਦੋਂ ਗਾਹ ਨਹੀਂ ਬੰਨਣਾ। ਉਹ ਤੰਦ-ਤੰਦ ਕਹਿ ਰਹੇ ਨੇ। ਉਹ ਦੇਵਦੇਵਾ ਇਹਨਾਂ ਕੋਈ ਕਹਿਣਾ ਹੁੰਦਾ ਨਹੀਂ। ਰਾਖਸ਼ੀਏ ਗੱਲ ਨੂੰ ਮੰਨਦੇ ਨਹੀਂ ਉਹਨਾਂ ਵਾਲੀ ਨੂੰ ਫਿਰ। ਉਹ ਕਹਿੰਦਾ ਤੁਸੀਂ ਐਕਸਪਲੇਨ ਕਰੋ, ਤਾਂ ਕਹਿੰਦੇ ਕੀ ਰੂ? ਕੀ ਰੂ ਕਹਿਣਾ ਤਾਂ ਨਾ ਕਿ ਉਹ ਕਹਿਣਾ ਇਹ ਗੱਲ ਦਾ ਜਵਾਬ ਉਹਨਾਂ ਕੋਈ ਨਹੀਂ ਹੁੰਦਾ। ਜਵਾਬ ਨਹੀਂ ਹੁੰਦਾ ਫਿਰ। ਤਾਂ ਮੂਲੀ ਬੰਦੇ। ਤਾਂ ਤੋਂ ਬਾਗੀ ਹੋ ਜਾਂਦੇ ਨੇ ਲੋਕ। ਇਹ ਗੁਰਖਦੇ ਦੰਤ ਲੋਕ ਬਗੀਦੇ ਜਿਹੜਾ ਗੁਰਖ ਦਾ ਧਰਮ ਹੈ ਨਾ ਤਰ ਤਰ ਕਰਨ ਵਾਲਿਆਂ ਦਾ ਧਰਮ ਹੈ ਨਾ ਉਹ ਤੋਂ ਲੋਕ ਬਗੀਦੇ ਉਹ ਤੋਂ ਤਰਖੀਲ ਕਹਿੰਦੇ ਨੇ ਵੀ ਇਹ ਗੁਰਖ ਨੇ ਵੀ ਧਰਮ ਹੁੰਦਾ ਹੀ ਨਹੀਂ ਇਹ ਤਾਂ ਮਨੋਸ਼ ਹੈ ਨਾ ਜਾਈਆ ਉਹਨਾਂ ਨੂੰ ਤਰ ਤਰ ਕਰਨ ਵਾਲੀ ਲੋਰ ਕੀ ਹੈ ਧਰਮ ਤਾਂ ਉਹਨਾਂ ਨੂੰ ਗਿਆ ਨਹੀਂ ਉਹ ਨੋਸ਼ ਹੈ ਕਬਨ ਵੀ ਕਹਣਾ ਵੀ ਤਾਂ ਨੋਸ਼ ਹੈ ਕੋਦਰ ਕੀ ਕਹਣਾ ਨੇ ਨਾਉ ਦੇ ਕਹਿੰਦੇ ਨੇ ਠੀਕ ਹੈ ਤੇ ਜੋ ਕੋ ਦੇਖਦੇ ਨੇ ਉਹਨਾਂ ਦੇ ਹਿਸਾਬ ਨਾਲ ਠੀਕ ਹੈ ਉਹ ਠੀਕ ਹੈ ਕਹਿੰਦੇ ਨੇ ਜਹਰ ਰਚੇਨ ਦੇਵ ਅਦੇਵ ਵਰੰ ਜਿਨ ਰਚੇਨ ਦੇਵ ਵੀ ਦਾਇਤ ਵੀ ਉਹਨਾਂ ਦਾ ਦੇਵਰ ਅਦੇਵ ਦੋ ਰਚੇਨ ਦੇ ਵੀ ਤੇ ਵੀ ਨਵਨੜਾ ਵਾਲੇ ਨਵਨੜਾ ਵਾਲਿਆਂ ਕੋਲ ਵੀ ਗਿਆਨ ਅਸਲ ਚ ਨਵਨੜਾ ਦੀ ਵੀ ਆਪੇ ਬੈਠਾ ਉਹਨਾਂ ਦੀ ਤਸੱਲੀ ਨਹੀਂ ਕਰਾ ਹਟੇ ਕਰਾ ਸਕੇ ਤਾਰ ਮੁਕਾਦਮੀ ਉਹਨਾਂ ਦੇ ਵਿਰੋਧੀ ਹੋ ਗਏ ਉਹਨਾਂ ਨੂੰ ਪਾਗਲ ਕਹਿਣ ਲੱਗੇ ਤਾਰ ਮੁਕਾਦਮੀ ਨੂੰ ਪਾਗਲ ਕਹਿਣ ਲੱਗੇ ਪਾਗਲ ਆਪੇ ਸੀ ਪਹਿਲਾਂ ਝੂਠ ਬੋਲਦੇ ਸੀ ਝੂਠ ਬੋਲਦੇ ਸੀ ਝੂਠ ਬੋਲਦੇ ਸੀ اگر جدا انہوں نے راکشا لے قبضہ کر لیا جوے چائنا نے قبضہ کر لیا تبتے زرا الہ میں ہن کہندا پھردا بی تالفو جھوٹلو کڈ دیو جی جداں پہلا نہیں یاد آیا جھوٹ ہے پہلا نہیں یاد آیا ہن پتہ لگا بی جھوٹ رو ڈی نہ جیسی جھوٹ نہ کڈیا پہ ਚੂੜਦੇ ਰਾਤ ਤਰਮ ਨਾ ਰੱਖਦੇ ਤਾਂ ਹਲਤ ਕਿਉਂ ਹੁੰਦੀ ਹੁਣ ਸਮਝਾਈਏ ਵੀ ਤਰਮ ਦਾ ਚੂੜਾ ਸੀ ਜਿਹੜਾ ਸੀ ਉਹ ਲੈ ਕੇ ਬਹਿ ਗਿਆ ਸਾਡੂ ਕੌਣ ਕਹੇ ਸਾਨੂੰ ਕੱਢ ਦੇਣਾ ਚਾਹੀਦਾ ਸੀ ਕਬਰਿਸਤਾਂ ਖਰਾਬ ਤੇ ਨਾ ਤਰਬ ਤੇ ਉਹਨਾਂ ਨੂੰ ਅਸੀਂ ਸੈਟੀਸਫਾਈ ਕਰਾਉਂਦੇ ਤਰਬ ਦੇ ਨਾਲ ਤੇ ਤਰਵਾਉਂਦੇ ਸੈਣੀ ਜਾਈਂ ਕਰਾ ਨਹੀਂ ਸਕਿਆ ਉਹਨੇ ਹਮ ਕਰਕੇ ਲੋਕਾਂ ਨੂੰ ਭੜਗਾ ਕੇ ਆਪਣਾ ਰਾਜ ਖੋਲਿਆ ਮੇਰਾ ਪੜ੍ਹਨੇ ਹੁਣ ਦੁਨੀਆਂ ਨੂੰ ਫੀਲ ਕਰਦਾ ਧਰਮ ਝੂਠ ਕੰਢ ਦਿਓ ਕੱਲ ਤਾਂ ਠੀਕ ਐ ਨਾ ਹੁਣ ਵੀ ਚੰਗੀ ਕਹਿੰਦਾ ਮਾੜੀ ਨਹੀਂ ਕਹਿੰਦਾ ਲੋਕਾਂ ਨੂੰ ਤਾਂ ਹੰੜਾ ਜਾਇਦਾ ਧਰਮ ਕੋਲ ਤਿਆਰ ਨੂੰ ਤਾਂ ਆਂ ਚਾਹੀਦਾ ਸਮਾਂ ਆ ਗਿਆ ਧਰਮ ਸਾਰੇ ਸਾਭ پاک ਬਣਾ ਕੇ ਇੱਕ ਧਰਮ ਬਣਾ ਲੈਣ ਝੂਠ ਵਿੱਚੋਂ ਕੱਢ ਦੇਣ ਆਇ ਇਲਾਜ ਨਹੀਂ ਹੈ ਕਿਸੇ ਜੀਤ ਦਾ ਨਾ ਅੱਤਵਾਦ ਦੇ ਖਿਲਾਫ ਫੌਜ ਨਾਲ ਜਾਂ ਕਿਸੇ ਚੀਜ਼ ਨਾਲ ਅੱਤਵਾਦ ਨੂੰ ਫੋਰਸ ਨਾਲ ਕੁਚਲਣਾ ਵੀ ਇਲਾਜ ਨਹੀਂ ਹੈ ਅੱਤਵਾਦ ਝੂਠਾ ਧਰਮ ਲੈ ਕੇ ਅੱਤਵਾਦ ਫਲਾਉਣਾ ਵੀ ਇਲਾਜ ਨਹੀਂ ਹੈ ਮਸਲੇ ਦਾ ਮਸਲੇ ਹੱਲਾ ਸੱਚ ਤੇ ਆਉਣਾ ਸੱਚ ਤੇ ਹੱਕ ਤੇ ਇਨਸਾਫ ਤੇ ਆਉਣਾ ਮਸਲੇ ਦਾ ਹੱਲਾ ਹੈ ਅਤਵਾਦ ਵਾਲੇ ਤਾਂ ਸ਼ਾਇਦ ਬੋਲ ਜਾਣਗੇ ਜਿਨ੍ਹਾਂ ਦੇ ਹੱਥ ਵਿੱਚ ਪਾਵਰ ਹੈ ਉਹਨਾਂ ਨੇ ਨਹੀਂ ਬੋਲੇ ਇਹ ਗੱਲ ਤਾਂੜ ਮਾੜੇ ਤਾਂ ਬੋਲ ਜਾਣਗੇ ਇਸ ਗੱਲ ਨੂੰ ਜਿਹੜੇ ਤਲਬ ਦੇ ਨੋਤੇ ਅਤਵਾਦ ਕਰਦੇ ਨੇ ਉਹ ਤਾਂ ਸ਼ਾਇਦ ਮੰਨ ਜਾਣ ਪਰ ਦੂਜਿਆਂ ਨੇ ਨਹੀਂ ਮੰਨਣਾ ਪਾਵਰ ਵਾਲ ਨੂੰ ਕੋ ਕਹਿੰਦੇ ਅਸੀਂ ਪਾਵਰ ਆਪਣੀ ਕਿਉਂ ਛੱਡੀ ਪਾਵਰ ਵਾਲਾ ਆਦਮੀ ਦੀ ਸ਼ਰਤਾ ਹੁੰਦਾ ਪਾਵਰ ਚਾਹੁੰਦੇ ਹੁਣ ਪਾਵਰ ਵਾਲੇ ਦੀ ਵੀ ਉਮਰ ਹੋ ਜਵੇ ਆਹਨੇ ਕਿਵੇਂ ਹੋਊਗਾ ਸੁਧਾਰ ਆਪਣੇ ਆਪ ਵੀ ਲਿਆਓ ਤਦ ਆਲ ਲੜਣਾ ਪਊਗਾ ਸਾਰਿਆਂ ਨੂੰ ਆਪਣੇ ਵਿੱਚ ਖਰਮਰ ਹੋ ਜਾ। ਜਦ ਆਲ ਨਹੀਂ ਆਦਾ ਬੰਦੀ ਹੁੰਦਾ ਹੁੰਦਾ। ਸਭ ਕੀਨੀ ਦੀਨ ਜ਼ਮੀਨ ਜਮਾ ਸਭ ਜ਼ਮੀਨ ਉਹਨੇ ਬਣਾਈ ਹੈ। ਅਸਮਾਨ ਉਹਨੇ ਬਣਾਇਆ। ਫਰਕ ਵੀ ਸਾਰੀ ਰਚਨਾ ਉਹਨੇ ਕੀਤੀ ਹੈ। ਸਾਰੀ ਰਚਨਾ ਹੀ ਉਹਨੇ ਕੀਤੀ ਆਪ ਜਹਿ ਰਚੀ ਅੰਗਨ ਸਰਬ ਮੁਕੀਨ ਮਕਾਂ ਜਿਹਦੇ ਸਾਰੇ ਵਕੀਰ ਵਕੀਰ ਕਾਣ ਨੇ ਵਸਣ ਵਾਲੇ ਧਰਤੀ ਦੇ ਧਰਤੀਆਂ ਧਰਤੀਆਂ ਬਣਾਈਆਂ ਮਕਾਂ ਤਾਂ ਸੀ ਆਪ ਬਣਾਏ ਨੇ ਪਹਿਲਾਂ ਨਹੀਂ ਸੀ ਹੁੰਦੇ ਮਕਾਂ ਜਾਨਵਰਾਂ ਦੇ ਘੜੇ ਮਕਾਂ ਨੇ ਵੜੇ-ਵੜੇ ਆਲਣੇ ਵਗੈਰਾ ਬਣਾ ਲੈਂਦੇ ਨੇ ਸਾਡੇ ਵੀ ਆਲਣੇ ਹੀ ਨੇ ਜੇ ਧਰਤੀ ਹੈ ਤਾਂ ਵੀ ਬੁਕਾਨ ਬਣਾ ਲਿਆ ਜੇ ਮਿੱਟੀ ਹੈ ਤਾਂ ਮਕਾਨ ਬਣਾ ਲਿਆ ਜੇ ਪੱਥਰ ਹੈ ਤਾਂ ਪੱਥਰ ਦੇ ਬੁਕਾਨ ਬਣਾ ਲੇ ਮਿੱਟੀ ਹੈ ਤਾਂ ਟਾਂ ਪੱਥਰ ਕੇ ਬਣਾ ਲੇ ਪੱਥਰਾਂ ਦੇ ਭੀ ਕੇ ਸਾਰਾ ਚੀਜ਼ਾਂ ਤਾਂ ਉਹਨੇ ਬਣਾਈਆਂ ਨੇ ਜਿਹੜਾ ਆਗਨਾ ਰੂਪ ਦਾ ਰੇਖ ਰੁਖੰ ਜਿਹੜਾ ਕੋ ਰਾਗਨੀ ਰਾਗਾ ਉਨੂੰ ਕੋਈ ਭੁੱਖ ਨਹੀਂ ਉਹਦੀ ਕੋਈ ਡਿਮਾਂਡ ਨਹੀਂ ਹੈ ਲੋੜਾਂ ਨਹੀਂ ਲੋੜਾਂ ਲੋੜ ਰਹਾਗਾ ਸਾਡੀ ਲੋੜ ਹੈ ਸਾਡਾ ਰਗ ਵੱਡੀ ਰਹਿੰਦੀ ਹੈ ਕੋਈ ਨਾ ਕੋਈ ਲੋੜ ਖੜੀ ਰਹਿੰਦੀ ਹੈ ਨਾ ਕੋਈ ਰੂਪ ਹੈ ਨਾ ਰੇਖ ਹੈ ਨਾ ਕੋਈ ਉਹਦਾ ਚਿਹਰਾ ਮੋਰਾ ਚਿਹਰਾ ਮੋਰਾ ਵੀ ਹੈ ਨਹੀਂ ਤਾਪ ਨਾ ਸਰਾਪ ਨਾ ਸੋਖ ਸੁਖੰ ਨਾ ਉਹਦਾ ਕੋਈ ਤਾਪ ਹੈ ਨਾ ਕੋਈ ਉਹਨੂੰ ਡਰ ਪਿਆ ਨਾ ਕੋਈ ਸ਼ਰਾਪ ਹੈ ਸ਼ਰਾਪ ਕੀ ਹੁੰਦਾ ਆਪਣਾ ਰੁਸਵਾ ਨਾਫ ਕਰ ਲੈਣਾ ਅਸਲ ਦੇ ਵਿੱਚ ਸ਼ਰਾਪ ਆਪਣਾ ਰੁਸਵਾ ਨਾਫ ਕਰਨ ਨੂੰ ਕਹਿੰਦੇ ਨੇ ਬੁੱਧੀ ਇਹਨੂੰ ਹੋਈ ਜਾਣ ਪੈਰ ਘੋੜਾ ਮਾਰੀ ਜਾਣਾ ਸ਼ਰਾਪ ਹੈ ਕਹਿੰਦਾ ਇਹ ਤਾਂ ਸ਼ਰਾਪਿਆ ਹੋਇਆ ਉਠੇ ਰਾ ਪੈ ਗਿਆ ਉਠੇ ਰਾ ਬੈ ਜਾਣਾ ਸ਼ਰਾਪ ਹੈ ਰੋਗ ਨਾ ਸੋਗ ਨਾ ਭੋਗ ਭਉਣ ਦਾ ਰੋਗਾ ਮੋਯੋ ਰੋਗੀਤਾ ਦੇਖੋ ਰੋਗ ਸਰੀਰ ਦੇ ਹੀ ਨਹੀਂ ਹੁੰਦੇ ਰੋਗ ਮਾਨਸਿਕ ਵੀ ਹੁੰਦੇ ਰੋਗ ਹੀ ਆ ਦਰਾਇਤ ਕਰਨੀ ਕਿਸੇ ਨਾਲ ਵੀ ਰੋਗ ਹੈ ਲੋਭ ਕਰਨ ਉਹ ਵੀ ਰੋਗ ਹੈ ਚੰਗਾ ਮਾੜਾ ਸਮਝਣਾ ਉਹ ਹੀ ਨਹੀਂ ਉਹਨੂੰ ਰੋਗ ਕੋਈ ਕੋਈ ਔਗਣ ਹੈ ਹੀ ਨਹੀਂ ਉਹ ਚ ਔਗਣ ਕਹਿ ਲੋ ਔਗਣ ਸਾਰੇ ਰੋਗ ਨੇ ਔਗਣੋਂ ਚ ਕੋਈ ਹੈ ਨਹੀਂ ਔਗਣ ਹੋਊਗਾ ਤਾਂ ਦੇਦਾਲ ਘੱਡੀ ਬੂ ਔਗਣ ਹੁੰਦਾ ਸਮਝ ਜਾਂਦਾ ਜਗਦਾ ਰਹੇ ਸਵੇਸ਼ਾ ਜਾਗਦਾ ਨਹੀਂ ਰਹੇ ਔਗਣ ਵਾਲਾ ਉਗਣਾਂ ਲਈ ਜਿੰਨੀਆਂ ਸ਼ਕਤੀਆਂ ਦੀਆਂ ਜਿਹੜੀਆਂ ਉਹ ਵੇਚਣ ਜਾਂ ਉਹ ਕੜਾ ਖਤਮ ਹੁੰਦੇ ਨੇ ਫਿਰ ਇਹ ਸ਼ਕਤੀਆਂ ਪੈਦਾ ਹੁੰਦੀਆਂ ਨੇ ਹੂੰ ਜੇ ਖੇਦ ਨਾ ਭੇਦ ਨਾ ਛੇਦ ਛੈ ਨਾ ਕੋਈ ਖੇਦ ਹੈ ਖੇਦ ਖੇਦ ਮਤਲਬ ਕਿ ਤੱਕ ਦੀ ਹੈ ਕਪੜਾ ਦੇ ਅੰਦਰ ਕੋਈ ਕਮਿਓ ਨਹੀਂ ਛੇਦ ਨਹੀਂ ਹੈ ਛੇ ਜੇ ਖੇਦ ਨਾ ਭੇਦ ਨਾ ਛੇਦ ਛੈ ਨਾ ਉਹਨੂੰ ਕੋਈ ਭੇਦ ਭੇਦ ਸਕਦਾ ਨਾ ਉਹ ਤੋੜ ਸਕਦਾ ਨਾ ਕੋਈ ਘਟ ਸਕਦਾ ਇਸ ਕਰਕੇ ਉਹਨੂੰ ਇਸ ਚੀਜ਼ ਦੀ ਚਿੰਤਾ ਨਹੀਂ ਜਏ ਜਾਤ ਨਾ ਪਾਤ ਨਾ ਮਾਤ ਪਿਤਮ ਜਿੰਨਾ ਕੋਈ ਉਹਦੀ ਜਾਤ ਹੈ ਸਰੀਰ ਹੈ ਜਾਤ ਸਿੱਧੀਆਂ ਨਾਲ ਦੇ ਨਾਲ ਜਾਤ ਹੁੰਦੀ ਹੈ ਨਾ ਫੇ ਲੱਗੇ ਨਾ ਪਿਤਾ ਹੈ ਨਾ ਮਾਤਾ ਇਸ ਕਰਕੇ ਜਾਤ ਪਾਤ ਨਹੀਂ ਬਣੀ ਸਿੱਖੀ ਸਰੀਰ ਤਾਂ ਚਲੋ ਜਾਤ ਹੈ ਜ਼ਰੂਰ ਇਹ ਇਹ ਹੈ ਵੀ ਜਿਹੜੀ ਆਦਮੀ ਇੱਕ ਜਾਤ ਹੈ ਅਰਤ ਦੂਜੀ ਜਾਤ ਆ ਇਦਾਂ ਇਦਾਂ ਜਾਤਾ ਤਾਂ ਹੈ ਜਰੂਰ ਹੈ ਜਿਹੜੇ ਸਰੀਰ ਨੇ ਅਡ ਅਡ ਡੰਗਰਾਂ ਦੇ ਜਾਤ ਹੈ ਪਸ਼ੂਆਂ ਦੀ ਜਾਤ ਹੈ ਪਰਛੀਆਂ ਦੀ ਜਾਤਾਂ ਦੇ ਅਡ ਅਡ ਸਰੀਰ ਨੇ ਆ ਜਿਹੜੇ ਇਹਨਾਂ ਨੇ ਵਰਲਡ ਵਰਡ ਦੂਜੀ ਬਣਾ ਲਈ ਜਾਤ ਪਾਤ ਇਹ ਨਹੀਂ ਬਣਦੀ ਗੁਰਬਾਨ ਜੀ ਛੱਡ ਕੇ ਕੋਈ ਕੁੱਤਾ ਖਿਆਰ ਕਰ ਲੋ ਉਹਦੇ ਜਾਤ ਦਾ ਕੀ ਹੁੰਦਾ ਇਹ ਜਾਪੇ ਨਹੀਂ ਚੱਲਦੇ ਵਿੱਚ ਜਿਹੜੇ ਰਚਿਆਂ ਛਤਰੀ ਛਤਰਛਤੰ ਜਿਹਨੇ ਛਤਰੀ ਬੜੇ ਬੜੇ ਪੈਦਾ ਕੀਤੇ ਨੇ ਜਿਨ੍ਹਾਂ ਨੇ ਆਪਣੇ ਸਿਰ ਤੇ ਛਤਰ ਫਰਾਏ ਨੇ ਬੜੇ ਬੜੇ ਛਤਰੀ ਰਾਜੇ ਨੇ ਪੈਦਾ ਕੀਤੇ ਉਹਨੇ ਹੀ ਪੈਦਾ ਕੀਤੇ ਛਤਰਛਤੰ ਫੈਦਲ ਦੀ ਛਾਇਆ ਦੇ ਥਲੇ ਕੱਲਦੇ ਰਹੇ ਨੇ ਛੇਤ ਛਾਤੋਂ ਦੀ ਛਤਧਾਰੀ ਜਿਹੜੇ ਬੜਵਡੇ ਹੋਏ ਨੇ ਰਾਜੇ ਛਤਰੀ ਉਹਦੇ ਪੈਦਾ ਕੀਤੇ ਹੋਏ ਨੇ ਇਹਦਾ ਵਲ ਜਿਹਨੇ ਅਵਤਾਰ ਛਤਰੀ ਹੋਏ ਨੇ ਨਾ ਉਹਨਾਂ ਦੀ ਗੱਲ ਹੈ ਉਹ ਦਾ ਨਿਹ 14 ਉਤਾਰ 14 ਨੇ ਜਿਹੜੇ ਦੂਏ ਵੀ ਨੇ ਸਾਰੇ ਛਤਰੀ ਜਿਹਨਾਂ ਦੂਏ ਉਤਾਰ ਵੀ ਸਾਰੇ ਉਹਦੇ ਰਚਨਾ ਕੀਤੇ ਉਹ ਉਤਾਰ 10 ਭਗਤ ਹੋਏ 10 ਉਤਾਰ ਭਗਤ ਹੋਏ ਸੱਚੂ ਸ੍ਰੀ ਰਾਜੇ ਸ੍ਰੀ ਭਗਤ ਤਾਂ 10 ਬੰਦੇ ਉਹਨਾਂ ਨੇ ਸੱਚ ਵਾਸਤੇ ਸਭ ਕੁਝ ਕੀਤਾ ਜਿਹੜਾ ਆਗਨਾ ਰੇਸਨਾ ਰੋਗ ਭਣ ਉਹਦੇ ਵਿਚਾਰਾਂ ਨੂੰ ਕੋਈ ਰਾਗ ਹੈ ਨਾ ਕੋਈ ਰੇਗਾ ਹੈ ਨਾ ਕੋ ਰੂਪ ਹੈ ਨਾ ਕੋ ਰੋਗ ਹੈ ਕੋਈ ਦੱਸ ਨਹੀਂ ਸਕਦਾ ਹੁਣ ਕਿਸੇ ਨਾਲ ਇਹ ਨਹੀਂ ਦੱਸਿਆ ਗਿਆ ਇਹ ਗੱਲ ਕੋਈ ਰਾਗ ਹੈ ਰੂਪ ਹੈ ਰੇਖ ਹੈ ਨਾ ਤਾਗ ਨਾ ਦੋਖ ਗਣ ਉਹਦੇ ਨੂੰ ਦੇਸ਼ ਹੈ ਕਿਸੇ ਨੇ ਇਰਖਾ ਨਹੀਂ ਕਰਦਾ ਕਿਸੇ ਨਾਲ ਕੋਈ ਉਹਦੇ ਅੰਦਰ ਸਭ ਜੋ ਵੈਰ ਵਿਰੋਧ ਨਹੀਂ ਹੈ ਉਹਦੇ ਬਰ ਵੈਰ ਵਿਰੋਧ ਕਿਸੇ ਨੂੰ ਨਾ ਦੋਖ ਗਣ ਨਾ ਕੋਈ ਦੋਖ ਹੈ ਓਗਣ ਹਾਂ ਜੈ ਅੰਡਾ ਹੈ ਦੇ ਬ੍ਰਹਮੰਡ ਰਚਿਓ ਆ ਦੇਖੋ ਫੇਲੇ ਅੰਡਾ ਪੈਦਾ ਕੀਤਾ ਉਹਨੇ ਅੰਡਾ ਜਿਹੜਾ ਹੁੰਦਾ ਨਾ ਵਾਇਆ ਦੇ ਵਿੱਚ ਸੈੱਲ ਦੇ ਜਿਹੜੇ ਕਹਿੰਦੇ ਸੈੱਲ ਜਿਉਂਦੇ ਨੇ ਜਿਉਦੇ ਨੇ ਕਦੇ ਜਿਉਂਦੇ ਨੇ ਚੇਤਨ ਕਰਕੇ ਜਿਉਂਦੇ ਸਾਡਾ ਸਰੀਰ ਕਿਉਂ ਜਿਉਂਦਾ ਹੈ ਚੇਤਨ ਹੈ ਜਿਹਨਾਂ ਚਲੋ ਜਿਹਾ ਨਾ ਚੇਤਨ ਵਿੱਚ ਨਹੀਂ ਰਿਹਾ ਸੈਲਿਬਿਟਡ ਹੋ ਜਾਂਦਾ ਨੇ ਜਿਹੜੇ ਸੈਲ ਜਿਉਂਦੇ ਨੇ ਉਹ ਵੀ ਡੈਡ ਹੋ ਜਾਂਦੇ ਇਹ ਅੰਧੇਤਾ ਪਰਮੰਡਲ ਜਿਨੇ ਅੰਡਰ اور ਬ੍ਰਹਮੰਡ ਤੋਂ ਹੋਇਆ ਕੋਲ ਹੈ ਬ੍ਰਹਮੰਡ ਬ੍ਰਹਮੰਡ ਬਿਉਸਾਨਾ ਬੜਾਇਆ ਸੀ ਮੈਂ ਮਹਦੂਦ ਲਖਾਇਆ ਖਸਮੇ ਦੇ ਦਰ ਜੈ ਇਹਨੂੰ ਬ੍ਰਹਮੰਡੋਂ ਸੱਨੇ ਬਣਾਇਆ ਸੀ ਜਿਆਦੇ ਨੂੰ ਸਵਾਲ ਨਾ ਸੀ ਨਾ ਧਰਤੀ ਤੇ ਵਜਣਾ ਸੀ ਹੈਲੋ ਜਦੋਂ ਬ੍ਰਹਮ ਹੈ ਨਾ ਕੱਲਾ ਜੋਤ ਹੈ ਇਹਨੂੰ ਆਂਡੇ ਚ ਬੰਦ ਕੀਤਾ ਜਿਵੇਂ ਆਂਡਾ ਹੁੰਦਾ ਹੈ ਅੜੜਾੜੇ ਕੀ ਅੜੜਾੜੇ ਨੇ ਰੇ ਉਹ ਕਿਜੀ ਜਾਣਨ ਵਾਲੇ ਹੁੰਦੇ ਵਿਚਾਰ ਨਾ ਬੰਦ ਜੇ ਹੋਊਗਾ ਨੇਰੇ ਜੇ ਹਰ ਕੋਲ ਬ੍ਰਹਮੰਡ ਹੈ ਅੰਡਾ ਹੈ ਮੈਂ ਮਹਦੂਦ ਕਰ ਦੇਣਾ ਮਹਦੂਦ ਮੈਂ ਮਹਦੂਦ ਲਖਾਇਆ ਖਸਮੇ ਕੇਦਰ ਜਾਏ ਜਿਹਦੇ ਉੱਤੇ ਮੈਂ ਸੀ ਨਾ ਉਡਾਣਡ ਬਣਾਤਾ ਹੰਡਾ ਬਣਾਤਾ ਪ੍ਰੈਸ ਕਰਕੇ ਉਹ ਤਾਂ ਹੁਣ ਬ੍ਰਹਮੰਡ ਬਣਾਉੜਾ ਨਾ ਬ੍ਰਹਮੰਡ ਤਾਂ ਬਣ ਗਿਆ ਉਹ ਤਾਂ ਅੰਡ ਬਣਾਉੜਾ ਉਹ ਤਾਂ ਅੰਡ ਵੀ ਹੋ ਕੋਲੋਂ ਬਣੇ ਯੋਗਨੀ ਦਾੰਡਰੀ ਬਰਦਾ ਜਿੰਨਾ ਚਿਰ ਵਾਸਤੇ ਹੁਕਮ ਹੈ ਉਹਨਾ ਚਿਰ ਉਹ ਜੋਤ ਨਿਕੜ ਕੇ ਕੰਮ ਕਰਦੀ ਬਸ ਉਹਨਾ ਚਿਰ ਉਹਦਾ ਬਾਹਰ ਜਾ ਸਕਦਾ ਜਿੱਤ ਤੋਂ ਮਨ ਬਾਹਰ ਜਾ ਜਾਂਦਾ ਜਿੱਤੋਂ ਬੇਕਾਬੂ ਹੋ ਜਾਂਦਾ ਫਿਰ ਪਰ ਬਾਹਰ ਜਾਂਦਾ ਜਿਆਦਾ ਜਿਆਦਾ ਯਾਤ੍ਰਕੁਟੀ ਹੁੰਦੀ ਹੈ ਇਹਦੇ ਕੋਲ ਦਿਮਾਗ ਹੁੰਦਾ ਪਹਿਲਾਂ ਜਾ ਨਹੀਂ ਸਕਦਾ ਦਿਮਾਗ ਤੱਕ ਜਾਣ ਦੀ ਸ਼ਕਤੀ ਹੈ। ਦਿਲ ਤੋਂ ਦਿਮਾਗ ਤੱਕ ਦੀ ਸ਼ਕਤੀ ਇਹਦੇ ਕੋਲ ਹੈ। ਉਹ ਵੀ ਜਿਹਨਾਂ ਜਿਹੜੋ ਕੰਮ ਉਲਝ ਰਹੇ। ਅੱਖਾਂ ਜੇ ਕੰਮ ਕਰ ਸਕਦਾ ਹੈ। ਗਿਆਨ ਇੰਦਰੀਏ ਸਰੀਰ ਜੇ ਕੰਮ ਕਰੇ। ਬਸ। ਸਰੀਰ ਦੇ ਵੀ ਜਿਹੜੇ ਸੈੱਲ ਨੇ ਉਹਦਾ ਕਰਕੇ ਚੱਲਦੇ। ਬਰਬੜੇ ਕਰਕੇ। ਜੋ ਬ੍ਰਹਮ ਅੱਡੇ ਸੋਈ ਪੱਡੇ ਕਹਿੰਦੇ ਜੋ ਅੱਡੇ ਚ ਬ੍ਰਹਮ ਸੀ ਨਾ ਤੇਰੇ ਚ ਔਰ ਸਰੀਰ ਚ ਪਾਤਾ ਔਰ ਸਰੀਰ ਤੇ ਪਿੰਡ ਚ ਐ ਪਿੰਡ ਚ ਐ ਪਿੰਡ ਜੋ ਖੋਜੇ ਸੋ ਬਾਬਾ ਪਰ ਦੋ ਟੁਕੜਿਆਂ ਚ ਹਣ ਬਰਗੁੱੜ ਇੱਕ ਦਾ ਐ ਨਵਾਨਾ ਦੇ ਦਾ ਐਸਾ ਨਵਾਨਾ ਦੇ ਦਾ ਐਸਾ ਜਿੱਤੇ ਸਰੀਰ ਚ ਪਹਿਲਾ ਮਨ ਨੂੰ ਖੋਜਣੇ ਮਨ ਦੇ ਅੰਦਰ ਉਹ ਵਸਦਾ ਮਨ ਮੈਂ ਆਪ ਉਹ ਆਪਣੇ ਮਨ ਮੰਡਾ ਕੰਟਰੋਲ ਹੋਦੇ ਅਤੀਜ ਪਰ ਬੋਲਦੇ ਅੰਦਰ ਵਸਤ ਜਰਨਾ ਬਾਬੇ ਡਿਊਬ ਲਾਈਟ ਤੋਂ ਆਉਂਦਾ ਬਲਬ ਤੋਂ ਆਉਂਦਾ ਜਿੰਨਾ ਬਲਬ ਛੱਡਦਾ ਚੱਲਣਾ ਉਹ ਲਈ ਜਾਂਦਾ ਬਾਹਰ ਪਰ ਚਾਲ ਮੇਰੇ ਵਿੱਚ ਹੀ ਹੈ ਬਲਬ ਵੀ ਬਾਹਰ ਨਹੀਂ ਹੈ ਤਾਂ ਕਿ ਜਾਤਮਾ ਜੋਤ ਸਰੀਰ ਦੇ ਵਿੱਚ ਜੋਤ ਹੈ ਜੋਤ ਮਾਂ ਜਾਂਦਾ ਹੋ ਕੇ ਜੋਤ ਵਿੱਚੋਂ ਵੀ ਜਾਂਦਾ ਜਿਹਦੀ ਜੋਤ ਹੈ ਜੋਤ ਦੇ ਵਿੱਚ ਹੁੰਦਾ ਸੂਰਜ ਚਾਰੇ ਪਾਸੇ ਧੁੱਪ ਖਿਲਾਰਦਾ ਸੂਰਜ ਵਿੱਚੇ ਹੁੰਦਾ ਧੁੱਪ ਚਾਨਣ ਚਾਨਣ ਸੂਰਜ ਦੇ ਰਿਹਾ ਲੋ ਸੂਰਜ ਵਿੱਚੋਂ ਤਾਂ ਚਾਨਣ ਬਾਹਰ ਫੈਲੂਗਾ ਇਹ ਸੂਰਜ ਹੈ ਨਹੀਂ ਚਾਨਣ ਕਹਦਾ ਫੈਲਣ ਬ੍ਰਹਮ ਵਿਕਿਆ ਬੋਲਦੇ ਬੋਲਦੇ ਅੱਧਾ ਰਹੋ ਬੋਲ ਬੁੱਧਰ ਜਿਹੜਾ ਬਣਿਆ ਨਾ ਚਾਨਣ ਨਾਲ ਹੋਰੇ ਬਣਦਾ ਬੁੱਧਰ ਜਦ ਚਾਨਣ ਬਾਹਰ ਜਾਂਦਾ ਤਾਂ ਬੁੱਧਰ ਬੜਿਆ ਜੋ ਅੰਡੇ ਤੇ ਬ੍ਰਹਮੰਡ ਰਚਿਓ ਬ੍ਰਹਮੰਡ ਰਚਿਓ ਧੋਇ ਰਚੈ ਨੇ ਹੁਕਮ ਨੇ ਅੰਡੇ ਦੇ ਵਜੋਂ ਹਾਂ ਅੰਡਾ ਰ ਬ੍ਰਹਮੰਡ ਧੋਇ ਰਚੈ ਅੰਡੇ ਦਾ ਬ੍ਰਹਮੰਡ ਰਚਿਓ ਅੰਡ ਅਤੇ ਬ੍ਰਹਮੰਡ ਰਚਿਓ ਐ ਦਿਸਚਾਰ ਕਰੀ ਨਵਖੰਡ ਸਚਿਓ ਕਰੀ ਦਿਸਚਾਰ ਕਰੀ ਸਚਿਓ ਅ ਦੇਰ ਰਾਤ ਬਣਾਤੇ ਦਿਨ ਰਾਤ ਬੜਾ ਰਹਿਣਾ ਚਾਹਦਾ ਸੂਰਜ ਦਿਸਚਾਰ ਕਰੀ ਹਾਂ ਲੰਭਖੰਡ ਸੱਚੇ ਉਹ ਖੰਡ ਬਣਾਤੇ ਇਦਾਂ ਹੀ ਅਜ ਰਾਜ ਤਾਮਸ ਤੇਜ ਅਤੇਜ ਕੀਓ ਅਜ ਰਾਜ ਰਜੋਗੁਣ ਅਰਤਬੂਗੜ ਸਤਵੜਣੀ ਹਾਉਂਦੇ ਸ ਤੇ ਸਤਵਗੁਣ ਦੱਸੇ ਵੜਾਏ ਦੋ ਤੇਜ ਅਤੇਜ ਕੀਓ ਤੇਜ ਔਰ ਤੇਜ ਕੀਤਾ ਤੇਜ ਕੀ ਹੁੰਦਾ ਤੇਜ ਹੁੰਦਾ ਚੱਲ ਅਤੇਜ ਹੁੰਦਾ ਹਨ ਔਰ ਅਬ ਨੇਰਾ ਨੇਰਾ ਚੱਲਣਾ ਦੋ ਚੀਜ਼ਾਂ ਬਣਾਈਆਂ ਤੇਰਾ ਵੀ ਤਾਂ ਹੈ ਕਿ ਤਾਂ ਹਨੇਰਾ ਵੀ ਹੈ ਤੇਜ ਔਰ ਤੇਜ ਤੇਜ ਹੁੰਦਾ ਚੱਲਣਾ ਰੋਸ਼ਨੀ ਅਤੇਜ ਹੁੰਦਾ ਨੇਰਾ ਗਾਨੌਰ ਪ੍ਰਭੂ ज्ञान और भ्रम कह लो नेहरा और रोशनी कह लो अनपव <स्थाँगा> पद आप प्रचंड लियो बस आएगा जेड़ा अनपव पद प्रचंड है ओ ने अपने को रखा है सतो गुण आप रखा है सतो गुण अपने को रखाया सिंहासन नहीं पाया सतो गुण ਇਹ ਰਾਜਵਰ ਤੋਂ ਵੀ ਪੈ ਸਕਦੇ ਨੇ ਟੋਪ ਨੂੰ ਰਾਜਗੋੜ ਸਤੋਗਣ ਰੱਖਿਆ ਧਾਇਰੇ ਦੇ ਅੰਦਰ ਸਤੋਗ ਦੇ ਅੰਦਰ ਧਾਇਰੇ ਦੇ ਅੰਦਰ ਐਸਾ ਟੋਗੜੂ ਸਤੋਗਣ ਲੈਪਤ ਨਹੀਂ ਹੋ ਸਕਦਾ ਮਾਇਚ ਸਤ ਸਤਗੋੜ ਆਪ ਜਿਹੜਾ ਸਤੋਗਣ ਜਿਹੜਾ ਸਤਗੋੜ ਹੈ ਉਹ ਹੀ ਸਤੋਗੋਣਾ ਆਪ ਸਤਗੋਣਾ ਤੇ ਮਾਨਕੋ ਰਾਜਗੋਣਰ ਤਬੂੜ ਦੋ ਗੋਲੜੇ ਇਹ ਦੋ ਚੀਜ਼ਾਂ ਬਨ ਦੇ ਕੋਲ ਤਬੂੜ ਵੀ ਹੋ ਸਕਦਾ ਹੈ ਰਾਜਗੋਣ ਚ ਵੀ ਰਾਜਗੋਣ ਤੋਂ ਚਾਹੇ ਸਦੋਣ ਚਲਾ ਜਾਵੇ ਰਾਜਗੋਣ ਜੰਮਦਾ ਬੱਚਾ ਸਦੋਣ ਵੀ ਜਾ ਸਕਦਾ ਹੈ ਚ ਵੀ ਜਾ ਸਕਦਾ ਜੇ ਤਾਂ ਮਾਇਆ ਦਾ মোহ ਵੱਧ ਗਿਆ ਕਲਪਨਾ ਵੱਧ ਗਈ ਫਿਰ ਤਾਂ ਤਬੂੜ ਚ ਲਾ ਗਿਆ ਕਿ ਪਹਿਲਾਂ ਹੀ ਭਗਤੀ ਮਿਲ ਗਈ ਫਿਰ ਪ੍ਰਲਾਤ੍ਰੂ ਉਹ ਗੂਗੂ ਵਿੱਚ ਦੂਰ ਚਲੇ ਗਿਆ ਸ੍ਰੀਏ ਕੈਸੇ ਉਪਜੀ ਪੇੜ ਤੇ ਜਿਤੇ ਉਰੇ ਜੋਣ ਪੇੜ ਤੇ ਉਪਜੀ ਬਲਵੰਦਾ ਹੋ ਉਹ ਨੂੰ ਕੀ ਸਿੱਖਿਆ ਭੁੱਲਦੀ ਕਿੰਦਾ ਜਲਦੀ ਬਸ ਸ੍ਰੀਏ ਸਿਧੌਰ ਬਿੰਦ ਨਗਿੰਦ ਨਗੰ ਸਰਜੇ ਸਿਧੌਰ ਬਿੰਦ ਨਗਿੰਦ ਸਿੱਧਰ ਸੁਧਰ ਬਿੰਦ ਪਰਬਤ ਨਗਿੰਦ ਨਗੰ ਨਗਿੰਦ bade parbat jade ne jib apne hawali aap kaida de subeer waga parbat unchi chotiyan nagind sri jaach gundharb phanind bhojan aa dekh jaach gundharb te aadmi chaage phanind bhojan phire dohi aage vekho jaach ਦੇਵਤਿਆਂ ਦੇ ਗੁੰਗਾਉਣ ਵਾਲੇ ਸ਼ਿਵਜੀ ਦੇ ਭਗਤ ਨੇ ਫਨਿੰਦ ਭਜਨ ਹਾਂ ਜੈ ਸ਼ਰਗਨਾਰ ਬਿਸ਼ਨੂ ਦੇ ਭਗਤ ਨੇ ਉਹ ਜਿਹੜੇ ਫਨਿੰਦਾ ਆਏ ਨੇ ਦੇਵ ਦੇ ਰਚੇ ਦੇਵਤਿਆਂ ਦੇ ਖਿਲਾਫ ਅਦੇਵ ਰਚੇ ਦਰ ਰਚਤੇ ਆਦਮੀ ਰਚਤੇ ਆਲਮੇ ਵਿਚਾਰੇ ਵਿਚਾਲੇ ਹੁੰਦੇ ਨੇ ਦਰਪਾਲ ਨਰਪਾਲ ਨਿਰਪਾਲ ਕਰਾਲ ਤ੍ਰਿਗੰਹ ਦਰਪਾਲ ਨਰਪਾਲ ਉਹਨੇ ਰਾਜੇ ਨਾਨਦੀ ਪਾਲਣਾ ਕਰਨ ਵਾਲੇ ਰਾਜੇ ਇਹਨਾਂ ਦੇ ਵਿੱਚ ਫਿਰ ਵੱਡੇ ਦਾ ਰਾਜ ਨਿਰਪਾਲ ਕਰਾਲ ਤ੍ਰਿਗੰਹ ਤ੍ਰਿਗੰਹ ਆ ਮਤਲਬ ਹੈ ਰਾਜ ਜਿਵੇਂ ਸ਼ੇਰ ਹੈ ਉਹ ਵੀ ਰਾਜਾ ਵੱਡੇ ਹੱਥੀ ਹੁੰਦੇ ਨੇ ਉਹ ਵੀ ਰਾਜੇ ਹੁੰਦੇ ਨੇ ਆਦਮੀ ਹੁੰਦੇ ਨੇ ਘੱਟ ਕਹਿੰਦੇ ਜਿਹੜਾ ਆਦਮੀ ਚੌਧਰੀ ਹੋਵੇ ਨਾ ਕਰਦਾ ਉਹ ਵੀ ਰਾਜਾ ਹੀ ਹੁੰਦਾ ਹੈ ਛੋਟੇ ਦਾਰੇ ਆ ਜਾਂਦੇ ਰਾਜ ਦੇ ਛੋਟੇ ਦਾਰੇ ਆ ਤ੍ਰਿਕਮ ਉਹਦਾ ਟੇਡਾ ਚਲਣ ਵਾਲੇ ਜਿਹੜੇ ਧਰਤੀ ਦੇ ਜੀਵ ਚਲਦੇ ਨੇ ਟੇਡੇ ਪੇੜ ਜਿਨ੍ਹਾਂ ਦਾ ਧਰਤੀ ਤੇ ਕਈ ਕੀੜੇ ਪਤੰਗੇ ਪੈਦਾ ਕੀ ਤੇਰੇ ਭੁਜੰਗਾ ਸੱਪ ਪੈਦਾ ਕੀ ਤੇਰੇ ਨਾਲ ਆਦਮੀ ਪੈਦਾ ਕੀ ਤੇ ਉਹਨਾਂ ਦੇ ਵਿੱਚ ਵੀ ਨਰ ਨੇ ਨਰਮਦੀਨ ਉਰਲ ਦੇ ਵਿੱਚ ਵੀ ਨੇ ਯੰਮਰ ਬੁਝਕ ਦਾ ਨ ਦੇਰਬਦੀ ਤਾਂ ਉਹਨਾਂ ਦੇ ਵਿੱਚ ਵੀ ਰਾਚੀ ਅੰਡਜ ਸੇਤਜ ਉਤਪਜੰ ਅਡਜ ਜੇਰਜ ਉਤਪਜ ਇਹ ਖਾੜੀਆਂ ਪੈਦਾ ਕੀਤੀ ਚਾਰੇ ਖਾੜੀਆਂ ਪੈਦਾ ਕੀਤੀਆਂ ਕੀ ਦੇਵ ਅਦੇਵ ਸਰਾਦ ਪਿਤੰ ਜਿਹੜੇ ਦੇਵਤੇ ਔਰ ਰਾਖਸ਼ ਪੈਦਾ ਕੀਤੇ ਸਰਾਦ ਪਿਤੰ ਸਰ ਆਦ ਪਿਤੰ ਫਰਾਦ ਵੀ ਚਲੋ ਇਹਦੇ ਅਰਥ ਉਹਨਾਂ ਕਰਦੇ ਵੀ ਜਿਹੜੇ ਪਿਤਰਾਂ ਵਾਸਤੇ ਗਾਂ ਸਰਦਾ ਰੱਖਦੇ ਨੇ ਸਰਦਾ ਪਿਤਰਾਂ ਵਾਸਤੇ ਸਰਦਾ ਰੱਖ ਕੇ ਦਾਨ ਪੁੰਨ ਕਰਦੇ ਨੇ ਅਨਖੰਡ ਪ੍ਰਤਾਪ ਪ੍ਰਚੰਡ ਗਤੰ ਪਰ ਅਨਖੰਡ ਉਹਦਾ ਅਨਖੰਡ ਪ੍ਰਤਾਪ ਹੈ ਪ੍ਰਚੰਡ ਗਤੀ ਹੈ ਦੇਖੋ ਅਨਖੰਡ ਪ੍ਰਤਾਪ ਹੈ ਪ੍ਰਚੰਡ ਗਤੀ ਹੈ ਉਹਦੀ ਗਤੀਸ਼ੀਲ ਥੇਰ ਉਹਦਾ ਆਇਆ ਵੀ ਗਤੀਸ਼ੀਲ ਹੈ ਫਰੀ ਤੇਰਾ ਗਤੀਸ਼ੀਲ ਚਿੰਤਾ ਨਹੀਂ ਹੈ ਕੋਈ ਉਹ ਚਿੰਤਾ ਉਹ ਹੀ ਜੀ ਚਿੰਤਾ ਨਹੀਂ ਹੈ ਜਸ ਵਸ ਤੋਂ ਬਾਹਰ ਜਿੰਤਾ ਹੋਰ ਗੱਲ ਹੁੰਦੀ ਹੈ ਬਾਸ ਵਾਲੀ ਚਿੰਤਾ ਹੋਰ ਗੱਲ ਹੁੰਦੀ ਹੈ ਹਾਂ